ਆਰ ਪੀ 1550 ਐਮ ਤੇ ਤੁਹਾਡਾ ਸਵਾਗਤ ਹੈ ਮੈਂ ਦਾ ਦਿਨ ਹੈ ਸਵਾਗਤ ਹੈ ਜੀ ਅੱਜ ਦੀ ਲੋਕ ਸਭਾ ਦੇ ਵਿੱਚ ਅਹਿਮ ਘਟਨਾਵਾਂ ਗੱਲਾਂ ਬਾਤਾਂ ਕੀ ਸੰਗੀਤ ਸੋਧ ਤੇ ਗੱਲਬਾਤ ਹੋਣੀ ਹੈ ਜੀ ਪਹਿਲੇ ਹਿੱਸੇ ਦੇ ਵਿੱਚ ਖਬਰਾਂ ਖਬਰਾਂ ਦੇ ਨਾਲ ਨਾਲ ਕੁਝ ਲੋਕਲ ਲਿਬਰਲ ਪਾਰਟੀ ਨੇ ਸਰੀ ਦੇ ਵਿੱਚ ਕੁਝ ਗੱਲਾਂ ਬਾਤਾਂ ਕੀਤੀਆਂ ਉਸ ਦੇ ਸਬੰਧ ਜਗਰੂਪ ਕਾਰਨ ਕੀ ਹੁਣ ਵੇਖਿਓ ਕੀ ਕੀ ਹੋਣਾ ਹੈ ਅਗਲੇ ਹਿੱਸੇ ਦੇ ਵਿੱਚ 12 ਤੋਂ 1 ਇੱਕ ਇੱਕ ਤੋਂ ਖੁੱਲੀ ਵਿਚਾਰ ਚਰਚਾ ਭਾਈਚਾਰੇ ਨਾਲ ਸੰਬੰਧਤ ਅੱਜ ਗੱਲਬਾਤ ਕਰਨੀ ਹੈ 12 ਤੋਂ 1 ਵਜੇ ਤੱਕ ਦੇ ਬਾਰੇ ਜਾਣਨਾ ਕਿੰਨਾ ਕੁ ਜੇ ਕਿਸੇ ਦੇ ਵਿੱਚ ਗੱਡੀ ਲੱਗੇ ਜਦ ਭਾਈਚਾਰੇ ਦੇ ਦੋ ਬੰਦੇ ਆਸ ਵਿੱਚ ਕਿਤਨਾ ਕਿਤੇ ਕੋਈ ਗੱਲਬਾਤ ਹੋ ਜਾਏ ਗੱਡੀ ਲੱਗ ਜਾਏ ਇਹੋ ਜਿਹੀਆਂ ਗੱਲਾਂ ਹੁੰਦੀਆਂ ਤੇ ਕਿਹੋ ਜਿਹੀ ਨਹੀਂ ਹੋਈਆਂ ਚਾਹੀਦੀ ਨਾਲ 11 ਕੇਅਰ ਵੀ ਗੱਲ ਕਰਨੀ ਹੈ ਉਹਨਾਂ ਦੀ ਮੁਸ਼ਕਲ ਉਸ ਤਰ੍ਹਾਂ ਦੀ ਉਸ ਤਰ੍ਹਾਂ ਹਲੇ ਖੜੀ ਹੈ ਇੱਕ ਤੋਂ 2 ਵਜੇ ਤੱਕ ਅ ਪਤਾ ਲੱਗਿਆ ਕਿ ਕੱਲ ਲੋਕਲ ਇੱਕ ਟਰੱਕ ਡਰਾਈਵਰ ਨੇ ਕੀਤੀ ਹੈ ਫੇਰ ਪਟੋਲੋ ਬ੍ਰਿਜ ਤੋਂ ਉਸ ਪਰਿਵਾਰਕ ਮੁਸ਼ਕਲਾਂ ਤੇ ਉਸ ਤੋਂ ਬਾਅਦ ਕੰਮ ਦੀਆਂ ਮੁਸ਼ਕਲਾਂ ਲੋਕਲ ਕੰਮ ਦੇ ਜਿਹੜੇ ਕੰਟੇਨਰ ਟਰੱਕਰ ਟਰੱਕ ਡਰਾਈਵਰਸ ਨੇ ਤੇ ਓਨਰ ਆਪਰੇਟਰ ਨੇ ਉਹਨਾਂ ਦੇ ਕੀ ਕੀ ਤੰਗੀਆਂ ਨੇ ਇਸ ਬਾਰੇ ਵੀ ਗੱਲਬਾਤ ਕੀਤੀ ਜਾਏਗੀ ਹਲੇ ਤੱਕ ਕਿਉਂਕਿ ਪੁਸ਼ਟੀ ਨਹੀਂ ਹੁਣ ਤਾਂ ਦੱਸਣ ਵਾਲੇ ਨੇ ਤੁਰ ਗਿਆ ਪਰ ਖੁਦਕੁਸ਼ੀ ਤੇ ਕਿਸ ਤਰ੍ਹਾਂ ਬਚਿਆ ਜਾ ਸਕਦਾ ਹੈ ਤੁਸੀਂ ਸਿੱਧਾ ਪ੍ਰਸਾਰਣ ਸੁਣਦੇ ਜਿੱਥੇ ਵੀ ਦੁਨੀਆ ਦੇ ਵਿੱਚ ਬੈਠੇ ਹੋ ਤੇ ਨਾਲ ਹੀ ਐਪ ਡਾਊਨਲੋਡ ਕਰ ਸਕਦੇ ਹੋ ਲੋਕਸਥ ਲੋਕੇ s a ਇਹ YouTube ਦਾ ਚੈਨਲ ਹੈ ਜਿੱਥੇ ਸਾਰੇ ਸ਼ੋਅ ਸੇਵ ਕੀਤੇ ਜਾਂਦੇ ਨੇ ਨਿਮੀ ਡੋਲਾ ਜੀ ਦਾ ਨੰਬਰ ਹੈ 6044406462 6044406462 info@krpiaradio.com ਈਮੇਲ ਹੈ ਹਰਜੀਤ ਸਿੰਘ ਗਿੱਲ ਤੇ ਅਕਾਊਂਟ ਜਿੱਥੇ ਤੁਹਾਡਾ ਕੋਈ ਸੁਨੇਹਾ ਕੋਈ ਮਸ਼ਵਰਾ ਕੋਈ ਸੁਝਾਅ ਆਉਂਦਾ ਰਹਿੰਦਾ ਤੇ ਈਮੇਲ ਦੇ ਲਈ ਕੁਝ ਡਾਕੂਮੈਂਟਸ ਕੁਝ ਭੇਜਣੇ ਚਾਹਲੇ ਹੋਣ ਤਾਂ harjeet.g@krpiaradio.com h r j atkrpa.radio.com ਤੇ ਤੁਸੀਂ ਈਮੇਲ ਕਰ ਸਕਦੇ ਨਦੀ ਕਟ ਵਸਤੂਨ ਫਰਹਾਦ ਪੁੱਤੀ ਸੂਬਾ ਸ਼ਾਮ ਦੁਪਹਿਰਾਵਾਦ ਪੁੱਤੀ ਨਦੀ ਕਟ ਵਸਤੂਨ ਫਰਹਾਦ ਪੁੱਤੀ ਸੂਬਾ ਸ਼ਾਮ ਦੁਪਹਿਰਾਵਾਦ ਪੁੱਤੀ ਮੌਜ ਮਥਿਆ ਦਿਲਸ਼ਾਦ ਅੱਖ ਪੁੱਟਣ ਤੇ ਠੀਕੀ ਬੁਨਿਆਦ ਤੇਰੀ ਗੱਲਾਂ ਸੰਗ ਤੂੰ ਗੱਲਾਂ ਸੰਗ ਤੂੰ ਖੜਾ ਪਹਾੜ ਕੀਤਾ ਦੂੰਗੇ ਨੈਣ ਤੇਰੇ ਮਕਰੀਲਿਆਂ ਚੋਂ ਅਸਾਂ ਮਕਰ ਬੇ ਮੁੰਡਿਆ ਤਾੜ ਲੀਤਾ ਸਰਬ ਸੁਨਖੜੇ ਦੰਦ ਸਾਡੇ ਜਿਹੜਾ ਹਾਸੇ ਨੇ ਪਗੋਂ ਔਖਾੜ ਲੀਤਾ ਸਾਨੂੰ ਮਿੱਟੀ ਦੇਆਂ ਢੇਲਿਆਂ ਠੀਮੜਾਂ ਨੂੰ ਉਹੇ ਨੂਰ ਦੀ ਥਾਵੇਂ ਚਾੜ ਲੀਤਾ ਸਾਡੇ ਰੂਪ ਤਾਂ ਹੌਲੇ ਛਲਛਲੇ ਵੇ ਸਾਨੂੰ ਤੰਗੀਆਂ ਨੇ ਦਫਾੜ ਕੀਤਾ ਉਹ ਡੂ ਗਰਦਵੇ ਕੱਲਰਾਂ ਰੋਈਆਂ ਦੀ ਉਹ ਡੂ ਗਰਦਵੇ ਕੱਲਰਾਂ ਰੋਈਆਂ ਦੀ ਅਸਾਂ ਦਿਲ ਜੇ ਆਪਣਾ ਝਾੜ ਕੀਤਾ ਮੁੰਡਿਆ ਅਸਾਂ ਦਿਲ ਜੇ ਆਪਣਾ ਝਾੜ ਕੀਤਾ ਹਰਮਨਜੀਤ ਰਾਣੀ ਸਤ ਇਹਦਾ ਦੇਸ਼ਾਂ ਦੇ ਵਿੱਚ ਵਧੀਆ ਜ਼ਿੰਦਗੀ ਜਿਉਂਦੇ ਲਈ ਜਿਉਂ ਹੀ ਅਸੀਂ ਆ ਕੇ ਇੱਥੇ ਪਹੁੰਚੇ ਜਦ ਪਰਿਵਾਰਾਂ ਦੇ ਵਿੱਚੋਂ ਕੋਈ ਆ ਗਿਆ ਤੇ ਅਸੀਂ ਰਹਿ ਗਏ ਪਿੱਛੇ ਉਸ ਕਰਕੇ ਆ ਗਏ ਕੋਈ ਟੱਬਰਾਂ ਨਾਲ ਆ ਗਿਆ ਕੋਈ ਸੋਹਣਾ ਸੁਨੱਖਾ ਵਿਆਹ ਕਰਾ ਕੇ ਆ ਗਿਆ ਕੁਝ ਡਿਗਰੀਆਂ ਨਾਲ ਆ ਗਏ ਕੁਝ ਕੰਮ ਕਰਨ ਆ ਗਏ ਕੁਝ ਪੜਨ ਆ ਕੇ ਅਸੀਂ ਇਸ ਆਪਣਾ ਘਰ ਬਣਾ ਲਿਆ ਇੱਥੇ ਬੈਠ ਕੇ ਜਦ ਪਿੱਛੇ ਨੂੰ ਦੇਖਦੇ ਆ ਤਾਂ ਪਿਛਲੇ ਲੋਕ ਸਾਨੂੰ ਇਉਂ ਲੱਗਦੇ ਆ ਕਿ ਸਾਰੇ ਹੀ ਮੁਸ਼ਕਿਲ ਚ ਐ ਤੇ ਅਸੀਂ ਉਹਨਾਂ ਨੂੰ ਮਤਾਂ ਦਿੰਦੇ ਜਿਵੇਂ ਰਾਠਾਂ ਦੀ ਹਵੇਲੀ ਦੇ ਵਿੱਚੋਂ ਦਲਤਾਂ ਦੇ ਬਿਹੜੇ ਵੱਲ ਸੋਕਾਲ ਦਲਤਾਂ ਮਜਵੀਆਂ ਦੇ ਬਿਹੜੇ ਵੱਲ ਵੇਖ ਕੇ ਅਗਲਾ ਕਹੋ ਲੋਕ ਰਹਿੰਦੇ ਹਾਲੇ ਕੱਲ ਵਿਆਹੀ ਜਿਹਨੀਆਂ ਕੁਆਰੀਆਂ ਫੜਦੀਆਂ ਪਹਿਲੇ ਸਾਲ ਜਦ ਮੁੜ ਕੇ ਜਾਂਦੇ ਆ ਤਾਂ ਅਸੀਂ ਜਾ ਕੇ ਬੜਾ ਕੁਝ ਕਰਦੇ ਸੀ ਹੁਣ ਜਦੋਂ ਆਪਸ ਪੰਜਾਬ ਦੇ ਫਿਕਰ ਦੇ ਵਿੱਚ ਅਸੀਂ ਆਪਣੇ ਆਪ ਨੂੰ ਲਪੇਟਿਆ ਦਿਨ ਰਾਤ ਉਸ ਪੰਜਾਬ ਦੀਆਂ ਗੱਲਾਂ ਕਰਦੇ ਹਾਂ ਰਾਜਨੀਤੀ ਦੇ ਵਿੱਚ ਇਹਨਾਂ ਸਰਗਰਮ ਜਿਹੜਾ ਇਸ ਸਾਲ ਹੋਏ ਆ ਉਹਦਾ ਕਾਰਨ ਹੈ ਉਹ ਪਿਛਲੇ 5 ਸਾਲਾਂ ਦੇ ਵਿੱਚ 7 ਤੋਂ 12 12 ਤੋਂ 17 ਤੱਕ ਸੋਸ਼ਲ ਮੀਡੀਆ ਬਹੁਤ ਬਲਵਾਨ ਹੋ ਗਿਆ ਕੋਈ ਵੀ ਅਜਿਹਾ ਸੱਜਣ ਯਾ ਸੱਜਣੀਆਂ ਇਹ ਜਿਹੇ ਨਹੀਂ ਜਿਹੜੇ ਫੇਸਬੁੱਕ ਜਾਂ ਵਟਸਐਪ ਤੇ ਨਾ ਹੋਣ ਤੇ ਜਿਨ੍ਹਾਂ ਨੂੰ ਨਾਮ ਪਤਾ ਲੱਗੇ ਕਿ ਉੱਥੇ ਕੀ ਹੋ ਰਿਹਾ ਮਨ 'ਚ ਓਸ਼ਾਲ ਬਹੁਤ ਆ ਵੀ ਪੰਜਾਬ ਚੰਗਾ ਰਹੇ ਪਾਰਟੀ ਜਿਹਦੀ ਨਾਲ ਮਰਜ਼ੀ ਤੁਸੀਂ ਖੜੇ ਹੋਮੋ ਉਸ ਪਾਰਟੀ ਦੀ ਨਿਗਾਹ ਦੇ ਵਿੱਚੋਂ ਪੰਜਾਬ ਦਾ ਭਲਾ ਲੋਚਦੇ ਪਰ ਉਸ ਨੂੰ ਚੰਗਾ ਕਰਦਿਆਂ ਕਰਦਿਆਂ ਜਦ ਕਈ ਵਾਰ ਇੱਥੇ ਲੱਗ ਨੂੰ ਨਾਗ ਨਾਗਵਲ ਪਵਾ ਬੈਨੇ ਆ ਤੇ ਫਿਰ ਅਸੀਂ ਇੱਥੇ ਇਸ ਤਰ੍ਹਾਂ ਮਹਿਸੂਸ ਕਰਦੇ ਆ ਵੀ ਯਾਰ ਇਕੱਲੇ ਹੀ ਰਹਿ ਗਏ ਕਿਸੇ ਨੇ ਨਾ ਸਾਨੂੰ ਸੰਭਿਆ ਕੋਈ ਸਾਂਭਣ ਵਾਲਾ ਹੈ ਨਹੀਂ ਜੇ ਕੋਈ ਅਲਦ ਵਾਲੇ ਸੌਖਾ ਹੋਵੇ ਆਲੇ-ਦਾਲੇ ਵੀ ਕੁਰਬਲ-ਕੁਰਬਲ ਹੁੰਦੀ ਫਿਰਦੀ ਹੈ ਪਿਛਲੇ ਸਾਂਭੇ ਜਾ ਸਕਦੇ ਕਿਉਂਕਿ ਥੋੜੇ ਡਾਲਰਾਂ ਦੇ ਵੱਧ ਰੁਪਏ ਬਣ ਜਾਂਦੇ ਨੇ ਤੇ ਉੱਥੇ ਤੁਸੀਂ ਕਿਵੇਂ ਨਾ ਕਿਵੇਂ 12000 ਇਥੋਂ ਲੈ ਕੇ ਲੱਖ ਰੁਪਇਆ ਦੇ ਕੇ ਉਹਨੂੰ ਸੌਖਿਆ ਕਰ ਸਕਦੇ ਆ ਪਰ ਇੱਥੇ ਦੀ ਜ਼ਿੰਦਗੀ 'ਚ 2000 ਦਾ ਕੱਖ ਨਹੀਂ ਵੱਟੀ ਦਾ ਪਰ ਇਹਦਾ ਸੋਲੂਸ਼ਨ ਆ ਜਿਹੜਾ ਉਹ ਇਹ ਕਿ ਆਪਾਂ ਆਪਣੀ ਜਾਨ ਦਾ ਖੌਫ ਬਣਾ ਕੇ ਆਪਣੀ ਜਾਨ ਛੱਡ ਦੇਣੀ ਜਦ ਗੱਲ ਨਿਕੜ ਜੇ ਜਾਂ ਮੂਲੋਂ ਗੱਲ ਕਹਾਣੀ ਹੋ ਜਾਵੇ ਉਸ ਸਮੇਂ ਮਦਦ ਲੰਬੀ ਜ਼ਰੂਰਤ ਆ ਜਿਵੇਂ ਕੋਠੇ ਚੜ ਕੇ ਕੂਕਣ ਦੀ ਲੋੜ ਆ ਜਿਵੇਂ ਆਪਾਂ ਪੰਜਾਬ ਵਾਲਿਆਂ ਨੂੰ ਕਹਿੰਦੇ ਆ ਕੋਠੇ ਚੜ ਕੇ ਕੂਕੋ ਤੁਸੀਂ ਲੁੱਟੀ ਗਏ ਪਰ ਕਈ ਵਾਰ ਆਪਣੇ ਤੇ ਚੀਜ਼ਾਂ ਲਾਉਣੀਆਂ ਔਖੀਆਂ ਹੋ ਜਾਂਦੀਆਂ ਬੋਲਣੀਆਂ ਸੌਖੀਆਂ ਹੋ ਜਾਂਦੀਆਂ ਇਹ ਗੱਲ ਠੀਕ ਹੈ ਪਤਾ ਤਾਂ ਜਦੇ ਲੱਗੂ ਨਾ ਕਿ ਵਿੱਚੋਂ ਮੇਖ ਲੱਗਦੀ ਜੁੱਤੀ ਦੇ ਵਿੱਚ ਪੈਰ ਪਾਉਂਗਾ ਤਾਂ ਪਤਾ ਲੱਗੂ ਕਿ ਮੇਖ ਕਿੰਨੀ ਚੁਬਦੀ ਗੱਲ ਕਰਨੀ ਸੌਖੀ ਹੈ ਪਰ ਕਿਸੇ ਵੀ ਜਗ੍ਹਾ ਤੇ ਖੜਨਾ ਬਹੁਤ ਔਖਾ ਪਰ ਫੇਰ ਵੀ ਜਦ ਨੰਗੇ ਹੀ ਆਇਆ ਨੰਗੇ ਹੀ ਜਾਣਾ ਇਹੋ ਜਿਹਾ ਕੁਛ ਨਹੀਂ ਖੁਸ਼ੀ ਦਾ ਜਿਹਦੇ ਕਰਕੇ ਅਸੀਂ ਜਾਨ ਦੇਣੀ ਕਦੇ ਪਹਿਲਾ ਦਿਨ ਸੋਚਿਆ ਜਾਵੇ ਵੀ ਕਿਹਜਾ ਬੈਗ ਮੋਢੇ ਟੰਗਿਆ ਲੈ ਕੇ ਖੱਬੇ ਮੰਨ ਤੇ ਹੱਥ ਦੇ ਵਿੱਚ ਟੇਕੀ ਤੇ ਉਹਨੂੰ ਜਿੰਦਾ ਬਾਹਰ ਡਾਲਰ ਉਹ ਵੀ ਬਣਾਉਣ ਦੇ ਨਾਲ ਅੰਦਰਲੀ ਜੇਬ ਜਿਹੜੀ ਬਣਾਈ ਹੋਈ ਸੀ ਉਹਦੇ 'ਚ ਪਾਏ ਹੋਏ ਸੀ 20 ਲੈ ਕੇ ਚੜਗੇ 20 ਲੈ ਕੇ ਬੈਨਕੂਵਰ ਉਤਰ ਗਏ ਉਹ ਦਿਨ ਨੂੰ ਯਾਦ ਰੱਖਣਾ ਚਾਹੀਦਾ ਤੇ ਅੱਜ ਕੀ ਕੁਛ ਨਹੀਂ ਹੈ ਲੋਕਾਂ ਤੋਂ ਘੱਟ ਹੋ ਸਕਦਾ ਪਰ ਹੈ ਸਾਰਾ ਕੁਛ ਇਹ ਸੋਚ ਕੇ ਜ਼ਿੰਦਗੀ ਜਿਉਈ ਜਾ ਸਕਦੀ ਥੱਲੇ ਨੂੰ ਝਾਕ ਕੇ ਜੇ ਕੋਈ ਬਾੜਾ ਹੀ ਹਿੱਲ ਜਾਏ ਮੇਰੇ ਕੋਲ ਆ ਨਹੀਂ ਮੇਰੇ ਕੋਲ ਆ ਨਹੀਂ ਰਹਾ ਮੇਰੇ ਕੋਲ ਆ ਨਹੀਂ ਰਹਾ ਮੇਰੇ ਕੋਲ ਆ ਨਹੀਂ ਰਹਾ 64 ਤੋਂ ਲੈ ਕੇ 108 ਤੱਕ ਕਿੰਗ ਜੋਰਜ ਤੇ ਗੱਡੀ ਹੌਲੀ-ਹੌਲੀ ਚਲਾ ਕੇ ਜਾਇਓ ਵੇਖਿਓ ਬੱਗੀਆਂ ਦੇ ਵਿੱਚ ਸਮਾਨ ਪਾ ਕੇ ਬਰਬੇ ਮੀਂਹ ਦੇ ਵਿੱਚ ਉੱਪਰ ਤਰਪਾਲ ਸਿੱਟ ਕੇ ਬੱਗੀ ਦੇ ਵਿੱਚ ਬੰਦਾ ਬੈਠਾ ਹੁੰਦਾ ਫਿਰ ਦਿਲ ਜਿਹੜਾ ਟਕਾਣੇ ਆ ਸਕਦਾ ਇਹ ਆ ਇੱਥੇ ਹੀ ਜੰਮਿਆ ਰੰਗ ਵੀ ਸਾਡੇ ਨਾਲ ਉਹਨਾਂ ਦਾ ਸਾਫ਼ ਹੈ ਆ ਵੀ ਦਿਨ ਕੱਟੀ ਹੋ ਜਾਂਦਾ ਹੈ ਤੇਰੇ ਤਾਂ ਸਿਰ ਤੇ ਛੱਤ ਹੈ ਚਾਹੇ ਆਪਣੀਆਂ ਚਾਹੇ ਕਿਰਾਏ ਦੀ ਛੱਤ ਛੱਤ ਹੁੰਦੀ ਸੰਭਲ ਕੇ ਰਿਹਾ ਕਰੋ ਥੋੜਾ ਜਿਹਾ ਵਪਾਰਕ ਸੰਦੇਸ਼ ਮੌਜੂਦਾ ਧਿਰ ਜਿਹੜੀ ਸਰਕਾਰ ਦੇ ਵਿੱਚ ਹੁੰਦੀ ਹੈ ਉਹ ਜਦ ਇਲੈਕਸ਼ਨਾਂ ਆਉਂਦੀਆਂ ਚੋਣਾਂ ਆਉਂਦੀਆਂ ਤਾਂ ਬਹੁਤ ਵੱਡੇ ਵੱਡੇ ਵਾਅਦੇ ਕਰਦੇ ਐ ਇੱਥੇ ਵੀ ਤੇ ਪਿੱਛੇ ਵੀ ਰਾਜਨੀਤਿਕ ਰਾਜਨੀਤੀ ਕੀ ਹੈ ਇੱਥੇ ਥੋੜਾ ਜਿਹਾ ਚੌਕਤਾ ਉਹਨਾਂ ਵਾਲੇ ਦਲੇ ਕਿਹੜਾ ਹੈ ਜੰਨੀ ਦਿੰਦੇ ਲੋਕ ਖੜਾ ਲੈਂਦੇ ਆ ਉੱਥੇ ਲਾਲ ਬੱਤੀਆਂ 'ਚ ਤੇ ਉੱਕਰਾਂ ਪਈਆਂ ਫੇਰ ਪਿਛਲੀਆਂ ਚੋਣਾਂ ਦੇ ਵਿੱਚ ਵੀ ਇੱਥੇ ਬੜੀਆਂ ਗੱਲਾਂ ਹੋਈਆਂ ਐਲ ਐਨ ਜੀ ਦੀਆਂ ਤੇ ਬਹੁਤ ਬਿਲੀਅਨ ਡਾਲਰ ਦੇ ਫੰਡ ਤੇ ਬਹੁਤ ਕੁਝ ਲੰਘ ਗਿਆ 4 ਸਾਲ ਪਤਾ ਹੀ ਨਹੀਂ ਲੱਗੇ ਕਦ ਇਹ ਸਮਾਂ ਲੰਘ ਗਿਆ ਅੱਜ ਸਰੀ ਦੇ ਵਿੱਚ ਲੈ ਸਰਕਾਰ ਨੇ ਕੁਝ ਖਾਸ ਚਲਾਨ ਕੀਤੇ ਨੇ ਉਹਦੇ ਲਈ ਜਗਰੂਪ ਸਿੰਘ ਬਰਾੜ ਮੇਰੇ ਨਾਲ ਜਿਹੜਾ ਤੇ ਇਸ ਵਾਰ ਫਿਰ ਚੋਣ ਲੜ ਰਹੇ ਨੇ ਬਰਾੜ ਸਾਹਿਬ ਤੁਹਾਡਾ ਸਵਾਗਤ ਹੈ ਸਤਿ ਸ੍ਰੀ ਅਕਾਲ ਤੁਹਾਡਾ ਤੇ ਤੇ ਤੁਹਾਡਾ ਸ਼ੁਕਰੀਆ ਅੱਛਾ ਬਾਈ ਜੀ ਕੀ ਕਹਿਤਾ ਅੱਜ ਸਰਕਾਰ ਨੇ ਕੁਝ ਪਿਛਲੇ ਦਿਨੀ ਸਕੂਲਾਂ ਦੇ ਬਾਰੇ ਸੁਪਰੀਮ ਕੋਰਟ ਦੇ ਵਿੱਚ ਰੂਲਿੰਗ ਆਈ ਹੈ ਹੁਣ ਅੱਜ ਕਾਹਦਾ ਐਲਾਨ ਕਰ ਦਿੱਤਾ ਹੈ ਤੇ ਮੈਂ ਸੁਨੇਹਾ ਇੱਕ ਮੇਨਸਟ੍ਰੀਮ ਰੇਡੀਓ ਸੁਣ ਰਿਹਾ ਸੀ ਕਿ ਵਿਕਟੋਰੀਆ ਦਾ ਜਿਹੜਾ ਸਕੂਲ ਬੋਰਡ ਆ ਉਹ ਕਹਿੰਦੇ ਸਾਡੇ ਕੋਲ ਤਾਂ ਪਹਿਲਾਂ ਹੀ ਬੱਚੇ ਬਿਠਾਉਣ ਨੂੰ ਜਗ੍ਹਾ ਹੈ ਨਹੀਂ ਜੇ ਕਲਾਸ ਸਾਈਜ਼ ਛੋਟਾ ਕਰ ਦਿੱਤਾ ਅਸੀਂ ਬਿਠਾਵਾਂਗੇ ਕਿੱਥੇ ਤੇ ਸਰੀ ਦੇ ਵਿੱਚ ਅੱਜ ਕੀ ਇਹਨਾਂ ਨੇ ਐਲਾਨ ਕੀਤਾ ਜੀ ਉਹਦਾ ਉਹਦੀ ਪਿਛੋਕੜ ਭੂਮੀ ਕੀ ਹੈ ਜੇ ਸਭ ਸਰੀ ਦਾ ਨੜਾ ਸ਼ਹਿਰ ਹੈ ਤੁਹਾਨੂੰ ਪਤਾ ਹੈ ਕਿ ਸਭ ਤੋਂ ਤੇਜ਼ੀ ਨਾਲ ਵੱਧ ਰਿਹਾ ਸ਼ਹਿਰ ਹੈ ਆ ਔਰ ਜੇ ਸਕੂਲ ਡਿਸਟ੍ਰਿਕਟ ਦੀ ਆਪਾਂ ਗੱਲ ਕਰੀਏ ਤਾਂ ਸਭ ਦਾ ਔਰ 16 ਸਾਲ ਪਿਛਲੇ ਹੋ ਗਏ ਸਰਕਾਰ ਬਣੀ ਨੂੰ ਲਗਾਤਾਰ ਇਥੋਂ ਦੇ ਮਾਪੇ ਬੱਚੇ ਜਿਹੜਾ ਟੀਚਰਜ਼ ਉਹ ਦਬਾਅ ਪਾਉਂਦੇ ਆ ਰਹੇ ਕਿ ਸਕੂਲ ਸਿਸਟਮ ਨੂੰ ਸਾਡੇ ਇਹਨੂੰ ਫਿਕਸ ਕਰੋ ਇਹ ਜਿਹੜੇ ਕਲਾਸਰੂਮ ਆ ਉਹ ਟੁੱਟੇ ਨੇ ਉਹ ਭਰੇ ਪਏ ਬੱਚਿਆਂ ਦੇ ਤੇ ਬੱਚਿਆਂ ਦੀ ਪੜ੍ਹਾਈ ਠੀਕ ਨਹੀਂ ਚੱਲ ਰਹੀ ਤੇ ਚੋਣਾਂ ਮੰਤਰੀ ਨੇ ਇੱਥੇ ਐਲਾਨ ਕੀਤਾ ਕਿ ਜੇ ਅਸੀਂ ਨਵੀਆਂ ਸਪੇਸਾਂ ਬਣਾਵਾਂਗੇ 5200 ਮੈਂ ਤੁਹਾਨੂੰ ਤੇ ਤੁਹਾਡੇ ਸੁਰਤਿਆਂ ਨੂੰ ਦੱਸਣਾ ਚਾਹੁੰਦਾ ਹਾਂ ਸਾਹਿਬ ਕਿ ਅੱਜ ਸਰੀ ਦੇ ਵਿੱਚ ਜੇ ਅੱਜ ਦੀ ਤਰੀਕ ਦੇ ਵਿੱਚ ਦੇਖੀਏ ਤਾਂ 7000 ਬੱਚਿਆਂ ਕੋਲੇ ਅਸਲੀ ਕਲਾਸਰੂਮ ਨਹੀਂ ਗਏ ਔਰ ਪੋਰਟੇਬਲ ਦੇ ਵਿੱਚ ਜਿਹੜੇ ਟ੍ਰੇਲਰ ਆਪਾਂ ਕਹਿੰਦੇ ਆ ਉਹਨਾਂ ਦੇ ਵਿੱਚ ਪੜਦੇ ਆ ਜਿਨ੍ਹਾਂ ਦੇ ਵਿੱਚ ਨਾ ਬਾਥਰੂਮ ਹੁੰਦਾ ਔਰ ਕੇ ਜਾ ਕੇ ਦੂਜੇ ਪਾਸੇ ਜਾ ਕੇ ਆਪਣਾ ਖਾਣਾ ਪੀਣਾ ਜਾਂ ਜਿਮ ਜਾਣਾ ਹੁੰਦਾ ਉੱਥੇ ਜਾਣਾ ਪੈਂਦਾ ਹੂੰ ਉਹ 7000 ਦੀ ਗਿਣਤੀ ਅੱਜ ਆ ਪਰ 5200 ਦਾ ਐਲਾਨ ਕੀਤਾ ਇਹਨਾਂ ਨੇ ਉਹ ਵੀ 16 ਸਾਲਾਂ ਬਾਅਦ ਔਰ ਸਰਕਾਰ ਕਹਿੰਦੀ ਸਾਡੇ ਕੋਲ ਪੈਸੇ ਬਹੁਤ ਨਹੀਂ ਚੋਣਾਂ ਤੋਂ ਪਹਿਲਾਂ ਤੁਹਾਡੇ ਯਾਦ ਹੋਣ ਕਿ 2 ਸਾਲ ਪਹਿਲਾਂ ਇਹਨਾਂ ਦੇ ਆਪਣੇ ਜਿਹੜਾ ਸਕੂਲ ਡਿਸਟ੍ਰਿਕਟ ਆ ਉਹਦੇ ਬੋਰਡ ਨੇ ਇੱਕ ਮਤਾ ਪਾਸ ਕੀਤਾ ਸੀ ਜਿਹੜੇ ਮਤੇ ਨਾਲ ਤੁਸੀਂ ਤੇ ਮੈਂ ਹੋਰ ਲੋਕ ਸਹਿਮਤ ਨਹੀਂ ਸੀ ਪਰ ਉਹ ਇਹ ਸਮੱਸਿਆ ਦੀ ਸੰਜੀਦਗੀ ਨੂੰ ਜ਼ਰੂਰ ਦਰਸਾਉਣਾ ਸੀਗਾ ਕਿ ਉਹਨਾਂ ਨੇ ਮਤਾ ਪਾਸ ਕੀਤਾ ਸੀ ਸਿਟੀ ਆਫ ਵਾਸਤੇ ਕਿ ਵੀ ਫਲਾਣੇ ਫਲਾਣੇ ਏਰੀਆ ਦੇ ਵਿੱਚ ਤੁਸੀਂ ਨਵੇਂ ਜਿਹੜੇ ਘਰਾਂ ਦੀ ਜਿਹੜੀ ਹੈਗੀ ਕੰਸਟ੍ਰਕਸ਼ਨ ਬੰਦ ਕਰ ਦਿਓ ਕਿਉਂਕਿ ਇੱਥੇ ਬੱਚੇ ਅਸੀਂ ਸਕੂਲਾਂ 'ਚ ਹੋਰ ਬਾੜ ਨਹੀਂ ਸਕਦੇ ਬੱਚੇ ਇਹਨੇ ਉਹ ਵੀ ਗੱਲ ਜਿਹੜੀ ਇਹਨਾਂ ਨੇ ਉਦੋਂ ਨਹੀਂ ਸੁਣੀ ਮੈਂ ਇੱਕ ਮਦਰ ਨੂੰ ਜਾਣਦਾ ਗੱਲ ਸਾਹਿਬ ਜੀ ਦੇ ਤਿੰਨ ਬੱਚੇ ਆ ਤੇ ਤਿੰਨ ਬੱਚੇ ਤਿੰਨ ਵੱਖਰੇ ਵੱਖਰੇ ਸਕੂਲਾਂ 'ਚ ਪੜ੍ਹਦੇ ਆ ਕਿਉਂਕਿ ਉਹ ਕਹਿੰਦੇ ਸਾਰੇ ਸਕੂਲਾਂ ਦੇ ਵਿੱਚੋਂ ਕਹਿੰਦੇ ਇੱਕੋ ਹੀ ਬੱਚਾ ਸੀ ਲੈ ਸਕਦਾ ਹੋਰ ਸਾਡੇ ਕੋਲ ਸਪੇਸ ਨਹੀਂ ਆ ਸੋ ਇਹ ਹਾਲਾਤ ਨੇ ਪਰ ਸਰਕਾਰ ਨੇ ਅੱਜ ਜਿਹੜਾ ਚੋਣਾਂ ਤੋਂ ਪਹਿਲਾਂ ਆ ਕੇ ਜਿਹੜਾ ਇਹ ਐਲਾਨ ਕੀਤਾ ਇਹ ਐਲਾਨ ਦਾ ਵੀ ਹੁਣ ਪਤਾ ਨਹੀਂ ਇਹ ਸ਼ੁਰੂ ਕਦੋਂ ਹੋਣਾ ਤੇ ਖਤਮ ਕਦੋਂ ਹੋਣਾ ਜਦੋਂ ਨੂੰ ਜੇ ਸ਼ੁਰੂ ਹੋਇਆ ਤੇ ਖਤਮ ਹੋਇਆ ਜੇ ਹੁੰਦਾ ਤਾਂ ਉਹ ਤੁਹਾਨੂੰ 7000 ਤੋਂ ਵੱਧ ਬੱਚੇ ਜਿਹੜੇ ਫੇਰ ਬਚ ਜਾਣਗੇ ਪਰ ਪੀਸੀ ਦੀ ਚੋਣ ਦੇ ਵਿੱਚ ਤੁਹਾਨੂੰ ਪਤਾ ਕਿ ਕ੍ਰਿਸ਼ਤੀ ਕਲਾਰਕ ਸਾਹਿਬਾ ਨੇ ਕਰਕੇ ਤੇ ਉਹ ਨਹੀਂ ਹੋਇਆ ਉਹਨਾਂ ਵੱਡਾ ਵਾਅਦਾ ਤਾਂ ਵੀ ਨਹੀਂ ਹੋਇਆ ਮੇਰੇ ਸਮਝ ਮਦਾਵ ਚੋਣ ਜਿੱਤਣ ਵਾਸਤੇ ਕਿ ਇਹਨੇ ਵਾਅਦਾ ਕੀਤਾ ਸੀ ਕਿ ਬੀਸੀ ਦੇ ਵਿੱਚ ਮੈਂ 12 ਪਲਾਂਟ ਲਾਉਂਗੀ ਐਲ ਐਨ ਜੀ ਦੇ ਇੱਕ ਵੀ ਲੱਗਿਆ ਅਜੇ ਤੱਕ 1 ਲੱਖ ਜੋਬ ਪੈਦਾ ਹੋਊਗਾ ਉਹਦੇ ਵਿੱਚੋਂ ਇੱਕ ਜੋਬ ਪੈਦਾ ਨਹੀਂ ਹੋਈ ਆਪਣੀ ਕ੍ਰਿਸ਼ਤੀਕਰ ਸਾਹਿਬ ਉਹ ਜੋਬ ਪੈਦਾ ਹੋਈ ਹੈ ਇੱਕ 100 ਬਿਲੀਅਨ ਡਾਲਰ ਦੇ ਚੁੱਕੇ ਸੀ ਕਰਜ਼ਾ ਸਾਰਾ ਕਰਜ਼ਾ ਜਿਹੜਾ ਬੀਸੀ ਸੋ ਇਹ ਅਨਾਤ ਨੇਗੇ ਹੁਣ ਆ ਕੇ ਸਰੀ ਦੇ ਵਿੱਚੋਂ ਜਦੋਂ ਪਤਾ ਸੀਟਾਂ ਸਾਡੀਆਂ ਕੰਪੇਟਿਟਿਵ ਹੋ ਤਾਂ ਹੁਣ ਇਸ ਤਰ੍ਹਾਂ ਦੇ ਐਲਾਨਾਮੇ ਚੋਣਾਂ ਤੋਂ ਪਹਿਲਾਂ ਹੋ ਰਏ ਅੱਛਾ ਜੀ ਹੁਣ ਜਿਹੜਾ ਐਲਾਨ ਕੀਤਾ ਉਹਦੇ ਵਿੱਚ ਸਾਰਥਕ ਲੱਗਦਾ ਤੁਹਾਨੂੰ ਵਿਰੋਧੀ ਧਿਰ ਦੇ ਵੀ ਦੇਖਣਾ ਹੋਵੇ ਜਾਂ ਇੱਕ ਸ਼ਹਿਰ ਦੇ ਬਸੰਦੇ ਦੇ ਤੌਰ ਤੇ ਦੇਖਣਾ ਹੋਵੇ ਬਸੰਦੇ ਦੇ ਤੌਰ ਤੇ ਕਿਵੇਂ ਲੱਗਦਾ ਕੀਤੇ ਕੋਲ ਜਿਲ੍ਹ ਸਾਹਿਬ ਦਾ ਚਾਹੇ ਉਹ ਸਰਕਾਰ ਆਵੇ ਸਰਕਾਰ ਹੋਵੇ ਪੈਸਾ ਪਿਆ ਲੇਕਿਨ ਉਹ ਕਿੱਥੇ ਲਾਉਣਾ ਸਰਕਾਰ ਦੀ ਆਪਣੀ ਚੋਇਸ ਹੁੰਦੀ ਹੈ ਇਹਨਾਂ ਨੇ ਕੀ ਕੀਤਾ ਕਿ ਜੇ ਆਪਾਂ ਪਿਛਲੇ 4 ਸਾਲ ਹੀ ਦੇਖੀਏ ਤਾਂ ਕ੍ਰਿਸ਼ਟੀ ਕਲਰਕ ਸਹਿਬਾ ਨੇ ਜਿਹੜਾ ਲੋਕ ਨੇ ਉਹਨਾਂ ਨੂੰ ਦਿੱਤਾ ਔਰ ਜਿਹੜਾ ਉਹ ਟੈਕਸ ਛੋੜ ਦਿੱਤੀ ਗਈ ਉਹਦੇ ਖਜ਼ਾਨੇ ਦੇ ਵਿੱਚ 1 ਬਿਲੀਅਨ ਡਾਲਰ ਦੀ ਘਾਟ ਵੀ 1 ਬਿਲੀਅਨ ਡਾਲਰ ਆ 1 ਬਿਲੀਅਨ ਤੇ ਉਹਨੇ ਨਾਲ ਤਾਂ ਤੁਸੀਂ ਜਿਹੜੇ بڑے ਸਕੂਲ ਬਣਾ ਸਕਦੇ ਹੋ ਪਰ ਇਹਨਾਂ ਨੇ ਪੈਸਾ ਉੱਥੇ ਖਰਚ ਕੀਤਾ ਅਸੀਂ ਕੀਤਾ ਐ ਪੀ ਦੇ ਲੀਡਰ ਨੇ ਅੱਜ ਤੋ ਕੋਈ ਜਿਹੜਾ ਹੈਗਾ 7-8 ਮਹੀਨੇ ਪਹਿਲਾਂ ਐਲਾਨ ਕੀਤਾ ਸੀਗਾ ਕਿ ਜੇ ਐਨਡੀਪੀ ਸਰਕਾਰ ਬਣ ਗਈ ਆ ਤਾਂ ਸੱਤ ਦੇ ਸਾਲਾਂ ਦੇ ਵਿੱਚ ਜਿਹੜੀ ਹੈ ਨਵੇਂ ਸਕੂਲ ਬਣਾ ਕੇ ਉਹਨਾਂ ਦੇ ਵਿੱਚੋਂ ਮੂਵ ਕੀਤਾ ਜਾਊਗਾ ਅੱਜ ਉਸ ਦਬਾਅ ਥੱਲੇ ਆ ਕੇ ਇਹਨਾਂ ਨੇ ਜਿਹੜਾ ਇੱਥੇ ਜਿਹੜਾ ਨਵਾਂ ਜਿਹੜਾ ਐਲਾਨ ਕਰਕੇ ਜਿਹੜੀ ਚੋਣ ਦੇ ਦਰਮਿਆਨ ਜਿਹੜੀ ਹੈਗੀ ਨਾ ਗੱਲਬਾਤ ਦਾ ਆਪਣਾ ਇੱਕ ਹੱਲ ਲੱਭਿਆ ਸੋ ਅਦਰਵਾਈਜ਼ ਜਿਹੜਾ ਇਹਨਾਂ ਨੇ ਜੇ ਪੈਸਾ ਕਹਿੰਦੇ ਵੀ 150 ਮਿਲੀਅਨ ਡਾਲਰ ਲੱਗੂਗਾ ਕਈ ਵਾਰੀ ਉਹਦੇ 150 ਮਿਲੀਅਨ ਡਾਲਰ ਦਾ 400 ਮਿਲੀਅਨ ਡਾਲਰ ਹੋ ਜੇ ਪਿੱਛੇ ਜਾਈਏ ਪ੍ਰੋਜੈਕਟਸ ਦੇਖੀਏ ਆਪਾਂ ਲੇਕਿਨ ਕੁੱਲ ਮਿਲਾ ਕੇ ਗੱਲ ਮੈਂ ਕਹਿਣੀ ਚਾਹੁੰਨਾ ਇਹਦੀ ਲੋੜ ਹੈ ਕਿਉਂਕਿ ਸਿਟੀ ਅਫਸਰੀ ਜਿੰਨੇ ਖਜ਼ਾਨੇ ਭਰਿਆ ਤੁਹਾਨੂੰ ਪਤਾ ਗਿੱਲ ਸਾਹਿਬ ਵੀ ਸਭ ਤੋਂ ਵੱਡਾ ਟੈਕ ਸਰਕਾਰ ਨੂੰ ਪਿਛਲੇ ਸਾਲਾਂ ਦੇ ਵਿੱਚ ਜਿਹੜੇ ਹਾਊਸਿੰਗ ਦਾ ਜਿਹੜਾ ਇੰਡਸਟਰੀ ਦੇ ਵਿੱਚੋਂ ਗਿਆ ਜਿਹੜਾ ਆਪਣਾ ਟੈਕਸ ਮਿਲਦਾ ਉਹਦੇ ਵਿੱਚੋਂ ਤੇ ਸਭ ਤੋਂ ਵੱਧ ਘੱਟ ਤੁਹਾਨੂੰ ਪਤਾ ਸਰੀਚ ਬਣੇ ਆ ਸਰੀ ਵਿੱਚ ਖਜ਼ਾਨਾ ਭਰਿਆ ਦੇ ਬੱਚਿਆਂ ਵਾਸਤੇ ਸਕੂਲ ਕਿਉਂ ਨਹੀਂ ਬਣਾ ਸੋ ਮਾ ਵਾਲਿਆਂ ਨੂੰ ਅਖੀਰ 'ਚ ਕੀ ਕਹਿਣਾ ਚਾਹੁੰਦੇ ਹੋ ਜੀ ਤੇ ਵੋਟਾਂ 100 ਦਿਨ ਲੰਘਦੇ ਕੁਝ ਨਹੀਂ ਪਤਾ ਲੱਗਣਾ ਕਿਹੜੇ ਕਿਹੜੇ ਹੋਰ ਇੱਕ ਦੋ ਮਿੰਟ ਤੁਹਾਡੇ ਕੋਲ ਨੇ ਕੁਝ ਹੋਰ ਮੁੱਦੇ ਨੇ ਜਿਹੜੇ ਤੁਸੀਂ ਦੱਸਣਾ ਚਾਹੋ ਮੈਂ ਇਹ ਕਹਿਣਾ ਚਾਹੁੰਦਾ ਜੀ ਕਿ ਅੱਜ 16 ਸਾਲ ਸਰਕਾਰ ਬਣੀ ਹੋ ਗਏ ਆ। ਸਰੀ ਦੇ ਵਿੱਚ ਆਮ ਲੋਕਾਂ ਦੇ ਵਿੱਚ ਅੱਥ ਗੱਲ ਸੀ ਵੀ ਜਾਂ ਆਪਾਂ ਇਕਨੋਮੀ ਦੀ ਗੱਲ ਕਰ ਲਈਏ ਜਾਂ ਖਾਸ ਕਰਕੇ ਜਿਹੜੀ ਕੰਸਟਰਕਸ਼ਨ ਇੰਡਸਟਰੀ ਦੀ ਗੱਲ ਕਰ ਲਈਏ ਉਹ ਲੋਕਾਂ ਨੇ ਪ੍ਰਾਈਵੇਟ ਸੈਕਟਰ ਨੇ ਬਹੁਤ ਵੱਡਾ ਹਿੱਸਾ ਪਾ ਕੇ ਬੜੀ ਵੱਡੀ ਘਰ ਬਣਾ ਕੇ ਜਾਂ ਇੱਥੇ ਸੜਕਾਂ ਤੇ ਉਹ ਬਣ ਚੁੱਕੀਆਂ ਆਪਣਾ ਸਿਟੀ ਹਾਲ ਨੇ ਕੰਮ ਕੀਤਾ। ਪਰ ਜਿਹੜਾ ਬੀਸੀ ਲਿਬਰਲ ਸਰਕਾਰ ਦਾ ਕੰਮ ਸੀ ਜਿਹੜੇ ਪਾਸੇ ਨਿਗਾਹ ਮਾਰਦੇ ਆ ਉੱਥੇ ਮੈਸੇਜ ਨਹੀਂ ਜੀ ਅ ਜੁਕੇਸ਼ਨ ਸਿਸਟਮ ਦੀ ਗੱਲ ਕਰੀਏ ਤੁਹਾਨੂੰ ਆ ਇਸ ਤੋਂ ਇਲਾਵਾ ਨੇ ਧੱਕੇ ਨਾਲ ਜਿਹੜਾ ਕੀਤਾ ਸੀਗਾ ਉਹ ਕਰਦੇ ਆਏ ਹੁਣ ਸੁਪਰੀਮ ਕੋਰਟ ਆਫ ਕੈਨੇਡਾ ਨੇ ਕਹਿਤਾ ਵੀ ਇਹ ਤੁਸੀਂ ਧੱਕੇ ਨਾਲ ਐਗਰੀਮੈਂਟ ਕਰ ਟੀਚਰਾਂ ਕੋਲੇ ਹੱਕ ਹੈ ਕਲਾਸ ਸਾਈਜ਼ ਦੀ ਗੱਲਬਾਤ ਕਰਨ ਦਾ ਕੰਪੋਜੀਸ਼ਨ ਦੀ ਗੱਲਬਾਤ ਕਰਨ ਦਾ ਤੇ ਤੁਸੀਂ 300 ਹੋਣ ਜਿਹੜਾ ਹੈਗਾ ਮਿਲੀਅਨ ਡਾਲਰ ਦਾ ਉਹ ਜਿਹੜਾ ਉਹਨਾਂ ਨੇ ਉਹਨਾਂ ਨੂੰ ਵਾਇਟ ਕੀਤੀ ਆ ਔਰ ਇਹਦਾ ਮਤਲਬ ਇਹ ਹੈ ਕਿ 10 ਸਾਲ ਜਿਹੜੇ ਸਕੂਲਾਂ ਦੇ ਗੱਲ ਦੇਖੀਏ ਤੁਹਾਨੂੰ ਪਤਾ ਵੀ ਗੋਲੀ ਮੈਂ ਤਾਂ ਕਹਿੰਦਾ ਨਾ ਚੱਲੇ ਤਾਂ ਸਮਝ ਲੈ ਇਸ ਵੀ ਚੰਗਾ ਸਮਾਂ ਸਾਡਾ ਆ ਗਿਆ ਹਰ ਜਿਹੜੀ ਰੋਜ਼ ਇੱਥੇ ਗੋਲੀ ਚੱਲਦੀ ਹੈ ਜੋ ਚੱਲ ਰਿਹਾ ਤੇ ਜੇ ਆਪਾਂ ਹਸਪੀਟਲ ਦੀ ਗੱਲ ਕਰੀਏ ਉੱਥੇ ਕੋਈ ਇੰਪਰੂਵਮੈਂਟ ਨਹੀਂ ਹੈ ਤੇ ਜਿਹੜਾ ਉਸ ਤੋਂ ਇਲਾਵਾ ਜਿਹੜਾ ਨੇ ਜਾਂ ਟਰੱਕਿੰਗ ਨੇ ਤੁਹਾਨੂੰ ਪਤਾ ਹੀ ਹੈ ਕਿ ਉਹਨਾਂ ਨੂੰ ਵੀ ਜਿਹੜਾ ਤੇ ਚੰਗਿਆ ਹੋਇਆ ਕਿ ਅਸੀਂ ਉਹਨਾਂ ਨਾਲ ਹੁਣ ਕੀ ਹੋਣਾ ਕੀ ਨਹੀਂ ਮੈਂ ਆਖਰ ਤੇ ਗੱਲ ਸਿਰਫ ਇਹ ਕਹਿਣੀ ਚਾਹੁੰਦਾ ਕਿ ਪੀਟਰ ਫਾਸਬਿੰਡਲ ਸਾਹਿਬ ਇਥੋਂ ਦੇ ਸਭ ਤੋਂ ਸੀਨੀਅਰ ਮੰਤਰੀ ਨੇ ਉਹ ਐਜੂਕੇਸ਼ਨ ਦੇ ਮਿਨਿਸਟਰ ਵੀ ਰਹੇ ਆ ਪਰ ਉਹਨਾਂ ਦੇ ਹੁੰਦੇ ਵੀ ਉਹਨਾਂ ਨੇ ਬੀਸੀ ਲਿਬਰ ਸਰਕਾਰ ਤੋਂ શરી ਨੂੰ ਕੁਝ ਨਹੀਂ ਦਿਵਾ ਸਕੇ ਨਾ ਉਹਨਾਂ ਦੇ ਹੁੰਦੇ ਉਹ ਪਬਲਿਕ ਸੇਫਟੀ ਦਾ ਫੈਸਲਾ ਨਹੀਂ ਕਰ ਸਕੇ ਉਹਨਾਂ ਦੇ ਹੁੰਦੇ ਜਿਹੜੀਆਂ ਦੋ ਫੈਲਾ ਨੂੰ ਫੜਾਈਆਂ ਗਈਆਂ ਤੇ ਉਬੜ ਦੀ ਸੀ ਤੇ ਟਰੱਕਿੰਗ ਦੀ ਸੀ ਉਹ ਹਲੇ ਤੱਕ ਤੁਹਾਨੂੰ ਪਤਾ ਹੈ ਵੀ ਵੀ ਚੌਣ ਕੇ ਉਹਦਾ ਨਾ ਕੁਝ ਕੱਢ ਕੇ ਲੋਕਾਂ ਦੇ ਸਾਹਮਣੇ ਪੇਸ਼ ਕਰਨਾ ਸੋ ਇਹ ਜਿਹੜੀ ਕਾਰਗੁਜ਼ਾਰੀ ਹੈਗੀ ਸਰਕਾਰ ਦੀ ਤੇ ਲੋਕ ਆਪ ਇਹਨੂੰ ਧਿਆਨ ਦੇ ਨਾਲ ਵੇਖੜ ਤੇ ਧਿਆਨ ਨਾਲ ਦੇਖ ਕੇ ਜਿਹੜੀ ਅਗਲੀ ਚੋਣ ਦੇ ਵਿੱਚ ਉਸ ਹਸਾਬ ਦੇ ਨਾਲ ਤੁਹਾਡੇ ਸਮੇ ਲਈ। ਥੈਂਕ ਯੂ। ਜੇ ਸਾਹਿਬ ਤੁਹਾਡਾ ਬਹੁਤ ਸ਼ੁਕਰੀਆ ਸਮਾਂ ਦੇਣ ਵਾਸਤੇ ਮਿਹਰਬਾਨੀ। ਜੰਨਾਂ ਲਫ ਚੁੱਕੀਆਂ ਨੇ ਤੀਰੋ ਹੋਸ਼ ਵਿੱਚ ਆਓ। ਜ਼ੰਜ਼ੀਰਾਂ ਅਮੀਰੋ ਹੋਸ਼ ਵਿੱਚ ਆਓ। ਤਾਜ਼ ਬਗਲੀ ਵਿੱਚ ਫਕੀਰੋ ਹੋਸ਼ ਵਿੱਚ ਆਓ। ਜਨਤਾ ਜਾਗ ਪਈਏ ਵਜ਼ੀਰੋ ਹੋਸ਼ ਵਿੱਚ ਆਓ। ਸ਼ਿਬਰਾ ਨੇ ਵਧੀਆ ਲਿਖਿਆ। ਵਪਾਰਕ ਸੰਦੇਸ਼ 11:42 ਹੋ ਚੁੱਕੇ ਹੈ ਜੀ। ਹੁਣ ਨਰੇਸ਼ ਸ਼ੁਕਲਾ ਜੀ ਨਾਲ ਮਦਰ ਇੰਡੀਆ ਤੋਂ ਗੱਲਬਾਤ ਕਰਾਂਗੇ ਉਹਨਾਂ ਦੇ ਨਵੇਂ ਬਾਰੇ ਜਿਸ ਦੀਆਂ ਸਾਰੇ ਨਰੇਸ਼ ਸ਼ੁਕਲਾ ਜੀ ਤੁਹਾਡਾ ਤੁਹਾਨੂੰ ਤੇ ਪ੍ਰੋਗਰਾਮ ਸੁਣਨ ਵਾਲੇ ਸਾਰੇ ਭੈਣ ਭਰਾਵਾਂ ਨੂੰ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਅੱਛਾ ਜੀ ਜਿਹੜਾ ਆਸਟ੍ਰੇਲੀਆ ਵਾਲਾ ਤੁਹਾਡਾ ਦਫ਼ਤਰ ਹੈ ਬ੍ਰਿਸਬਨ ਦੇ ਵਿੱਚ ਆਫਿਸ ਹੈ ਸੋਰੀ ਉਦੇ ਉਸ ਦੇ ਬਾਰੇ ਥੋੜਾ ਜਿਹਾ ਹੋਰ ਸਮਝਾਇਆ ਕਿਉਂਕਿ ਜਿਹੜੇ ਬਾਹਰ ਉੱਥੇ ਮੈਲਬੌਰਨ ਤੇ ਸਿਡਨੀ ਦੇ ਵਿੱਚ ਰਹਿੰਦੇ ਲੋਕ ਉਹਨਾਂ ਨੇ ਇੱਕ ਦੋ ਵਾਰ ਉਹ ਦੋ ਤਿੰਨ ਮੈਸੇਜ ਜਿਓ ਸਾਡੀ ਗੱਲ ਨਹੀਂ ਉੱਥੇ ਹੋ ਸਕੀ ਜੇ ਉੱਥੇ ਨਹੀਂ ਗੱਲ ਹੁੰਦੀ ਫਿਰ ਕਿਹਦੇ ਨਾਲ ਗੱਲ ਕਰਾਂ ਜਾਂ ਕੋਈ ਆਨਲਾਈਨ ਜਦੋਂ ਆਰਡਰ ਕਰਦੇ ਉਹਨਾਂ ਨੂੰ ਕੁਝ ਮੁਸ਼ਕਲ ਆ ਰਹੀ ਹੈ ਹਾਂਜੀ ਜਿਹੜੇ ਵੀ ਭੈਣ ਭਰਾ ਸਾਡੇ ਆਸਟ੍ਰੇਲੀਆ ਵਿੱਚ ਆਪਣੇ ਫੋਨ ਉਹਨਾਂ ਨੇ ਮੈਂ ਦੱਸ ਦਿੰਨਾ ਸਾਡੇ ਅ ਕਦਾ ਆਪਣਾ ਇਹ ਸਟੋਰ ਹੈਗਾ ਮਦਰ ਇੰਡੀਆ ਦਾ ਉਹਦਾ ਐਡਰੈਸ ਹੈਗਾ ਯੂਨਿਟ ਨੰਬਰ 18549 ਰੌਚਦੇਵ ਸ਼ਾਪਿੰਗ ਵਿਲੇਜ ਔਰ ਟੈਲੀਫੋਨ ਉਹਦਾ ਨੋਟ ਕਰੋ ਪਲੀਜ਼ ਮੈਂ ਸਲੋਲੀ ਬੋਲਦਾ लास्ट ਟਾਈਮ ਮੈਂ ਉਸ ਦਿਨ ਤਿੰਨ ਚਾਰ ਕਾਲ ਸੰਗਿਆ ਸੀ ਗਿਆ ਤੁਸੀਂ ਨੰਬਰ ਟੈਲੀਫੋਨ ਬਹੁਤ ਫਾਸਟ ਬੋਲਦੇ ਹੋ ਏਰੀਆ ਕੋਡ 7 33415336 ਇੱਥੇ ਤੁਸੀਂ ਵਿਨੇ ਲੜਕੇ ਨਾਲ ਗੱਲ ਕਰ ਸਕਦੇ ਹੈਗੇ ਆਂ ਔਰ ਇਸ ਸਟੋਰ ਤੋਂ ਅਸੀਂ ਬ੍ਰਿਸਬਨ ਦੇ ਵਿੱਚ ਸਾਰੇ ਆਸਟ੍ਰੇਲੀਆ ਤੇ ਚੀਜੀ ਤੇ ਨਿਊਜ਼ੀਲੈਂਡ ਤੋਂ ਜਿੰਨੇ ਵੀ ਆਰਡਰ ਆਂਦੇ ਨੂੰ ਸਾਰੇ ਮੇਲ ਕਰਦੇ ਆ ਕਿ ਜਿੰਨੇ ਸਾਡੇ ਸੰਦੇ ਹੈਗੇ ਆ ਇਹ ਸਾਡਾ ਆਫਿਸ ਬ੍ਰਿਸਬਨ ਦੇ ਵਿੱਚ ਹੈਗਾ 549 ਰੋਚਲ ਸ਼ਾਪਿੰਗ ਵਿਲੇਜ ਅ ਟੈਲੀਫੋਨਿਕ ਕੋਰਿਡੋਰ ਦੱਸਦੇ ਆ ਯੂਨੰਡਮ ਏਰੀਆ ਕੋਡ 733415336 ਅਗਰ کسی اگر تھوڑا ٹیلی فون انہوں نے نہیں جانتا یا نہیں ملدا تو سی مینوں پرسنلی تھیکاؤ کر سکدے ہیں 604 430 6072 اسی امیڈیٹلی تھانو کال کران گے اور تھانو ਸਾਡੇ ਆ گئے اڈی بارے بھی جانکاری دوں ਆ ਲਾਭੀ ਕੇ 2-4 ਜਰ ਦੇ ਫੋਨ ਆਈ ਸੀ ਉਹ ਕਹਿੰਦੇ ਸੀ ਆ ਇਹ ਕਿ ਕਿੱਦਾਂ ਯੂਜ਼ ਕਰਨੀ ਆ ਪਲੀਜ਼ ਥੋੜਾ ਆ ਤਾਂ ਇੱਕ ਬਾਕਸ ਦੇ ਵਿੱਚ 5 ਪੈਕੇਟ ਆਂਦੇ ਆ ਇੱਕ ਪੈਕੇਟ ਨੂੰ ਹੀ ਤੁਸੀਂ ਬਾਹਰ ਕੱਢਣਾ ਹੈਗਾ ਉਹਨੂੰ ਕੈਂਚੀ ਨਾਲ ਪੂਰਾ ਕੱਟ ਕੇ ਕੌਲੀ ਵਿੱਚ ਸਾਰਾ ਕੁਝ ਪਤਾ ਪਾ ਦੇਣਾ ਹੈ ਬਿਕ ਦੇ ਵਿੱਚ ਫਿਰ ਤੁਸੀਂ ਮੇਕ ਸ਼ੋਰ ਕਰਿਓ ਉਹਨੂੰ ਚੰਗੀ ਤਰ੍ਹਾਂ ਮਿਕਸ ਕਰਦੇ ਹੋ ਮਿਕਸ ਕਰਨ ਤੋਂ ਬਾਅਦ ਹੱਥ ਵਿੱਚ ਗਲਵਜ਼ ਜ਼ਰੂਰ ਪਾਣੇ ਆ ਗਲਬਿਸ ਕਰਕੇ ਪਾਣੀ ਤਾਂ ਕਿ ਤੁਹਾਡੇ ਨਹਾਉਣਾ ਲੱਗੇ ਬਾਲਾਂ ਨੂੰ ਥੋੜਾ ਜਿਹਾ ਪਾਣੀ ਨਾਲ ਗਿੱਲਾ ਜ਼ਰੂਰ ਕਰ ਲਿਓ ਦਾੜੀ ਨੂੰ ਮੋਛਾਂ ਨੂੰ ਤੁਸੀਂ ਬਾਲਾਂ ਨੂੰ ਬਾਲਾਂ ਨੂੰ ਧੋਣ ਤੋਂ ਬਾਅਦ ਤੁਹਾਨੂੰ ਥੋੜੀ ਸਕਿਨ ਨੂੰ ਟੱਚ ਨਹੀਂ ਕੀਤਾ ਇਹਨਾਂ ਤੱਬ ਵਿੱਚ ਤੁਹਾਡਾ ਕੋਈ ਵੀ ਬਲੈਕ ਮਾਰਕ ਨਹੀਂ ਆਣਾ ਹੈਗਾ ਔਰ ਟਾਈਮ ਲੱਗਦਾ ਸਿਰਫ 7 ਮਿੰਟ ਤੁਹਾਡੇ ਬਾਲਾਂ ਦੇ ਵਿੱਚ ਤਕਰੀਬਨ 1 ਮਹੀਨਾ ਨਿਕਲਦਾ ਲੇਕਿਨ ਦਾੜੀ ਦੇ ਵਿੱਚ ਤੁਹਾਡੀ ਗਰੋਥ ਜਲਦੀ ਆ ਜਾਂਦੀ ਆ ਉਹ ਤੁਹਾਨੂੰ ਮੈਂ ਕਹਾਂ 10-12 ਦਿਨ ਮਗਰੋਂ ਤੁਹਾਨੂੰ ਜਦ ਮੈਕਸਿਮਮ ਮੈਂ ਕਹ ਦੋ ਵੀ ਕੰਮ ਰੋਂ ਲਾਣਾ ਪਏਗਾ ਔਰ ਇਹ ਕਿ ਇਰਚੋਮੋਨੀਆ ਨਹੀਂ ਹੈ ਕੈਮੀਕਲਸ ਨਹੀਂ ਹੈ ਗਰਬਲ ਪੀਸ ਹੈਗਾ ਇਹਦੀ ਦੱਸ ਦਿਆਂ ਨਾਲ ਕਿ ਇਹ ਪ੍ਰੋਡਕਟਸ ਇੰਡੀਆ 'ਚ ਹਜੇ ਅਵੇਲੇਬਲ ਨਹੀਂ ਹੈ ਕਿਉਂਕਿ ਇਹ ਪ੍ਰੋਡਕਟਸ ਇਸ ਦੇ ਜਰਮਨ ਚ ਬਣਾਇਆ ਗਿਆ ਇਹਦੀ ਕਲੀਨਿੰਗ ਮੈਨੂਫੈਕਚਰਿੰਗ ਪੈਕੇਜਿੰਗ ਸਾਰੀ ਜਰਮਨ ਚ ਕਰਾਈ ਹੈਗੀ ਆ ਔਰ ਮੈਂ ਲਾਸਟ ਵੀਕ ਅਸੀਂ ਇੱਕ ਬੋਤਲ ਤਿਆਰ ਕਰ ਲਈ ਆ ਉਹ ਬੋਤਲ ਦੇ ਵਿੱਚ ਆਲਰੇਡੀ ਮਿਕਸ ਕੀਤਾ ਆ ਤੁਸੀਂ ਕੁਝ ਨਹੀਂ ਕਰਨਾ ਉਹਦੇ ਉੱਤੇ ਇੱਕ ਲੱਗਾ ਆ ਟੂਥਪੇਸ ਰੋਗ ਬ੍ਰਸ਼ ਲੱਗਾ ਆ ਇੱਕ ਬਟਨ ਲੱਗਾ ਆ ਸਵਿਚ ਲੱਗਾ ਆ ਉਹਨੂੰ ਬਸ ਬਟਨ ਨੂੰ ਦਬਾਓ ਜਿੰਨੀ ਲੋੜ ਹੈ ਉਹ ਬ੍ਰਸ਼ ਉੱਤੇ ਉਹਨਾ ਹੀ ਆ ਜਾਣਾ ਜਿੱਥੇ ਤੁਹਾਨੂੰ ਦਾੜ੍ਹੀ ਦੇ ਵਿੱਚ ਮੋਛਾਂ ਦੇ ਵਿੱਚ ਜਾਂ ਆਈਬ੍ਰੋ ਨੂੰ ਬੋਟਲ ਤੁਹਾਡੀ 6 ਜਾਂ 7 ਮਹੀਨੇ ਨਿਕਲ ਜਾਏਗੀ ਤੁਹਾਨੂੰ ਲਾਣ ਦੀ ਲੋੜ ਨਹੀਂ ਕਹਿੰਨੀ ਜਾਂ 7 ਮਹੀਨੇ ਉਹ ਟੱਚ ਅਪ ਹੋਰ ਜਿਹੜੇ ਕੁਝ ਪ੍ਰੋਡਕਟ ਨੇ ਸਕਿਨ ਦੇ ਜਾਂ ਘਰ ਦੇ ਅਰਗਬਤੀਆਂ ਜਾਂ ਕੁਝ ਖਾਨ ਪੀਣ ਵਾਲੇ ਕੁਝ ਤੁਹਾਡੇ ਕੋਲ ਹਰਬਲ ਦਵਾਈਆਂ ਸਾਡੀ ਲਾਸ ਡਿਗਰੀ ਹੀ ਹॉट ਆਈਟਮ ਰਹੀ ਹੈ ਆ ਨੀਮ ਤੇ ਤੂਫੀ ਫੇਸ ਵਾਸ਼ ਤੇ ਨਾਲ ਸਕਿਨ ਮਦਰ ਇੰਡੀਆ ਦੀ ਇਹ ਜਿਹੜੇ ਕਿ ਅੱਖਾਂ ਥੱਲੇ ਬਲੈਕ ਸਰਕਲ ਆ ਜਾਂਦੇ ਆ ਜਾਂ ਬਲੈਕ ਛਾਗੀਆਂ ਥਾਡੀਆਂ ਉਹਨਾਂ ਨੂੰ ਦੂਰ ਕਰਦਾ ਆ ਮਦਰ ਇੰਡੀਆ ਦੀ ਸਕਿਨ ਸਕ੍ਰੀਨ ਹੈ ਇਹ ਤੁਹਾਨੂੰ ਗਰੋ ਕਰਦੀ ਹੈਗੀ ਆ ਇਹ ਬਹੁਤ ਹੀ ਲਾਸਟ ਵੀ ਆ ਕਾਫੀ ਬਣ ਪ੍ਰਮਾਨੀ ਪਸੰਦ ਕੀਤੀ ਕਾਫੀ ਲੈ ਕੇ ਗਏ ਹੈਗੇ ਆ ਇਸ ਤੋਂ ਇਲਾਵਾ ਸਾਡੇ ਕੋ ਮਦਰ ਇੰਡੀਆ ਦੀ ਅਜ਼ਰਬਤੀ ਇੱਕ ਨੌਰਥ ਅਮਰੀਕਾ ਦੇ ਵਿੱਚ ਇੱਕੋ ਹੀ ਮਦਰ ਇੰਡੀਆ ਦੀ ਅਜ਼ਰਬਤੀ ਕੋਈ ਕੈਮੀਕਲ ਨਹੀਂ ਹੈ ਕਾਲਾ ਧੂਆ ਨਹੀਂ ਹੈ ਤੁਹਾਡੀਆਂ ਛੱਤਾਂ ਦਵਾਰਾਂ ਦੇ ਵਿੱਚ ਜਾਂ ਤੁਹਾਨੂੰ ਛਿੱਕਾਂ ਨਹੀਂ ਲੱਗਣਗੀਆਂ ਅੱਖਾਂ 'ਚ ਪਾਣੀ ਨਹੀਂ ਆਊਗਾ ਜਦ ਵੀ ਤੁਸੀਂ ਅਜ਼ਰਬਤੀ ਯੂਜ਼ ਕਰਨੀ ਆ ਤੁਸੀਂ ਟਰਾਈ ਕਰੋ ਅਗਰ ਨਹੀਂ ਜੋ ਉਸ ਮਦਰ ਇੰਡੀਆ ਦੀ ਅਜ਼ਰਬਤੀ ਜਾਂ ਤੁਸੀਂ ਮਦਰ ਇੰਡੀਆ ਦੇ ਸਟੋਰ ਤੋਂ ਲੈ ਸਕਦੇ ਹੋ ਜਾ ਤੁਸੀਂ ਕਿਸੇ ਵੀ ਭਾਰਤੀ ਅਗੋਸਿਸ ਵਰਤਦੇ ਲੱਗਦੇ ਹੈਗੇ ਆ ਤੁਸੀਂ ਜਰੂਰ ਟਰਾਈ ਕਰੋ ਇਹ ਨੇਚਰਲ ਹੈ ਗਿਆ ਫ੍ਰੈਗਰੈਂਸ اور ਬਹੁਤ ਹੀ ਅੱਛੀ ਸੁਗੰਧ ਥਾਲੂ ਤੁਹਾਡੇ ਕਰਜਾ ਆਫ ਚ ਆਏਗੀ ਇਸ ਮਦਰ ਇੰਡੀਆ ਦੇ ਹਰਬਲ ਪਾਊਡਰ ਡਾਇਬੀਟੀ ਵੇਟ ਲਾਸ ਅੱਖਾਂ ਵਿੱਚ ਤੁਹਾਨੂੰ ਹੈਗਾ ਇਹ ਵੀ ਕੇ ਸਾਡੇ ਇਹ ਸਾਡੇ ਕੋਲ ਤੁਹਾਨੂੰ ਅਵੇਲੇਬਲ ਸਾਡੇ ਕੋਲ ਮਿਲ ਜਾਂਦੇ ਹੈਗੇ ਆ ਇਸ ਤੋਂ ਇਲਾਵਾ ਤੁਹਾਨੂੰ ਫੇਸ واਸ਼ ਲਾ ਲਓ ਤੁਸੀਂ ਤੇ ਨਾਲ ਉਹਦੇ ਔਰੈਂਜ ਇਹ ਤੁਸੀਂ ਲਾਓ ਵੀ ਟਾਈਟ ਕਰਦਾ ਹੈ ਹਫ ਤੋਂ 45 ਸ਼ੁਰੂ ਹੋ ਜਾਂਦੀ ਹੈ ਉਹਨੂੰ ਵੀ ਕਾਫੀ ਟਾਈਟ ਕਰਦਾ ਰਹੇਗਾ ਕੁਆਰਤਾ ਚੰਗਾ ਜੀ ਐਲੋਵੇਰਾ ਨੂੰ ਫਿਰ ਉਹ ਕਾਦੇ ਕਿਸ ਤਰ੍ਹਾਂ ਦਾ ਪ੍ਰੋਡਕਟ ਹੈ ਜੀ ਉਹ ਇਹ ਜਾਲਿਆ ਤੁਸੀਂ ਫੇਸ ਤੇ ਤੇ ਮਸਾਜ ਕਰੋ ਇਹਦੀ ਤੁਸੀਂ ਸਿਰੇ ਲਾ ਕੇ ਜਾਓ ਆਪਣੇ ਆਫਿਸ ਨੂੰ ਜਾਂ ਘਰ ਸਾਨੂੰ ਮੇਕਅੱਪ ਵੀ ਲੋੜ ਨਹੀਂ ਪੈਂਦੀ ਇਹ ਤੁਹਾਡਾ ਇਹ ਚਿਹਰਾ 글로 ਕਰੇਗਾ ਇਹਦੇ ਵਿੱਚ ਅਲੋਵੇਰਾ ਦੇ ਵਿੱਚ ਅਸੀਂ ਪਾਇਆ ਹੈਗਾ ਐਪਲ ਗ੍ਰੀਨ ਐਪਲ ਤੁਸੀਂ ਨਾ ਤਾਂ ਸਾਰਾ ਦਿਨ ਤੁਹਾਡੇ ਕੋਲ ਸੰਬੰਧ ਅੱਛੀ ਆਉਂਗੀ ਔਰ ਤੁਹਾਡਾ ਚਿਹਰਾ ਵੀ 글로 ਕਰੇਗਾ ਪਲੱਸ ਤੁਹਾਡੀ ਸਕਿਨ ਨੂੰ ਵੀ ਇਹ ਟਾਈਟ ਕਰਦਾ ਹੈਗਾ अच्छा जी ਤੇ ਨਾਲ ਜਿਹੜੇ ਫਿਰ ਹੁਣ ਅਮਰੀਕਾ ਦੇ ਵਿੱਚ ਕਿਉਂ ਕੈਨੇਡਾ ਦੇ ਵਿੱਚ ਤਾਂ ਇਥੋਂ ਤੇ ਟੋਰਾਂਟੋ ਦੇ ਤੱਕ ਤੁਹਾਡੇ ਡਿਸਟ੍ਰੀਬਿਊਟਰ ਹੈਗੇ ਨੇ ਸਾਰੇ ਅਮਰੀਕਾ ਵਾਲੇ ਪਾਸੇ ਫਿਰ ਜੇ ਕਿਸੇ ਨੂੰ ਕੁਝ ਭੇਜਣਾ ਹੋਵੇ ਜੀ ਉਹਦਾ ਕੀ ਪ੍ਰੋਸੈਸ ਹੈ ਹਾਂ ਪਹਿਲਾਂ ਤਾਂ ਮੈਂ ਕੈਨੇਡਾ ਬਾਰੇ ਦੱਸ ਦਾਂਗੇ ਸਾਥ ਕਿ ਸਾਡਾ ਟੋਰਾਂਟੋ ਦੇ ਵਿੱਚ ਏਸ਼ੀਅਨ ਫੂਡ ਦੇ ਤੇ ਸਾਰਾ ਸਮਾਨ ਸਾਨੂੰ ਮਿਲ ਸਕਦਾ ਕੈਲਗਰੀ ਦੇ ਵਿੱਚ ਫਰੂਟੀ ਕੈਨਾ ਦੇ ਉੱਤੇ ਸਾਡਾ ਸਾਰਾ ਸਮਾਨ ਤੁਹਾਨੂੰ ਮਿਲਦਾ ਹੈਗਾ ਐਡਮੰਟਨ ਚ ਐਬਸਪੋਰ ਦੇ ਵਿੱਚ ਦਸ਼ਮੇਸ਼ ਫੂਡ ਦੇ ਮਿਲਦਾ ਹੈਗਾ ਦੇਲਟਾ ਦੇ ਵਿੱਚ ਵੀ ਹੈ ਸਰੀ ਦੇ ਵਿੱਚ ਤੁਸੀਂ ਹੁਣ ਸਾਡਾ ਪ੍ਰੋਡਕਟ ਫਰੂਟੀ ਕਾਨਾ 13772 ਵਾਲੇ ਸਟੋਰ ਤੋਂ ਇਹ ਲੈ ਸਕਦੇ ਆ ਕਾਫੀ ਆਈਟਮ ਉਹਨਾਂ ਕੋਲ ਹੈਗੀਆਂ ਫਰੂਟੀ ਕਾਨਾ 13772 ਇਸ ਤੋਂ ਇਲਾਵਾ ਸਾਰੇ ਸ਼ਹਿਰਾਂ ਦੇ ਵਿੱਚ ਸਾਡੇ ਤਕਰੀਬਨ 250 ਲੋਕੇਸ਼ਨ ਦੇ ਉੱਤੇ ਸਮਾਂ ਸਾਡਾ ਡਿਲੀਵਰ ਕਰਿਆ ਯੂਐਸ ਦੇ ਵਿੱਚ ਗੈਲਿੰਘਮ ਸਿਆਟਲ ਤੋਂ ਵੀ ਲੈ ਸਕਦੇ ਆ ਸੈਕਰਮੈਂਟ ਤੋਂ ਵੀ ਲੈ ਸਕਦੇ ਹੈਗੀਆਂ ਔਰ ਅਸੀਂ ਬਹੁਤ ਜਲਦ ਅ ਵਿਦਨ 2 ਵੀਕਸ ਦੇ ਵਿੱਚ ਕੈਲੀਫੋਰਨੀਆ ਦਾ ਅਸੀਂ ਸਾਰਾ ਟੂਰ ਕਰਨਾ ਹੈਗਾ ਉਹਦੇ ਵਿੱਚ ਅਸੀਂ ਜਿੰਨੇ ਵੀ ਏਜੰਟ ਸਾਨੂੰ ਐਪਲੀਕੇਸ਼ਨਸ ਆਈਆਂ ਉਹਨਾਂ ਨਾਲ ਗੱਲ ਕਰਕੇ ਔਰ ਵਿਦਨ 2 ਵੀਕਸ ਦੇ ਵਿੱਚ ਅਸੀਂ ਸਾਰਾ ਮਦਰ ਇੰਡੀਆ ਪ੍ਰੋਡਕਟ ਨੂੰ ਕੈਲੀਫੋਰਨੀਆ ਦੇ ਵਿੱਚ ਬਿਲਕੁਲ ਦਮਾਗੇ ਔਰ ਸਾਰੀ ਉਹਦੀ ਜਾਣਕਾਰੀ ਦੇ ਦਮਾਗੇ ਔਰ ਅਗਰ ਤੁਸੀਂ ਆਸਟ੍ਰੇਲੀਆ ਦੇ ਵਿੱਚ ਦੱਸਿਆ ਹੈਗਾ ਤੁਸੀਂ ਉਥੋਂ ਲੈ ਸਕਦੇ ਹੈਗਾ ਮੈਂ ਇੱਕ ਵਾਰ ਟੈਲੀਫੋਨ ਨੰਬਰ ਦੱਸ ਦਿਆਂ ਆਈਡੀਆ ਕੋਡ 7 33415336 ਇਸ ਆਫਰ ਦੇ ਵਿੱਚੋਂ ਤੁਸੀਂ ਕੋਈ ਵੀ ਸਟਾਫ ਲੈਣਾ ਹੈਗਾ ਲੈ ਸਕਦੇ ਆ ਨਾਲੇ ਅਸੀਂ ਇਥੋਂ ਅਫੀਜੀ ਤੇ ਨਿਊਜ਼ੀਲੈਂਡ ਉਹਦੀ ਕਵਰ ਕਰਦੇ ਹੈਗੇ ਆ ਅਗਰ ਤੁਹਾਡੇ Town ਦੇ ਵਿੱਚ ਜਾਂ ਸ਼ਹਿਰ ਦੇ ਵਿੱਚ ਅਸੀਂ ਤੁਹਾਡੇ ਘਰ ਡਿਲੀਵਰ ਕੈਨੇਡਾ ਦੇ ਵਿੱਚ ਦੇ ਵਿੱਚ ਫ੍ਰੀ ਡਿਲੀਵਰੀ ਕਰਦੇ ਆ ਉਹਦਾ ਅਸੀਂ ਕੋਈ ਵੀ ਚਾਰਜਸ ਨਹੀਂ ਲਾਉਂਦੇ ਅਖੀਰ ਦੇ ਵਿੱਚ ਫੋਨ ਨੰਬਰ ਆਪਣਾ ਫੇਰ ਦੇ ਜੀ ਹੌਲੀ ਲੋਕ ਲਿਖ ਲੈਣ ਤੇ ਦੇਖੋ ਜੀ ਜੇ ਸਰ ਸਾਡਾ ਟੈਲੀਫੋਨ ਹੈਗਾ ਪਰ ਤਾਂ ਸਾਡਾ ਐਡਰੈਸ ਹੈ 6649 ਮੇਨ ਸ਼ੋਰੂਮ ਮੰਡੇ ਟੂ ਸੰਡੇ ਦਸ ਤੋਂ 6 ਟਿਊਸਡੇ ਸੀ ਬੰਦ ਹੁੰਦੇ ਆ ਜਿਹੜੀ ਸਾਡੀ ਸੇਲ ਕੰਟੀਨਿਊ ਚੱਲ ਰਹੀ ਹੈਗੀ ਅੰਟਿਲ ਜਨਵਰੀ 31st ਤੱਕ ਤੁਸੀਂ ਕੋਈ ਵੀ ਸਟੋਰ ਤੋਂ ਸਮਾਨ ਲਾਓ ਇੱਕ ਲਾਓ ਦੂਜਾ 50% ਆਫ ਇਕ ਕੰਟੀਨਿਊ ਅੰਟਿਲ ਐਂਡ ਆਫ ਜਨਵਰੀ ਤੱਕ ਤੁਹਾਨੂੰ ਅਗਰ ਤੁਸੀਂ ਨੇ ਯੂਜ਼ ਕੀਤਾ ਪਲੀਜ਼ ਜ਼ਰੂਰ ਆਓ ਟਰਾਈ ਕਰੋ ਔਰ ਤੁਸੀਂ ਮਦਰ ਇੰਡੀਆ ਦੇ ਸਾਡੇ ਹਰਬੂਸ਼ ਫ੍ਰੀ ਸੈਂਪਲ ਆ ਤੁਸੀਂ ਸਾਡੇ ਕੋਲ ਸੰਡੇ ਆਓ ਤੁਹਾਨੂੰ ਫ੍ਰੀ ਸੈਂਪਲ ਜੀ ਧੰਨਵਾਦ ਬਹੁਤ ਵਧੀਆ ਥੈਂਕ ਯੂ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ 파ਰਕਸ਼ਨੇਸ਼ 11:55 ਹੋਇਆ ਜੀ ਖਬਰਾਂ ਦੀ ਸ਼ੁਰੂਆਤ ਕਰੀਏ ਕ੍ਰਮਪੂਰ ਨੇ ਕੱਲ ਕੱਲ ਨਹੀਂ ਪਿਛਲੇ ਦਿਨੀ ਇਹ ਇੰਟਰਵਿਊ এবੀਸੀ ਦੇ ਚੈਨਲ ਨਾਲ ਕੀਤੀ ਗਈ ਸੀ ਉਹਦੇ ਵਿੱਚ ਉਹਨਾਂ ਨੇ ਸਖਤ ਰੁਖ ਜਿਹੜਾ ਬਹੁਤ ਅਪਣਾਇਆ ਉਹ ਕਹਿੰਦੇ ਵੀ ਟੌਰਚਰ ਹੈ ਤੁਹਾਨੂੰ ਯਾਦ ਹੈ ਕਿ ਇਰਾਕ ਦੇ ਵਿੱਚ ਜਾਂ ਦੀ ਜੇਲ੍ਹ ਜੀ ਦੇ ਵਿੱਚ ਆਈਸ ਆਪਣੇ ਅਲ ਤੇ ਹੋਰ ਟੈਰਰਿਸਟ ਰੱਖੇ ਹੋਏ ਸੀ ਗਵਨਤਨਾਮੋ ਦੇ ਵਿੱਚ ਉੱਥੇ ਪਾਣੀ ਦੇ ਵਿੱਚ ਮੂੰਹ ਡੁਬੋ ਕੇ ਵਾਟਰ ਬੋਰਡਿੰਗ ਨੂੰ ਕਹਿੰਦੇ ਨੇ ਜਾਂ ਜਗਾ ਕੇ ਰੱਖਣਾ ਜਾਂ ਕੰਦ ਨਾਲ ਖੜੇ ਕਰਕੇ ਰੱਖਣਾ ਜਾਂ ਆਈਸੋਲੇਸ਼ਨ ਤੇ ਲੈ ਜਾਣਾ ਇਹ ਜੇ ਤਸੀਹੇ ਦਿੱਤੇ ਜਾਂਦੇ ਸੀ ਜਿਹੜੇ ਫੜੇ ਗਏ ਸੀ ਦੇਸ਼ ਦੇ ਬਾਰੇ ਮਨੁੱਖੀ ਅਧਿਕਾਰਾਂ ਨੇ ਅਧਿਕਾਰ ਦੇ ਸੰਗਠਨਾਂ ਨੇ ਬੜੀਆਂ ਗੱਲਾਂ ਕੀਤੀਆਂ ਕਿ ਹੋ ਰਿਹਾ ਤੇ ਕੱਲ ਇੰਟਰਵਿਊ ਦੇ ਵਿੱਚ ਡੋਨਟ ਟ੍ਰੰਪ ਨੇ ਬਹੁਤ ਸਖਤ ਰੋਖ ਅਪਣਾਇਆ ਉਹ ਕਹਿੰਦਾ ਪਹਿਲੀ ਤਾਂ ਗੱਲ ਜਿੱਥੋਂ ਬੰਦੇ ਆ ਕੇ ਮੇਰੇ ਦੇਸ਼ ਤੇ ਹਮਲਾ ਕਰਨਗੇ ਉੱਥੋਂ ਇਮੀਗ੍ਰੇਸ਼ਨ ਬੰਦ ਰੈਫਿਊਜੀ ਮੈਂ ਬਣ ਨਹੀਂ ਦੇਣਾ ਸਾਡੀਆਂ ਆਪਣੀਆਂ ਮੁਸ਼ਕਲਾਂ ਬਹੁਤ ਨੇ ਸਾਡੇ ਕੋਲ ਕੁਝ ਨਹੀਂ ਹੈ ਕਿਸ ਨੂੰ ਦੇਣ ਲਈ ਉਹਦੇ ਬਾਅਦ ਜਿਹੜੀ ਟਾਰਚਰ ਹੈ ਉਹ ਜਿੱਥੇ ਤੱਕ ਜ਼ਾਇਜ਼ ਹੈ ਉਹ ਵੀ ਕੀਤੀ ਜਾਵੇਗੀ ਉਹ ਕਹਿੰਦਾ ਵੀ ਆਇਸਸ ਵਾਲੇ ਸੀਰੀਆ ਦੇ ਵਿੱਚ ਤੇ ਇਰਾਕ ਦੇ ਵਿੱਚ ਲੋਕਾਂ ਦਾ ਗਲ ਵੱਢ ਕੇ ਵੀਡੀਓ ਬਣਾ ਕੇ ਭੇਜਦੇ ਨੇ ਉਹਨਾਂ ਦੇ ਨਾਲ ਹੋਰ ਕੀ ਕੀਤਾ ਜਾਂਦਾ ਸਿੱਧੇ ਸ਼ਬਦਾਂ ਚ ਇਹ ਸੀ ਕਿ ਬਦਲਾ ਹੁਣ ਉਹਨਾਂ ਹੀ ਹੋ ਜੇ ਉਹ ਕੁਝ ਕਰਨਗੇ ਉਹ ਜਾਂ ਹੋ ਵੀ ਕੀਤਾ ਜਾਂਦਾ ਕੌਂਤਨਾਮੋ ਨੂੰ ਬੰਦ ਕਰਨ ਦੀ ਗੱਲ ਚਲ ਰਹੀ ਹੈ ਉੱਥੋਂ ਜਿਹੜੇ ਵੀ ਬੰਦੀ ਸੀ ਉਹ ਬਾਹਰ ਭੇਜੇ ਜਾਂਦੇ ਜਨ ਗੱਲ ਇਹ ਕੋਈ ਵੀ ਗੱਲ ਹੈ ਜਿਹੜੀ ਉਸ ਤੇ ਉਲਟ ਜਿਹੜੀ ਗੱਲ ਤੇ ਆਰਡਰ ਰਹੇ ਗੱਲ ਤੇ ਸੈਨੇਟਰ ਸੀਨੀਅਰ ਸੈਨੇਟਰ ਜਿਹੜਾ ਮਕੇਨ ਹੈ ਉਸਨੇ ਗੱਲ ਕੀਤੀ ਕਿ ਠੀਕ ਨਹੀਂ ਹੈ ਗੱਲ ਗਲਤ ਹੈ ਹੁਣ ਡਿਫੈਂਸ ਸਕੱਰੇਟਰੀ ਜਿਹੜਾ ਬੜਾਇਆ ਹੋਇਆ ਜੇਮਸ ਮੈਟਿਸ ਉਸਨੇ CIA ਦੇ ਡਾਇਰੈਕਟਰ ਨਾਲ ਗੱਲਬਾਤ ਕੀਤੀ ਆਪਰੇਸ਼ਨ ਜਿਹੜੇ ਸੈਂਟਰ ਦੁਨੀਆ ਦੇ ਵਿੱਚ ਖੋਲੇ ਹੋਏ ਸੇਫ ਹਾਊਸ ਹੁੰਦਾ ਸੇਫ ਹਾਊਸ ਤੇ ਇੱਕ ਫਿਲਮ ਵੀ ਬਣੀ ਆ ਵੇਖਣ ਵਾਲੀ ਆ ਤੁਸੀਂ ਵੇਖਿਓ ਉਸ ਨੂੰ ਸੇਫ ਹਾਊਸ ਦੇ ਵਿੱਚ ਉਹ ਕਿਸੇ ਨੂੰ ਨਹੀਂ ਪਤਾ ਹੁੰਦਾ ਕਿਹੜੇ ਦੇਸ਼ 'ਚ ਕਿਹੜੇ ਸ਼ਹਿਰ ਦੇ ਵਿੱਚ ਆ ਅਲੱਗ ਕੋਡ ਨੇ CIA ਦੇ ਉਹ ਸੈਂਟਰ ਨੇ ਉੱਥੇ ਲਿਆ ਕੇ ਬੰਦੇ ਟੌਰਚਰ ਕੀਤੇ ਜਾਂਦੇ ਤੋ ਸੇਫ ਹਾਊਸ ਜਾਂ ਆਪਰੇਸ਼ਨ ਦੇ ਲਈ ਸੈਂਟਰ ਨੇ ਜਿਹੜੇ ਉਹ ਖੋਲਣ ਦੀ ਗੱਲ ਚੱਲ ਰਹੀ ਹੈ ਸੈਨੇਟਰ ਮਕੇਨ ਨੇ ਕਿਹਾ ਵੀ ਇਹ ਗੱਲ ਗਲਤ ਹੈ ਐਗਜ਼ੈਕਟਿਵ ਆਰਡਰ ਪ੍ਰੈਜ਼ੀਡੈਂਟ ਜਿਹੜੇ ਮਰਜ਼ੀ ਪਰ ਆ ਜਿਹੜੀਆਂ ਗੱਲਾਂ ਟੌਰਚਰ ਕਰਨ ਦੀਆਂ ਹੋਰ ਕੁਝ ਗੱਲਾਂ ਕਰਨ ਦੀਆਂ ਠੀਕ ਨਹੀਂ ਲਾ ਜਿਹੜਾ ਉਹ ਪ੍ਰਹਿਪਟ ਸ਼ਕਤੀ ਦੇ ਨਾਲ ਤਾਕਤ ਨਾਲ ਕਿਸੇ ਦੀ ਕੁਛ ਗਿੱਚ ਨਹੀਂ ਕੀਤੀ ਜਾ ਸਕਦੀ ਬਾਕੀ ਚੱਲ ਰਹੇ ਨੇ ਕੰਦ ਬਣਨ ਦੀ ਗੱਲ ਚੱਲ ਗਈ ਤੇ ਇੱਕ ਆਟੋ ਇੰਡਸਟਰੀ ਦੇ ਵਿੱਚ ਗੱਲ ਚੱਲ ਗਈ ਹੁਣ ਰਿਫਿਊਜੀ ਤੇ ਇਮੀਗ੍ਰੇਸ਼ਨ ਦੇ ਸਬੰਧੀ ਕਿਹੜਾਂ ਦੇਸ਼ਾਂ ਦੇ ਵਿੱਚੋਂ ਬਿਲਕੁਲ ਇਮੀਗ੍ਰੇਸ਼ਨ ਬੰਦ ਕੀਤੀ ਜਾਏਗੀ ਇਹਦੇ ਆਉਣ ਦੀ ਤਿਆਰੀ ਇੱਕ ਅੱਦੇ ਦਿਨ ਚ ਇਹ ਲੋਕ ਇਸ ਗੱਲ ਤੇ ਖੁਸ਼ ਵੀ ਨੇ ਇਕਨੋਮੀ ਦੇ ਬਾਰੇ ਗੱਲ ਜਿਹੜਾ ਸ਼ੇਅਰ ਬਾਜ਼ਾਰ ਤੇ ਬੜਾ ਉਸ਼ਾਲਾ ਹੈ ਆਉਣ ਵਾਲਾ ਸਮਾਂ ਦੱਸੇਗਾ ਸ਼ੁਰੂਆਤ ਦੇ ਦਿਨ ਨੇ ਹਲੇ ਰਿਐਲਿਟੀ ਤੇ ਬਲ ਜਾਣੀਆਂ ਗੱਲ ਅਸਲ ਦੇ ਹਾਲੇ ਸਭ ਕੁਝ ਚੰਗਾ ਚੱਲ ਰਿਹਾ ਸਾਰਾ ਕੁਝ ਕਰਕੇ ਕਿ ਅਮਰੀਕਾ ਅਲੱਗ-ਥਲੱਗ ਨਾ ਹੋ ਜਾਏ ਇਕੱਲਾ ਨਾ ਹੋ ਜਾਏ ਰਹੀ ਹੈ ਦੇ ਬਾਰੇ ਜਿਹੜੀਆਂ ਖਬਰਾਂ ਇਹ ਆ ਰਹੀਆਂ ਨੇ ਅੱਗੇ ਜਿਉਂ-ਜਿਉਂ ਕੁਝ ਵੀ ਪਤਾ ਲੱਗਦਾ ਇਸੇ ਗਲਤੇ ਸੀਰੀਆ ਦੇ ਜਿਹੜੇ ਰਿਫਿਊਜੀ ਨੇ ਇਰਾਕ ਦੇ ਵਿੱਚ ਬੈਠੇ ਨੇ ਸੌਰੀ ਤੁਰਕੀ ਦੇ ਵਿੱਚ ਬੈਠੇ ਆ ਉਹਨਾਂ ਨੇ ਇਸ ਗਲਤੇ ਬਹੁਤ ਵੱਡੀ ਚਿੰਤਾ ਕੀਤੀ 18 ਸਾਲ ਦਾ ਇੱਕ ਮੁੰਡਾ ਉਹਨੇ ਕਿਹਾ ਵੀ ਇਸ ਤਰ੍ਹਾਂ ਨਹੀਂ ਹੁੰਦਾ ਮੈਂ ਚਾਹੇ ਮੇਰੇ ਘਰਚ ਕੱਖ ਨਹੀਂ ਮੇਰੇ ਘਰ ਦੇ ਮੂਹਰੇ ਕੋਈ ਉੱਜੜ ਰਿਹਾ ਮੈਂ ਭੱਜ ਕੇ ਜਾ ਕੇ ਉਸ ਨੂੰ ਬਚਾਉਣਾ ਹੀ ਬਚਾਉਣਾ ਇਹ ਮਨੁੱਖਤਾ ਦੀ ਗੱਲ ਹੈ ਇਸ ਤਰ੍ਹਾਂ ਅਮਰੀਕਾ ਤੇ ਡੋਨਲਡ ਟਰੰਪ ਇਸ ਤਰ੍ਹਾਂ ਨਹੀਂ ਕਰ ਸਕਦੇ ਪਰ ਹੁਣ ਰਿਫਿਊਜੀਆ ਦੇ ਲਈ ਜਿਹੜਾ ਨਾ ਸੱਦਣਾ ਇਹ ਸਰਕਾਰ ਦਾ ਕੰਮ ਹੈ ਸਰਕਾਰ ਮਨਾ ਕਰ ਸਕਦੀ ਹੈ ਹੁਣ ਇਸ ਤੋਂ ਬਾਅਦ ਇਹ ਦਰਜਾ ਹੁਣ ਕੰਧਾਂ ਕੰਧ ਬਣਾਉਣ ਦੀ ਗੱਲ 18 20 25ਵੀਂ ਬਿਲੀਅਨ ਡਾਲਰ 25 ਅਰਬ ਡਾਲਰ ਖਰਚਣ ਦੀ ਗੱਲ ਤੇ ਰਾਸ਼ਟਰਪਤੀ ਮਕਸੀਕੋ ਨੇ ਕਹਿੰਦਾ ਅਸੀਂ دیਵਾਨੀ ਨਹੀਂ ਦੇਣੀ ਜਿਹੜਾ ਕੁਝ ਤੂੰ ਕਰਨਾ ਕਰ ਲਈ ਸੈਂਸ 1100 ਕਿਲੋਮੀਟਰ ਦੇ ਵਿੱਚ ਲੱਗੀ ਹੋਈ ਹੈ 3100 ਕਿਲੋਮੀਟਰ ਦਾ ਇਹ ਬਾਰਡਰ ਹੈ ਇਹ ਇਹਦੇ ਬਾਅਦ ਇਹ ਐਗਜ਼ੈਕਟਿਵ ਦੇ ਵਿੱਚ ਕੰਧ ਬਣਾਉਣ ਦੀ ਜਿਹੜੀ ਗੱਲ ਚੱਲ ਪਈ ਹੈ ਇਹਦੇ ਨਾਲ ਕਿੰਨਾ ਕੁ ਫਰਕ ਪਵੇਗਾ ਤੇ ਜਿਹੜੀ ਗੱਲ ਐਕਚੁਅਲੀ ਕਹੀ ਆ ਉਹਨਾਂ ਨੇ 1126 ਕਿਲੋਮੀਟਰ ਦੇ ਵਿੱਚ ਅ ਫੈਂਸ ਲੱਗੀ ਹੋਈ ਐ ਤੇ 3200 ਕਿਲੋਮੀਟਰ ਦਾ ਟੋਟਲ ਬਾਰਡਰ ਐ 7 ਬਿਲੀਅਨ ਡਾਲਰ ਪਹਿਲਾਂ ਫੈਂਸ ਤੇ ਖਰਚੇ ਆ ਤੇ ਹੁਣ 15 ਤੋਂ 20 25 ਬਿਲੀਅਨ ਖਰਚੇ ਆਉਂਦੀ ਕਲ ਚੱਲ ਰਹੀ ਐ ਮਕਸੀਕੋ ਦੇ ਰਾਸ਼ਟਰਪਤੀ ਨੇ ਕਹੇ ਤਾਂ ਵੀ ਅਸੀਂ ਤਾਂ ਨਹੀਂ ਮਸਰਾ ਦੇਣਾ ਕੁਛ ਪਰ ਹੁਣ ਕੰਦ ਬੜਨੀ ਸ਼ੁਰੂ ਹੋਵੇਗੀ ਇਹ ਗੱਲ ਠੀਕ ਹੈ ਲੋਕਲ ਜਿਹੜੀਆਂ ਖਬਰਾਂ ਨੇ ਕਿ ਬੜੇ ਚਿਰਾਂ ਦੀ ਕੈਨੇਡਾ ਦੀ ਜਿਹੜੀ ਇੱਕ CMHC ਕੈਨੇਡੀਅਨ ਮਾਰਗੇਜ ਐਂਡ ਹਾਊਸਿੰਗ ਕਾਰਪੋਰੇਸ਼ਨ ਆ ਉਹ ਬੜੀ ਬੱਬਲ ਦੀ ਲਾਲ ਲਾਈਨ ਵਾਲ ਨੂੰ ਜਾ ਰਹੀਆਂ ਮਾਰਕੀਟ ਜਿਹੜੀ ਘਰਾਂ ਦੀ ਵੈਨਕੂਵਰ ਟ੍ਰਾਂਟੋ ਹਮਿਲਟਨ ਦੀ ਗੱਲਬਾਤ ਕਰਦੀ ਆ ਰਹੀ ਹੈ ਕਿ ਫਟ ਜਾਏਗਾ ਬੱਬਲ ਫਟ ਜਾਏਗਾ ਪਰ ਉਹ ਅੱਜ ਫੇਰ ਰਿਪੋਰਟ ਆਈ ਹੈ ਕਿ ਸਾਡੇ ਕਹਿਣ ਦੇ ਬਾਵਜੂਦ ਵੀ ਕੀਮਤਾਂ ਹਲੇ ਵੱਧ ਰਹੀਆਂ ਨੇ ਕੁਝ ਫਰਕ ਨਹੀਂ ਪੈ ਰਿਹਾ ਤੇ ਵੈਨਕੂਵਰ ਦੇ ਵਿੱਚ ਵਿਕਟੋਰੀਆ ਚ ਟ੍ਰਾਂਟੋ ਤੇ ਹਮਿਲਟਨ ਦੇ ਵਿੱਚ ਕੀਮਤਾਂ ਵੱਧ ਰਹੀਆਂ ਨੇ ਉਸ ਤਰ੍ਹਾਂ ਹੀ ਕਾਰਨ ਇਹ ਹੈ ਕਿ ਸਪਲਾਈ ਡਿਮਾਂਡ ਦਾ ਰੋਲਾ ਸਪਲਾਈ ਹੈ ਨਹੀਂ ਡਿਮਾਂਡ ਵੱਧ ਮੇਅਰ ਜਿੰਨੇ ਨੇ ਜਿਆਦੀ ਹੁੰਦੀ ਸੀ ਅਸੈਸਮੈਂਟ ਨਮੀ ਆਈ ਹੈ ਕੀਮਤਾਂ 30 ਤੋਂ 40 50% ਵਧ ਗਈਆਂ ਉਹ 50% ਵਧੀਆਂ ਕੀਮਤਾਂ ਤੇ ਲੋਕਾਂ ਨੇ ਗੁੱਸੇ ਦਾ ਪ੍ਰਗਟਾਵਾ ਕੀਤਾ ਡਰ ਗਏ ਕਿ ਇਸ ਤੇ ਵੱਧ ਪ੍ਰਾਪਰਟੀ ਟੈਕਸ ਆਏਗਾ ਪਰ ਪਿਛਲੇ ਦਿਨੀ ਗੱਲ ਮੇਅਰ ਹੈਪਨਰ ਨੇ ਕੀਤੀ ਸੀ ਕਿ ਅਸੀਂ ਆਪਣਾ ਮਿਲ ਰੇਟ ਫਿੱਟ ਕਰ ਦੇਣਾ ਉਹਦੇ ਤੇ ਥੋੜਾ ਹੀ ਵਧੇਗਾ 100 200 ਡਾਲਰ ਪਿਛਲੇ ਨਾਲੋਂ ਵਧੇਗਾ ਇਹ ਬੀਸੀ ਅਸੈਸਮੈਂਟ ਨਾਲ ਸਾਡੇ ਟੈਕਸ ਨਹੀਂ ਵਧਣੇ ਕੁਝ ਵੀ ਹੈ ਸੋ ਇਹ ਅਸੈਸਮੈਂਟ ਦਾ ਜਿਹੜਾ ਲੱਖ ਦੀ ਪ੍ਰਾਪਰਟੀ ਵਾਲੀ ਪ੍ਰਾਪਰਟੀ 16 ਲੱਖ ਦੀ 16 ਵਾਲੀ 2 ਮਿਲੀਅਨ ਦੀ ਸਾਥੀਆਂ ਦੇ ਵਿੱਚ ਬਹੁਤ ਜ਼ੀਰੋਆਂ ਲੱਗ ਕੇ ਆ ਗਈਆਂ ਪਰ ਇਹ ਤੁਹਾਡਾ ਜਿਹੜਾ ਵੁਢਲਾ ਰਹਿਣ ਵਾਲੀ ਜਗਾ ਪ੍ਰਾਇਮਰੀ ਰੈਜ਼ਿਡੈਂਸ ਉਹਦੇ ਵਿੱਚ ਹੋ ਜਵੇ ਲੋਕਾਂ ਨੂੰ ਫਰਕ ਨਹੀਂ ਇਹਦੇ ਕਰਕੇ ਲੋਕਾਂ ਦਾ ਤਰਕ ਵੀ ਠੀਕ ਸੀ ਵਿਕਟੋਰੀਆ ਦੇ ਵਿੱਚ ਟੂਰਿਸਟ ਬਹੁਤ ਆਉਣ ਲੱਗੇ ਵਿਕਟੋਰੀਆ ਦੇ ਵਿੱਚ ਟੂਰਿਸਟਾਂ ਜਿਹੜੇ ਨੇ ਉਹ ਬਹੁਤ ਤੇ ਵਿਕਟੋਰੀਆ ਦੀ ਪ੍ਰਾਪਰਟੀ ਵੀ ਮਹਿੰਗੀ ਹੋ ਰਹੀ ਹੈ ਕਿਉਂਕਿ ਚਾਈਨੀਜ਼ ਲੋਕ ਜਿਹੜੇ 15% ਟੈਕਸ ਤੋਂ ਬਚ ਕੇ ਮੈਟਰੋ ਵੈਨਕੂਵਰ ਤੋਂ ਬਾਹਰ ਨਿਕਲ ਕੇ ਉਹ ਟੈਕਸ ਤੋਂ ਬਿਨਾ ਪ੍ਰਾਪਰਟੀਆਂ ਖਰੀਦ ਰਹੇ ਨੇ ਇਹ ਗੱਲ ਚੱਲੀ ਸੀ ਵੀ ਟ੍ਰਾਂਟੋ ਬਾਲ ਬਾਜੂ ਪਰ ਟ੍ਰਾਂਟੋ ਬਾਲ ਨਹੀਂ ਲੋਕ ਸਟੈਲ BC ਨੂੰ ਪਸੰਦ ਕਰਦੇ ਨੇ ਓਕਨਾਗਰਨ ਤੇ ਵਿੱਚ ਜਿਹੜੇ ਫਾਰਮ ਹਾਊਸ ਨੇ ਵੱਡੇ ਇਸ ਤਰ੍ਹਾਂ ਵਿਕਟੋਰੀਆ ਦੇ ਵਿੱਚ ਬਹੁਤ ਤੇਜ਼ੀ ਜਿਹੜੀ ਰੀਅਲ ਏਸਟੇਟ 'ਚ ਆ ਰਹੀ ਹੈ ਨੈਕਸਟ ਫੇਜ਼ ਦੇ ਵਿੱਚ ਨਨੈਮੋ ਵੱਲ ਨੂੰ ਵੀ ਗੱਲ ਚੱਲੇਗੀ ਪਰ ਵਿਕਟੋਰੀਆ ਬਹੁਤ ਪਸੰਦੀਦੀ ਹੈ ਜਗ੍ਹਾ ਲੋਕਾਂ ਦੀ ਇੱਕ ਰਾਜਸਤਾਨੀ ਹੈ ਤੇ ਆਉਣ ਵਾਲੇ ਸਮੇਂ ਦੇ ਵਿੱਚ ਕੀਮਤਾਂ ਉੱਥੇ ਵਧਣ ਦੀ ਤਵਕਉ ਕੀਤੀ ਗਈ ਹੈ ਇਸਨੇ ਚੋਹਰ ਬਾਅਦ ਵਾਪਸ ਆਵੇ ਜਾਦੇ ਪੈਨਾਮਾ ਪੇਪਰਸ ਬਾਹਰ ਆਏ ਹੈ ਕੈਨੇਡੀਅਨਸ ਦੇ ਨਾਮ ਬਹੁਤ ਬਾਹਰ ਨਿਕਲੇ ਆ ਕਿ ਕਿਸ ਤਰ੍ਹਾਂ ਬਾਹਰ ਜਿਹੜੇ ਟੈਕਸ ਹੈਵਨ ਨੇ ਜਿੱਥੇ ਟੈਕਸ ਬਚਾਇਆ ਜਾਂਦਾ ਹੈ ਲੱਭੀ ਜਾਂਦੀ ਹੈ ਫਿਰ ਇੱਕ ਕੰਪਨੀ ਬਣਾਈ ਜਾਂਦੀ ਹੈ ਫਿਰ ਉਸ ਦਾ ਇੱਕ ਨਾਮੀ ਨ ਜਾਂਦਾ ਬੈਂਕ ਅਕਾਊਂਟ ਖੋਲਿਆ ਜਾਂਦਾ ਮਨੀ ਉੱਥੇ ਭੇਜੀ ਜਾਂਦੀ ਹੈ ਤੇ ਉਸ ਤੋਂ ਬਾਅਦ ਉੱਥੋਂ ਕਢਾ ਕੇ ਵਰਤੀ ਜਾਂਦੀ ਹੈ ਪਰ ਕੱਲ ਸੀਬੀਸੀ ਦੀ ਇੱਕ ਖਬਰ ਨੇ ਇੱਥੇ ਵੀ ਗੱਲ ਇਹ ਤੋੜ ਦਿੱਤੀ ਕਿ ਇੱਥੇ ਵੀ ਜਿਹੜੀਆਂ ਕੰਪਨੀਆਂ ਸੈੱਟ ਕਰਕੇ ਇੱਥੇ ਰਜਿਸਟਰ ਕਰਕੇ ਇਨਕੋਰਪੋਰੇਟ ਕਰਕੇ ਉਸ ਮਰਜ਼ੀ ਹੈ ਜਿਹੜਾ ਫੈਡਰਲ ਤੇ ਪ੍ਰੋਵਿੰਸ਼ੀਅਲੀ ਸੂਬਿਆਂ ਦੇ ਅਲੱਗ-ਅਲੱਗ ਰੂਲ ਨੇ ਜਾ ਤੁਸੀਂ ਕੰਪਨੀ ਕੋਈ ਵੀ ਇਨਕਾਰਪੋਰੇਟ ਕਰਾਉਨੇ ਹੋ ਤਾਂ ਉਹਦੇ ਵਿੱਚ ਅਸਲ ਮਾਲਕਾਂ ਤੇ ਆਪਰੇਟਰ ਦਾ ਨਾਮ ਤੇ ਕਿਸੇ ਵੀ ਡੈਕਟਰ ਦਾ ਤੁਸੀਂ ਨਾਮ ਲਿਖ ਕੇ ਇਸ ਨੂੰ ਸੂਬਿਆਂ ਦੇ ਵਿੱਚ ਕੁਝ ਕੰਪਨੀਆਂ ਖਾਸ ਲਿੰਕਡ ਪਾਰਟਨਰਸ਼ਿਪ ਦੇ ਵਿੱਚ ਉਹਨਾਂ ਨੂੰ ਪੇ ਜਿਹੜਾ ਟੈਕਸ ਹੈ ਕੈਨੇਡਾ ਦੇ ਵਿੱਚ ਤੇ ਨਹੀਂ ਕਰਨਾ ਪੈਂਦਾ ਜੇ ਉਸ ਦੇ مالک ਇੱਥੇ ਨਹੀਂ ਰਹਿੰਦੇ ਇਹ ਕੈਨੇਡਾ ਦੇ ਕਲੀਨ ਰੈਪਿਟੇਸ਼ਨ ਕਰਕੇ ਦੁਨੀਆ ਦੇ ਜਿਹੜੇ ਅਰਥਚਾਰਾ ਦੁਨੀਆ ਦੇ ਮਾਹਰ ਨੇ ਕੋਈ ਇੱਥੇ ਸਰਕਾਰ ਬਾਰੇ ਤੇ ਇਹਨਾਂ ਦੇ ਸੂਬਿਆਂ ਦੀਆਂ ਸਰਕਾਰਾਂ ਬਾਰੇ ਇਸ ਤਰ੍ਹਾਂ ਨਹੀਂ ਸੋਚਦੇ ਕਿ ਇੱਥੇ ਚੋਰੀ ਹੋ ਸਕਦੀ ਹੈ ਜਿੱਥੇ ਚੋਰੀ ਹੋ ਰਹੀ ਹੈ ਇਸ ਤਰ੍ਹਾਂ ਦੇ 2 9 ਇਨਵੈਸਟੀਗੇਸ਼ਨ ਦੇ ਵਿੱਚ ਨੇ ਇੱਕ ਜਿਹੜੀ ਕਿ ਬਹੁਤ ਇੱਕ ਕਿਸੇ ਕੰਪਨੀ ਦੇ ਵਿੱਚ ਕੰਮ ਦੀ ਲੜਕੀ ਐ ਤੇ ਇੱਕ ਐਨਿਟੀ ਐ ਤੇ ਕੈਰਨ ਦੋਨੇ ਇੱਕ ਲਾਅ ਕਲਰਕ ਐ ਇੱਕ ਪੈਰਾਲੀਗਲ ਐ ਦੋਨਾਂ ਦੇ ਨਾਂ ਤੇ 200 ਕੰਪਨੀ ਰਜਿਸਟਰਡ ਨੇ ਉਹ ਕਹਿੰਦੇ ਸਾਨੂੰ ਤਾਂ ਮੌਕੇ ਤੇ ਉਹਨਾਂ ਨੇ ਦੱਸਿਆ ਨਹੀਂ ਕਿ ਕੌਣ ਹੈ ਪਿੱਛੇ ਪਰ ਉਹ ਕਹਿੰਦੇ ਜਿਸ ਤਰ੍ਹਾਂ ਵੀ ਟੈਕਸ ਪੇਪਰ ਹੁੰਦੇ ਅਸੀਂ ਦਸਤਖਤ ਕਰਕੇ ਗਾਹਾਂ ਭੇਜ ਦਿੰਦੇ ਹਾਂ ਪਰ ਇਹਨਾਂ ਦੇ ਪਿੱਛੇ ਕੌਣ ਹੈ ਗੱਲ ਹੈ ਕਿ ਇੱਥੇ ਦਾਣਾ ਉਹਨਾਂ ਨੇ ਆਪਣੀ ਗੱਲ ਦੀ ਕਿਸੇ ਗੱਲ ਨੂੰ ਕਿਉਂਕਿ ਜੇ ਕਿਸੇ ਦਾ ਨਾਮ ਵਰਤਿਆ ਜਾ ਰਿਹਾ ਕਿਸੇ ਦੀ ਆਈਡੀ ਵਰਤੀ ਜਾ ਰਹੀ ਹੈ ਇੱਕ ਲੌਕ ਕਲਰਕ ਹੈ ਤੇ ਦੀ ਤੇ ਐਨਿੱਟੇ ਲਰੋਸ਼ ਦੋਨੇ ਹੀ ਛੋਟੀਆਂ-ਛੋਟੀਆਂ ਨੌਕਰੀਆਂ ਕਰਦੇ ਆ ਲੱਖ-ਲੱਖ ਤੇ ਪੈਰਾ ਲੀਗਲ 200 ਕੰਪਨੀਆਂ ਦੇ ਉਹ ਰਜਿਸਟਰਡ ਡਾਇਰੈਕਟਰ ਕੰਪਨੀਆਂ ਜਿਨ੍ਹਾਂ ਦੇ ਵਿੱਚ ਉਹ ਕੰਮ ਕਰਦੀਆਂ ਲਾਅ ਫਰਮਾਂ ਨੇ ਇਹ ਚੀਜ਼ਾਂ ਸੈੱਟ ਕੀਤੀਆਂ ਤੇ ਇਹਦਾ ਮਤਲਬ ਟੈਕਸ ਦੀ ਚੋਰੀ ਇੱਥੇ ਵੀ ਬਹੁਤ ਵੱਡੀ ਬਹੁਤ ਵੱਡੀ ਟੈਕਸ ਦੀ ਚੋਰੀ ਇਹਨਾਂ ਇਸ ਦੇਸ਼ ਦੇ ਵਿੱਚ ਵੀ ਹੋ ਰਹੀ ਬਿਲਕੁਲ ਠੀਕ ਹੈ ਇਨਵੈਸਟੀਗੇਸ਼ਨ ਦੇ ਵਿੱਚ ਤੁਹਾਨੂੰ ਦੱਸਿਆ ਸੀ ਇੱਕ ਵਾਰ ਉਹ ਮਲਟੀ ਮਿਲੀਅਨ ਦੇ ਘਰ ਦੇ ਵਿੱਚ ਵਿਕਟੋਰੀਆ ਚ ਰਹਿੰਦਾ ਇੱਕ ਪਰਿਵਾਰ ਜਿਹੜਾ ਇੱਥੇ ਜੀਐਸਟੀ ਦੇ ਵੇਟ ਲੈ ਰਿਹਾ ਉਹ ਆਪਣੇ ਪੈਸੇ ਖਰਚਣ ਨੂੰ ਆਇਲ ਆਫ ਮੈਨ ਤੋਂ ਸਕਾਟਲੈਂਡ ਦੀ ਇੱਕ ਛੋਟੀ ਜੀ ਆਇਲੈਂਡ ਤੇ ਉੱਥੇ ਉਸਨੇ ਆਪਣੇ ਕੰਪਨੀਆਂ ਖੋਲੀਆਂ ਨੇ ਉੱਥੋਂ ਹਰ ਸਾਲ ਲੱਖ 2 ਲੱਖ ਡਾਲਰ ਮਕਾ ਕੇ ਆਪਣਾ ਗੁਜ਼ਾਰਾ ਕਰ ਰਹੇ ਤੇ ਇੱਥੇ ਦੀ ਇਨਕਮ ਜ਼ੀਰੋ ਨਿਲ 10 ਮਿਲੀਅਨ ਦਾ ਘਰ 'ਚ ਰਹਿਣ ਵਾਲਾ ਬੰਦਾ GST ਰਿਵੈਟ ਲੈ ਰਿਹਾ ਤੇ ਇੱਥੇ ਜਿਹੜਾ ਇੱਕ ਵਾਰ ਦਾੜ ਸਲੇਯਾ ਦੀ ਕਾਫੀ ਜਿਹੜੀ ਪੀਤੀ ਆ ਉਹਦੀ ਰਸੀਦ ਲਿਆ ਕੇ ਭਾਈ ਕਿੱਥੇ ਆ ਨੇ ਆਡੀਟਰ ਘਰ ਦੇ ਵਿੱਚ ਦਸਤਰ ਦੇ ਵਿੱਚ ਫਿਰ 2 ਮਹੀਨੇ ਉੱਥੇ ਗੱਲ ਚੱਲਦੀ ਇਹ ਵੱਡਿਆਂ ਵੱਲ ਕੋਈ ਨਹੀਂ ਝਾਕਦਾ ਵੱਡੀਆਂ ਫਰਮਾਂ ਪੋਤਾ ਫੇਰ ਉਹ ਉਹਨਾਂ ਨੂੰ ਐਮਨੈਸਟੀ ਦਿੰਦੀ ਹੈ ਇੱਕ ਰੈਵਨਿਊ ਕੈਨੇਡਾ ਤੇ ਉਹਨਾਂ ਨੂੰ ਕਹਿੰਦੇ ਚਲ ਕੇ ਜ਼ੋਰ ਆ ਉਹਨਾਂ ਦਾ ਲੌਬੀਇਸਟ ਨੇ ਨੇ 5-5000 ਦੀ 10 ਦੀ ਪਲੇਟ ਖਰੀਦ ਕੇ ਡਿਨਰ ਕਰਕੇ ਪ੍ਰੀਮੀਅਰ ਤੇ ਜਾ ਮੁੱਖ ਮੰਤਰੀ ਤੇ ਜਾ ਪ੍ਰਧਾਨ ਮੰਤਰੀ ਨਾਲ ਹੱਥ ਮਿਲਾਉਣਾ ਤੇ ਕਾਰਡ ਤੇ ਆਪਣੀ ਪਰਸਨਲ ਇਨਫੋਰਮੇਸ਼ਨ ਐਕਸਚੇਂਜ ਕਰਨੀ ਨੇ ਕੁਝ ਵੀ ਹੋਵੇ ਰਾਜਨੀਤੀ ਕਿਸੇ ਵੀ ਦੇਸ਼ ਨਾਲ ਗੱਲ ਆ ਛੋਟਿਆਂ ਦੀ ਛੋਟਿਆਂ ਨਾਲ ਗੱਲ ਆ ਅ ਕ੍ਰਾਪਸ਼ਨ ਨਹੀਂ ਤਾਂ ਮਦਦ ਅਗਲੇ ਲੈ ਲੈਂਦੇ ਨੇ ਰੈਫਰਲ ਹੋ ਤੁਸੀਂ ਹੱਲ ਵਾਲੇ ਵੇਖ ਲਓ ਆਪਣੇ ਸ਼ਹਿਰ 'ਚ ਵੇਖ ਲਓ ਸੂਬੇ 'ਚ ਵੇਖ ਲਓ ਦੇ ਵਿੱਚ 10 ਲੱਖ ਦੇ ਕਰੀਬ ਗਿਣਤੇ ਕਿ 10 ਲੱਖ ਬੰਦੇ ਦਾ ਐਕਸੈਸ ਹੈ 로ਡ ਵੀ ਨਹੀਂ ਹੈ ਬਹੁਤ 80 90% ਲੋਕ ਕਹਿੰਦੇ ਸਾਨੂੰ ਜ਼ਰੂਰਤ ਨਹੀਂ ਕਿਸੇ ਦੀ ਪਰ ਉੱਜ ਕੋ ਮੌਕਾ ਪ੍ਰਸਤ ਜਿਹੜੇ ਬੰਦੇ ਆ ਉਹ ਨੇੜੇ ਲੱਗ ਜਾਂਦੇ ਲੈ ਲੈਂਦੇ ਫਾਇਦਾ ਨੌਕਰੀਆਂ ਲੈ ਗਏ ਕੁਝ ਖਾਸ ਉਹ ਕਰੌਨ ਲੈਂਡ ਲੈ ਲੋ ਜੀ ਆਹ ਲੈ ਲੋ ਲੈ ਲੋ ਅਪਰੂਵਲ ਕਰ ਦੋ ਜੀ ਆਹ ਹਾਈ ਡੈਨਸਿਟੀ ਕਰ ਦੋ ਲੋਕ ਕਰ ਦੋ ਤੇ ਆ ਬੜਾ ਕੁਝ ਚੱਲਦਾ ਔਰ ਇਸ ਤਰ੍ਹਾਂ ਚੱਲਿਆ ਜਾਂਦਾ ਕਿਉਂਕਿ ਇਸ ਨੂੰ ਇੱਥੇ ਮਦਦ ਨਹੀਂ ਮੰਨੀ ਜਾਂਦੀ ਤੇ ਕ੍ਰਾਪਸ਼ਨ ਨਹੀਂ ਮੰਨੀ ਜਾਂਦੀ ਆ ਹੂੰ ਕਿ ਤੇ ਸਹਸੂਰ ਕਰਾਉਣ ਤੇ ਚੜਾ ਲੈਣ ਬੰਦੇ ਨੂੰ ਉਹਦੀ ਦਫੇ ਜੜਪਟ ਕੇ ਛੱਡਦੇ ਆ ਫੇਰ ਨਹੀਂ ਛੱਡਦੇ ਇਹ ਇਹ ਗੱਲਾਂ ਜਿਹੜੀਆਂ ਹਰ ਜਗ੍ਹਾ ਚੱਲਦੀਆਂ ਔਰ ਉੱਥੇ ਉਹਨੇ ਜੇ ਦੇਖਿਆ ਜਾਵੇ ਦੋ ਕਲਰਕ ਤੇ ਪੈਰਾਲੀਗਲ ਨੇ ਉਹ ਹਰ ਸਾਲ ਅਸੀਂ ਜਿਹੜਾ ਟੈਕਸ ਰਿਟਰਨ ਆ ਤੇ ਜਿੰਨੇ ਨੰਬਰ ਠੀਕ ਹੁੰਦੇ ਅਸੀਂ ਦਸਤਕਤ ਕਰਕੇ ਭੇਜ ਦਿੰਨੇ ਸੋ ਬੜਾ ਕੁਝ ਚੱਲ ਰਿਹਾ ਤੇ ਪਰ ਫੇਰ ਵੀ ਜਿਹੜੇ ਟੈਕਸ ਨੇ ਕੇ ਮਨ ਆਇਲੈਂਡ ਉਤਰਾ ਬਿਲਕੁਲ ਹੀ ਜਮਾਈ 2 ਨੰਬਰ ਦੇ ਮਾਇਆ ਜਿਹੜੀ ਉੱਥੇ ਭੇਜੀ ਜਾਂਦੀ ਹੈ ਤੇ ਉੱਥੋਂ ਵਾਪਸ ਹੌਲੀ ਹੌਲੀ ਲਿਆ ਕੇ ਫੇ ਇੱਥੇ ਰਹਿ ਕੇ ਛਕੀ ਜਾਂਦੀ ਤਰੀਕੇ ਨਾਲ ਪੈਸਾ ਪਹੁੰਚਦਾ ਇੱਥੇ ਕੈਸ਼ ਮਨੀ ਦਾ ਬਹੁਤ ਫਲੋ ਹੈ ਭਾਈਚਾਰੇ ਦੇ ਵਿੱਚ ਜੇ ਘੱਟੋ ਘੱਟ ਮੈਂ ਲਿਖਾਂ ਕਹਾ 10 ਤੋਂ 20 ਮਿਲੀਅਨ ਇੱਕ ਸ਼ਹਿਰ ਦੇ ਵਿੱਚ ਜਿੱਥੇ ਸਾਡਾ ਭਾਈਚਾਰਾ ਵੱਸਦਾ ਉੱਥੇ ਇਹ ਕੈਸ਼ ਫਲੋ ਹੀ ਚੱਲਦਾ ਸਰੀ ਦੇ ਵਿੱਚ ਕਾਲੇ ਚਿੱਟਿਆਂ ਦਾ ਕੰਮ ਕਰਨ ਲਈ ਇਹ ਤਾਂ ਰਜਿਸਟਰਡ ਹੁਣ ਤਾਂ bizness ਸੋਹਣਾ bizness ਕਰਦੇ ਆ ਬੰਦੇ ਉੱਥੇ ਕਹਿੰਦੇ ਬੜਾ ਕੰਮ ਚੱਲ ਰਿਹਾ ਹੈ ਡਾਲਰ ਉਹ ਇੱਧਰ ਤੇ ਇੱਧਰ ਇੱਧਰ ਤੇ ਇੱਧਰ ਆ ਪੂਰਾ ਨਾਈਸਲੀ ਕਰਕੇ ਹੁਣ ਕਹਿੰਦੇ ਕੈਸ਼ ਘੱਟ ਰੱਖਿਆ ਜਾਂਦਾ ਧੰਤਾਂਬੱਧ ਰੱਖੀਆਂ ਜਾਂਦੀਆਂ ਇਹ ਵੀ ਗੱਲ ਚੱਲੀ ਹੈ ਨਵੇਂ ਤਰੀਕੇ ਨਵੇਂ ਚੋਰਾ ਦਾ ਮਾਲ ਲੱਖੀਆਂ ਦਾ ਗੱਜ ਜਿੱਥੇ ਤੱਕ ਮਰਜ਼ੀ ਭੱਜ ਲਾ ਲੱਤਾਂ ਜਿੱਦਾਂ ਨੂੰ ਮਰਜ਼ੀ ਕਰ ਲਈ ਗੱਲ ਉਹੀ ਹੋਣੀ ਆ ਫੇਰ ਇੱਕ ਦਿਨ ਆਖਰ ਗੱਲ ਉਹੀ ਹੋਣੀ ਆ ਜਿਹੜੀ ਕਰੇਗਾ ਤੇ ਉਹੋ ਜਿਹਾ ਹੀ ਭਰੇਗਾ ਆਪਨੀ ਭਰੇਗਾ ਗਾਹ ਜਵਾਖ ਜੱਲਾ ਭਰਦੂ ਭਰਨਾ ਪੋ ਸਰੰਤਾ ਸ਼ਰਮਾ ਦਾ ਇੱਕ ਗੀਤ ਵਪਾਰਕ ਸੰਦੇਸ਼ ਤੇ ਮੁੜ ਕੇ ਆਉਣੇ ਅਹੀ ਵਾਰ ਆਪਾਂ ਇਹ ਗੱਲਬਾਤ ਕਰ ਚੁੱਕੇ ਹਾਂ ਕਿ ਨੈਨੀਜ਼ ਦਾ ਹੀ ਪਰਮਨੈਂਟ ਰੈਜ਼ਿਡੈਂਸੀ ਦੀ ਬਹੁਤ ਜਿਹੜੀ ਮੁਸ਼ਕਲ ਹੈ ਉਹਨਾਂ ਦੀ ਜਿਹੜੇ ਵਿਆਹੇ ਹੋਇਆ ਜਾਂ ਲੜਕੀਆਂ ਜਿਹੜੀਆਂ ਵਿਆਹੀਆਂ ਹੋਈਆਂ ਜੇ ਕੋਈ ਇਕੱਲਾ ਹੈ ਤਾਂ ਉਸ ਦੀਆਂ ਰਿਕੁਆਇਰਮੈਂਟਸ ਆਕੇ ਪੂਰੀਆਂ ਕਰਕੇ ਓਪਨ ਵਰਕ ਵੀਜ਼ੇ ਤੋਂ ਬਾਅਦ ਉਹਨਾਂ ਦੀ ਪੀਆਰ ਜਿਹੜੀ ਪਰਮਨੈਂਟ ਰੈਜ਼ਿਡੈਂਸ ਬਣ ਜਾਂਦੇ ਆ ਪਰ ਜਿਹੜੇ ਵਿਆਹੇ ਹੋਇਆ ਚਾਹੇ ਇੱਥੇ ਲੜਕੀ ਐ ਨਾ ਨਹੀਂ ਚਾਹੇ ਲੜਕਾ ਹੈ ਉਹਦਾ ਜਿਹੜਾ ਨਾਲ ਦਾ ਉਹਦਾ ਸਾਥੀ ਹੈ ਉਹ ਪੰਜਾਬ ਦੇ ਵਿੱਚ ਹੈ ਜਾਂ ਹੋਰ ਹੈ ਬਾਲ ਬੱਚੇ ਉੱਥੇ ਨੇ ਤੇ ਸਾਲ ਬਾਅਦ ਇਹ ਲੜਕੇ ਆਪਣੇ ਜੀਵਨ ਸਾਥੀ ਨੂੰ ਜਾਂ ਸਾਥਣ ਨੂੰ ਮਿਲਣ ਲਈ ਪੰਜਾਬ ਨੂੰ ਜਾਂਦੇ ਸਿਰਫ ਤੇ ਸਿਰਫ ਮੁਸ਼ਕਲ ਇੱਕੋ ਆ ਰਹੀ ਹੈ ਕਿ ਜਦ ਵਿਆਹ ਹੋਏ ਨੇ ਤਾਂ ਉਹਨਾਂ ਨੂੰ ਅਪਲਾਈ ਆਪਣੇ ਪਾਰਟਨਰ ਦਾ ਵੀ ਨਾਲ ਕਰਨਾ ਪੈਣਾ ਦੇ ਉਸ ਦੇ ਲਈ ਜਦੋਂ ਇੱਥੇ ਅਪਲਾਈ ਕਰਦੇ ਆ ਕਿ ਨਾਲ ਦੇ ਪਾਸਪੋਰਟ ਦੀ ਤੇ ਬਹੁਤ ਕੰਮ ਹੁੰਦਾ ਉਹਨਾਂ ਦੀ ਇਨਵੈਸਟੀਗੇਸ਼ਨ ਹੋ ਰਹੀ ਆ ਜੀ ਸਾਲ 4 ਸਾਲ 5 ਸਾਲ 6 ਸਾਲ 7 ਸਾਲ ਕੁਝ ਰਾਜਨੀਤਿਕ ਬੰਦੇ ਤੇ ਇਨੀਸ਼ੀਏਟਿਵ ਲੈ ਰਹੇ ਨੇ ਪਰ ਇਹ ਗੱਲ ਮੁੱਕ ਨਹੀਂ ਰਹੀ ਸੋਲਿਊਸ਼ਨ ਨਹੀਂ ਹੋ ਰਿਹਾ ਜ਼ਿੰਦਗੀ ਕਿ 22 23 ਸਾਲ ਦਾ ਇੱਥੇ ਆਇਆ 30 30 ਸਾਲ ਦੀਆਂ ਲੜਕੀਆਂ 32 ਸਾਲ ਦੀਆਂ ਮੁੰਡੇ ਉਹ ਜ਼ਿੰਦਗੀ ਖਰਾਬ ਹੋਈ ਪਈ ਹੈ ਬਹੁਤ ਔਖ ਹੁਣ ਉਹ ਕੰਮ ਵੀ ਜਿੱਥੇ ਕਰ ਰਹੇ ਨੇ ਜਾਂ ਕਰ ਨੇ 10-12 ਡਾਲਰ ਦੀ ਐਵਰੇਜ ਨੌਕਰੀ ਆਪਾਂ 7 ਘੰਟੇ ਮਹੀਨੇ ਦਾ ਵੀਕ ਦਾ ਕਮਾਉਂਦੇ ਤਾਂ 22500 ਦੇ ਵਿੱਚੋਂ 20% ਟੈਕਸ ਕੱਟ ਕੇ ਤਾਂ ਡਾਲਰ 17-1800 ਰਹਿੰਦਾ ਉਹਦੇ ਵਿੱਚੋਂ 800 ਤੋਂ ਮਿਨੀਮਮ 1000 ਡਾਲਰ ਮਿਨੀਮਮ ਵੈਂ ਦਾ ਖਰਚਾ 1000 ਡਾਲਰ ਤੋਂ ਘੱਟ ਕੋਈ ਬੇਸਮੈਂਟ ਨੀ ਮਿਲ ਰਿਹਾ ਜੇ ਦੋ ਵੀ ਸ਼ੇਅਰ ਕਰਨਗੇ 7-800 ਬਚਦਾ ਆ 10-12 ਮਹੀਨੇ ਬਾਅਦ 7-8000 ਉਨਾ ਹੀ ਖਰਚਾ ਹੋ ਜਾਂਦਾ ਉੱਥੇ ਜਾਂਦਾ ਇਹਦੇ ਵਿੱਚੇ ਵਕੀਲਾਂ ਦੇ ਖਰਚੇ ਹੁਣ ਇਹਦਾ ਲਈ ਕਿਉਂ ਕੋਈ ਇਨੀਸ਼ੀਏਟਿਵ ਲੈ ਰਿਹਾ ਰਾਜਨੀਤਿਕ ਬੰਦਾ ਮੈਨੂੰ ਨਹੀਂ ਸਮਝ ਆਉਂਦੀ ਭਾਈ ਦੇ ਵਿੱਚ ਸਭ ਨੂੰ ਪਤਾ ਗੱਲ ਇਹ ਆ ਕੋਲ ਵੋਟਾਂ ਹੈ ਨਹੀਂ ਤਾਂ ਨਹੀਂ ਆਪਾਂ ਲਤ ਵੋਟਾਂ ਬਣਨੀ ਹੈ ਕਿਹੜੇ ਰਾਜ ਦੇ ਪਰਜਾ ਤੇ ਕੁਝ ਇੱਕ ਕਰ ਰਹੇ ਨੇ ਕੁਝ ਇੱਕ ਪੰਜਾਬੀ ਕਰ ਰਹੇ ਨੇ ਪਰ ਫੇਰ ਵੀ ਸਥਾਈ ਹੱਲ ਨਹੀਂ ਵੀਜ਼ਟ ਵੀਜ਼ੇ ਤੇ ਉਹ ਨਾਲ ਦੇ ਉਹਨਾਂ ਦੇ ਬੈਟਰ ਹਾਫ ਹੈ ਜਿਹੜਾ ਉਹ ਨਾਲ ਆਇਆ ਹੋਇਆ ਕਈ ਵਾਰ ਆਪਣਾ ਭਾਈਚਾਰਾ ਸੈਕੰਡ ਹਾਫ ਵੀ ਕਹਿ ਦਿੰਦਾ ਅੱਧੇ ਪਾਟ ਪਰ ਹੁਣ ਉਹ ਕੰਮ ਕਰ ਸਕਣ ਲੀਗਲ ਹੋਣ ਘਰ ਬਣ ਸਕਣ ਦੇਸ਼ ਦੀ ਆਰਥਿਕਤਾ 'ਚ ਹਿੱਸਾ ਪਾ ਸਕਣ ਦੋਨੇ ਜੀ ਹੁਣ ਬਾਲ ਬੱਚੇ ਉਹਨਾਂ ਦੇ ਇੱਥੇ ਪੜਨ ਬੜਾ ਔਖਾ ਹੈ ਸੌਖਾ ਨਹੀਂ ਹੈ ਕੱਢੀ ਜਾ ਸਕਦੀ ਹੈ ਜਿਹੜੇ ਇਮੀਗ੍ਰੈਂਟ ਨੇ ਸਿਟੀਜ਼ਨ ਨੇ ਉਹ ਜੇ ਇਹਨਾਂ ਨੂੰ ਵੇਖਣ ਜਿਹੜੇ ਵਰਕ ਵੀਜ਼ੇ ਤੇ ਆਏ ਨੇ ਜਾਂ ਸਟੂਡੈਂਟ ਨੇ ਜਾਂ ਨੈਨੀਜ਼ ਕਿੰਨਾ ਔਖਾ ਤੁਸੀਂ ਮਹਿਸੂਸ ਕਰ ਸਕਦੇ ਹੋ ਤੁਸੀਂ ਲੜਕੀਆਂ ਜਦ ਜਦ ਗੱਲ ਦਾ ਇੱਕ ਵਾਰ ਪਤਾ ਲੱਗਿਆ ਸੀ ਤੇ ਤੇ ਜਦ ਕੁਦਰਤੀ ਬੈਠੇ ਸੀ ਅਸੀਂ ਮੈਂ ਤੇ ਦਰਜੀਤ ਤੇ ਕੁਦਰਤੀ ਆ ਕੇ ਇੱਕ ਭੈਣ ਜੀ ਦੱਸਣ ਲੱਗੀ ਤੇ ਉਹ ਰੋਣ ਮਤਲਬ ਸ਼ੀ ਹੈਡ ਟੀਅਰਸ ਹੰਝੂ ਡੇਗ ਰਹੀ ਸੀ ਵੀ ਮੈਂ ਹੁਣ ਕਰਾਂ ਕੀ ਔਰ ਅਸੀਂ ਵੀ ਬੜੀ ਆਪਣੇ ਆਪ ਮਹਿਸੂਸ ਕੀਤਾ ਯਾਰ ਇੰਨਾ ਦੁੱਖਾ ਭਾਈਚਾਰੇ ਦੇ ਵਿੱਚ ਅਸੀਂ ਆਪਾਂ ਸੱਤ ਡੁਗਡਗੀਆਂ ਵਜਾਉਂਦੇ ਆ ਸਵੇਰ ਤੋਂ ਲੈ ਕੇ ਆਸਣ ਤੱਕ ਸੌਦਾ ਵੇਚਦੇ ਆ ਪੈਸੇ ਇਕੱਠੇ ਕਰਦੇ ਆ ਪਰ ਆ ਮੁਸ਼ਕਲ ਜਿਹੜੀ ਐ ਕੋਈ ਹੱਲ ਕਰਨ ਲਈ ਕਿਉਂ ਨਹੀਂ ਕੋਈ ਕਰਦਾ ਕਾਰਨ ਕੁਝ ਇਹ ਐ ਪਾ ਨੇ ਇਸ ਦੇ ਬਾਰੇ ਤਕੜਾ ਵਧੀਆ ਕੰਮ ਨਹੀਂ ਕੀਤਾ ਕਿਉਂਕਿ ਸਰਕਾਰੀ ਦਰਵਾਜ਼ੇ ਜਿੱਥੇ ਥੋੜੀ ਜੀ ਗੱਠ ਟਾਈਟ ਹੋਣੀ ਐ ਉਧਰ ਨੂੰ ਮੂੰਹ ਨਹੀਂ ਕਰਦੇ ਜਿ세 ਸਿੰਘ ਸ਼ਹੀਦ ਦੀ ਵਰਸੀ ਆ ਜਾਏ ਤੇ ਉਸ ਕੋਈ ਗਾਉਣ ਵਾਲਾ ਮਰ ਜਵੇ ਬਸ ਮੱਥਾ ਹੀ ਸਾਨੂੰ ਟਾਈਮ ਮਿਲਣਾ ਵੀ ਅੱਜ ਹੁਣ ਗਾਉਣ ਵਾਲੇ ਦੀਆਂ ਗੱਲਾਂ ਕਰ ਲਿਓ ਇੱਕ ਦਿਨ ਹਾਕਮ ਸੂਫੀ ਉਹਣੀ ਤੁਰ ਗਏ ਉਸ ਦਿਨ ਸਰਦਾਰ ਖਾਲੜੇ ਦੀ ਬਰਸੀ ਸੀ ਦਾ ਕੀ ਹਾਲ ਆ ਮਰ ਗਿਆ ਉਸ ਦਿਨ ਫਿਰ ਹਾਂ ਅੱਜ ਸਵਾਦ ਆ ਗਿਆ ਖਾਲੜੇ ਨੂੰ ਕਰ ਲਓ ਪਿੱਛੇ ਨਹੀਂ ਗੱਲ ਕਰਨੀ ਕੋ ਸੂਫੀ ਦੀ ਚੱਲਣ ਦਾ ਸਾਰਾ ਦਿਨ ਓਏ ਇਹ ਜਿਹੜਾ ਸਾਡਾ ਬਣਦਾ ਕੰਮ ਹੈ ਜੇ ਕਲੈਕਟਿਵਲੀ ਅਸੀਂ ਕੰਮ ਕਰੀਏ ਸਬੰਧਤ ਮਨਿਸਟਰ ਦੇ ਨਾਲ ਕੋਸ਼ਿਸ਼ ਤਾਂ ਕੀਤੀ ਵੀ ਆਈ ਮੇਲਸ ਉਹਨਾਂ ਨੂੰ ਕੱਲੀਆਂ ਨੇ ਹੁਣ ਜੇ ਕੋਈ ਵਾਪਸ ਕਰੇ ਤਾਂ ਗੱਲ ਹੋ ਸਕਦੀ ਹੈ ਇਮੀਗ੍ਰੇਸ਼ਨ ਮਨਿਸਟਰ ਨੂੰ ਈਵਨ ਤੁਸੀਂ ਇਸ ਨੂੰ ਨਵੇੜਨ ਹੁਣ ਤਾਂ ਇਮੀਗ੍ਰੇਸ਼ਨ ਮਨਿਸਟਰ ਵੀ ਉਹ ਆ ਦੁੱਖ ਵੇਖਿਆ ਜਿਹੜਾ ਰਫਿਊਜੀ ਆ ਕੇ ਸਮਾਲੀਆ ਤੋਂ ਇੱਥੇ ਪੱਕਾ ਹੋ ਕੇ ਗੱਲ ਖੜੀ ਆ ਹੁਣ ਤਾਂ ਉਦੋਂ ਵਧੀਆ ਤਾਂ ਦੁੱਖ ਕਿਸੇ ਨੂੰ ਪਤਾ ਨਹੀਂ ਨਾ ਹੈ ਪਰ ਫਿਰ ਵੀ ਇਸ ਤੇ ਬਾਰੇ ਲੋਕਲ ਜਿਹੜੀਆਂ ਸਮਾਜ ਸੇਵਾ ਸੁਣ ਰਹੀ ਆ ਜਾਂ ਕੋਈ ਮੈਂਬਰ ਸੁਣ ਰਿਹਾ ਤੁਹਾਨੂੰ ਮਿਲਦੀਆਂ ਬਾਵਾ ਗ੍ਰਾਂਟਸ ਵਗੈਰਾ ਕਰੋ ਕੋਸ਼ਾ ਇਹ ਜਿਹੜੇ ਲੋਕ ਭਾਈਚਾਰੇ ਦੇ ਨੇ ਇਹ ਔਖੇ ਜਿਹੜੇ ਫਿਰਦੇ ਆ ਕੋਈ ਪੋਲਿਟਿਕਲ ਬੰਦਾ ਇਨੀਸ਼ੀਏਟਿਵ ਲੈ ਲਵੇ ਇਹਨਾਂ ਦਾ ਕਰ ਦੇਵੇ ਤੇ ਕੱਲ ਨੂੰ ਸਿਟੀਜ਼ਨ ਹੋਣਗੇ ਵੋਟ ਪਾ ਦੇਣਗੇ ਤੁਹਾਨੂੰ ਐਨੀ ਕੇ ਗੱਲ ਮੰਨ ਲਓ ਅਬ ਬਹੁਤ ਡਬਲ ਫੇਸ ਜਿਹੜੀ ਜ਼ਿੰਦਗੀ ਅਸੀਂ ਜਿਉ ਰਹੇ ਹਾਂ ਨਾ ਦਿਮੂਹਾ ਕੰਮ ਸਾਡਾ ਜਿਹੜਾ ਹੋਇਆ ਹੋਇਆ ਪਿਛਲੇ ਪਾਸੇ ਤਾਂ ਅਸੀਂ ਕਰ ਰਹੇ ਹਾਂ ਬਹੁਤ ਕੰਮ ਸੁਧਾਰ ਦਿਓ ਆਹ ਕੱਢ ਦਿਓ ਉਹਨੂੰ ਕਰ ਦਿਓ ਥਲੜੀ ਉੱਪਰ ਲਿਆ ਦਿਓ ਇੱਥੇ ਸਾਡੇ ਨੱਕ ਥੱਲੇ ਜਾਂ ੱੱਕਾ ਹੁੰਦਾ ਅਸੀਂ ਪਿੱਠ ਕਰਕੇ ਚਲੇ ਜਾਂਦੇ ਆ ਗੱਲ 2 ਹਫ਼ਤੇ ਪਹਿਲਾਂ ਰਾਜ ਬਰਾੜ ਦੀ ਮੌਤ ਤੋਂ ਬਾਅਦ ਆਪਾਂ ਇਹ ਗੱਲ ਕੀਤੀ ਸੀ ਔਰ ਇਹ ਗੱਲ ਸੱਚੀ ਹੈ ਜਿਹੜਾ ਪਾਣੀ ਗੋਡੇ-ਗੋਡੇ ਖੜਾ ਉਹ ਪਾਣੀ 'ਚ ਉਹੀ ਖੜਾ ਹੈ ਕੋਲ ਦੀ ਕਿਸ਼ਤੀਆਂ ਆਲੇ ਨਿੰਗੀ ਜਾਣਗੇ ਕਿਵੇਂ ਆ ਬਾਈ ਇਉਂ ਕਹਿ ਕੇ ਲੰਘ ਜਾਣਗੇ ਪਰ ਕੋਈ ਨਹੀਂ ਚੜਾਉਂਦਾ ਕੋਈ ਉਹ ਰੋਕੂ ਮਸਾਂ ਇਹੋ ਵੀ ਸੌ 'ਚ 4% ਨੇ ਉਹ ਕਹਿੰਦਾ ਯਾਰ ਖੜਦੀ ਨਹੀਂ ਰੇਸ ਇਹਦੀ ਬਹੁਤ ਘੱਟ ਹੈ ਜੇ ਮੈਂ ਰੇਸ ਘਟਾਤੀ ਨਾਲ ਦੀਆਂ ਨੰਗ ਜਾਣਗੀਆਂ ਕੋਲ ਦੀ ਕਿਸ਼ਤੀਆਂ ਸੋ ਇਹ ਦੁੱਖ ਦੀ ਗੱਲ ਹੈ ਹੁਣ ਇਹ ਮੈਨੀ ਜਿੰਨੇ ਵੀ 11 ਕੇਅਰਗੇਵਰ ਨੇ ਮੈਸੇਜ ਕਰਦੇ ਰਹਿੰਦੇ ਨੇ ਪਰ ਇੱਕ ਲੈਵਲ ਤੱਕ ਮੈਂ ਕੋਸ਼ਿਸ਼ ਕਰ ਰਿਹਾ ਹਾਂ ਦੱਸ ਰਿਹਾ ਹਾਂ ਪਰ ਅੱਗੇ ਕੀ ਕੀਤਾ ਜਾਵੇ ਇਹ ਰਾਹ ਜਿਹੜਾ ਕੋਈ ਪੋਲਿਟਿਕਲ ਰਾਜਨੀਤਿਕ ਬੰਦਾ ਇਨੀਸ਼ੀਏਟਿਵ ਲੈ ਸਕਦਾ ਉਹ ਇਸ ਫਰਦਰ ਪਰਸਿਊ ਕਰ ਸਕਦਾ ਖਾਸ ਤੌਰ ਤੇ ਸਬੰਧਤ ਜਿਹੜੇ ਲਿਬਰਲ ਦੇ ਵਿੱਚ ਹੁਣ ਜਿਨ੍ਹਾਂ ਦੀ ਸਰਕਾਰ ਹੈ ਥ੍ਰੂਡੋ ਤੱਕ ਜਾਂ ਅੱਜ ਵੀ ਕਿਤੇ ਸੂਤ ਫੇਖੜਾ ਕੇ ਗੱਲ ਕਰਾਂ ਮੈਂ ਕੋਸ਼ਿਸ਼ ਕਰ ਰਿਹਾ ਹਾਂ ਬਹੁਤ ਜ਼ਿਆਦਾ ਕਿ ਮਨਿਸਟਰ ਦੇ ਨਾਲ ਗੱਲ ਹੋਵੇ ਤੇ ਉਹਨੂੰ ਲਾਈਵ ਲਿਆ ਕੇ ਉਸ ਤੋਂ ਕੋਸ਼ਿਸ਼ ਹੋਰ ਸਾਡੇ ਮਨਿਸਟਰ ਨੇ ਉਹਨਾਂ ਨੂੰ ਵੀ ਕਿਹਾ ਕਿ ਕੁਝ ਕਰੋ ਹੁਣ ਤੁਹਾਡਾ ਜਿਹੜਾ ਆਟੋਵਾਜ ਦੇ ਨੇੜੇ ਰਹਿੰਦਾ ਬੰਦਾ ਹੈ ਇਹਦੇ ਨਾਲ ਗੱਲ ਕਰਕੇ ਕੁਝ ਇਹ ਕਰੋ ਇਹ ਬੰਦੇ ਪੱਕੇ ਹੋ ਜਾਣ ਇਹ ਬੜੀ ਮੁਸ਼ਕਲ ਦੀ ਗੱਲ ਹੈ ਭਾਈਚਾਰੇ ਗੱਲ ਇਹ ਉਹੀ ਫੇਰ ਜਿਹੜਾ ਦੁੱਖ ਚਾ ਦੁੱਖ ਚਾ ਜਿਹੜਾ ਸੁੱਖ ਚਾ ਸੁੱਖ ਚਾ ਸੋਖ ਸਮਾਂ ਹੈ ਨਹੀਂ ਦੁੱਖ ਵਾਲੇ ਦਾ ਪਤਾ ਕਰਨ ਵਾਲਾ ਦੁੱਖ ਵਾਲਾ ਛਿਪਦਾ ਹੈ ਕਿ ਕੀ ਕਹਾ ਮੈਂ ਜਾ ਕੇ ਕਿਸੇ ਮੁਸ਼ਕਲਾਂ ਸਾਡੀਆਂ ਵੱਧ ਰਹੀਆਂ ਨੇ ਤੁਸੀਂ ਇਹ ਗੱਲ ਮੰਨਣ ਤੋਂ ਇਨਕਾਰੀ ਆਪਾਂ ਹੁੰਨੇ ਆ ਪਰ ਜਿਸ ਤਰ੍ਹਾਂ ਸਾਡੇ ਭਾਈਚਾਰੇ ਦੇ ਹਰ ਰੋਜ਼ ਦੀਆਂ ਮੁਸ਼ਕਲਾਂ ਡਰਗਵਾਰ ਦੀ ਹੈ ਆਤਮ ਹੱਤਿਆ ਦੀ ਹੈ ਤੇ ਰਾਜਨੀਤਿਕ ਬੰਦਿਆਂ ਵੱਲੋਂ ਸਾਡਾ ਸ਼ੋਸ਼ਣ ਹੈ ਤੇ ਵੋਟਾਂ ਲੈ ਕੇ ਸਾਨੂੰ ਪੁੱਛਿਆ ਨਹੀਂ ਜਾਂਦਾ ਉਸ ਦੀ ਗੱਲ ਹੈ ਗੈਟੋ ਏਰੀਏ ਜਿਹੜੇ ਜਿੱਥੇ ਪੰਜਾਬੀਆਂ ਦੀ ਸੰਘਣੀ ਵਸੋਂ ਹੈ ਉੱਥੇ ਚਾਲ ਨਹੀਂ ਕੀਤਾ ਜਾਂਦਾ ਖੱਬਲ ਖੜਾ ਜਿਵੇਂ ਰਿਜ਼ਰਵ ਦੇ ਵਿੱਚ ਖੜਾ ਸੜਕਾਂ ਟੁੱਟੀਆਂ ਹੋਏ ਕੋਈ ਨਹੀਂ ਪੁੱਛਦਾ ਰਾਤ ਨੂੰ ਕੋਈ ਐਮਰਜੈਂਸੀ ਵਹੀਕਲ ਆਉਣ ਲੱਗ ਪੈਣੇ ਜ਼ਰੂਰ ਤੇ ਪੈ ਜੇ ਕਲ ਦੀ ਚ ਬੜਨੇ ਨਹੀਂ ਜੇ ਬੜਗੇ ਤਾਂ ਨਿਕਲਨੇ ਨਹੀਂ ਤੇ ਇਹ ਅਗਲਾ ਜਿਹਦੇ ਚਾਰ ਪੈਰ ਬਣੇ ਉਹ ਕਹਿੰਦਾ ਸੌ ਸਰੀ ਜਾ ਕੇ ਏਕੜ ਚ ਘਰ ਬਣਾ ਲੈ ਰਹਿਣ ਦੇ ਹੁਣ ਨਿਊਟਨ ਨੂੰ ਬਹੁਤ ਛਿੱਲ ਲਿਆ ਮੈਨੂੰ ਚਲੋ ਇੱਥੋਂ ਚਲੋ ਸੌ ਸਰੀ ਨੂੰ ਕਹੀ ਜਾਂਦਾ ਚਾਰ ਪੈਰ ਬਣ ਗਏ ਲੌਟਾ ਇਹਨਾਂ ਨੂੰ ਵੇਚਤੀਆਂ ਗੱਲ ਖੜੀ ਡੈਮੇਜਡ ਡਿਪੋਜ਼ਿਟ ਆਪਾਂ 10-10 ਹਜ਼ਾਰ ਰੱਖਿਆ ਹੋਇਆ ਇਹਨਾਂ ਦਾ ਕੋਈ ਨਹੀਂ ਸ਼ਰਦ ਕੋਈ ਨਹੀਂ ਬਖਸ਼ਦਾ ਜਿਹਦੇ ਇੱਕ ਵਾਰ ਬੇਤੇ ਚੜ ਗਈ ਗੱਲ ਉਹ ਫਿਰਨ ਪੂਰੀਆਂ ਸਲਾਬਾ ਜੀਆਂ ਪਉਂਦਾ ਹੈ। ਜਿਹੜਾ ਕੁਛ ਕਰਨ ਵਾਲਾ ਰਾਜਨੀਤਿਕ ਬੰਦਿਆਂ ਦਾ ਉਹ ਰਾਜਨੀਤਿਕ ਬੰਦਿਆਂ ਦੇ ਕਰਨ ਕਰਕੇ ਹੀ ਤੁਹਾਨੂੰ ਵੋਟਾਂ ਪਾਈਆਂ ਵਿੱਚ ਲੱਗਦੇ ਫਿਰਦੇ ਇੱਕ ਦੂਜੇ ਦੇ ਉੱਤੇ ਆਟਵਾਚ ਇਹ ਗਰੀਬਾਂ ਦਾ ਕੋਈ ਕੰਮ ਕਰੋ। ਤੁਹਾਡੀ ਵਾਵਾ ਹੋਵੇ ਕੋਈ ਚੰਗੀ ਗੱਲ ਹੋਵੇ ਦੇਖ ਲਓ ਪੁਰਾਣੇ ਬੰਦਿਆਂ ਨੂੰ ਲੋਕ ਮੋਸ ਹਉਤੇ ਅਰਗੇ ਦਾ ਨੌ ਮੂਹਰੇ ਆਉਂਦਾ ਹੈ। ਹਰ ਸਮੇ ਨੌ ਚੰਗੇ ਕੰਮਾਂ ਦੀ ਗੱਲ ਚੱਲਦੀ ਹੈ। ਅਹਜਾ ਕੁਛ ਇਨੀਸ਼ੀਏਟਿਵ ਲੈ ਕੇ ਉਹ ਨਾ ਖੱਟ ਲੋ ਤੁਹਾਨੂੰ ਕਲਮ ਦਿੱਤੀ ਆ ਰੱਬ ਨੇ ਪੈਸੇ ਸਾਡੇ ਜਹਾਜ਼ ਤੁਸੀਂ ਚੜੇ ਜਾ ਕੇ ਦੇ ਦੁੱਖ ਦਰਦ ਕਰੋ ਕੋਈ ਪ੍ਰੈਸ ਕਾਨਫਰੰਸ ਕਰੋ ਕੁਝ ਕਰੋ ਜਿਹੜੇ ਫੀਲੋ ਸੁਣਦੇ ਆ ਦੱਸੋ ਆਪਣੇ ਅਕਾਵਾ ਨੂੰ ਕਿ ਆਹ ਗੱਲ ਚੱਲਦੀ ਐ ਨਹੀਂ ਤਾਂ ਉੰਨੀ ਦੂਰ ਨਹੀਂ ਉੱਠੇ ਪਾਸਿਓਂ ਛਾਂਗਾਂਗੇ ਫਿਰ ਵਪਾਰਕ ਸੰਦੇਸ਼ ਦੇ ਕਰਨੀ ਕਰਨੀਆਂ ਭਾਈਚਾਰੇ ਨਾਲ ਹਰ ਰੋਜ਼ ਜਦ ਸੂਰ ਛਿਪ ਜਾਂਦਾ ਰਾਤ ਹੋ ਜਾਂਦੀ ਹੈ ਸੜੀ ਦੀਆਂ ਸੜਕਾਂ ਤੇ ਹਰ 5ਵੀਂ ਜਾਂ 7ਵੀਂ ਜਾਂ 10ਵੀਂ ਕਾਰ ਬਿਨਾਂ ਲਾਈਟਾਂ ਤੋਂ ਤੁਰੀ ਫਿਰਦੀ ਹੈ ਔਰ ਮਾੜੀ ਕਿਸਮ ਤੋਂ ਉਹਨੂੰ ਚਲਾਉਣ ਵਾਲਾ ਵੀ ਸਾਡਾ ਲਾਣਾ ਬੈਠਾ ਐਤਵਾਰ ਨੂੰ 6:30 ਵਜੇ ਐਲੈਕਸ ਫਰੇਜ਼ਰ ਤੇ ਮੈਂ ਜਾਮਾ ਮੈਂ ਕਿਹਾ ਯਾਰ ਇਹ ਲਾਈਟਸ ਨੇ ਜਿਹੜੀਆਂ ਪਾਰਕ ਲਾਈਟਸ ਨੇ ਜਗ ਰਹੀਆਂ ਸਵਿਚ ਨਹੀਂ ਆਨ ਕੀਤੀ ਹੋਈ ਦੇਖਾਂ ਦਾ ਜਾ ਕੇ ਗਾਂ ਗਿਆ ਬਰਾਬਰ ਜੇ ਨੂੰ ਮੈਂ ਜੋ ਨੂੰ ਕਹਾ ਮੈਂ ਵੇਖੀ ਉਹ ਪੁੱਤ ਦੇਖ ਕੀ ਕਹਾਣੀ ਆ ਉਹ ਕਹਿੰਦਾ ਬਾਪੂ ਜੀ ਠਾਠੀ ਬੰਨੀ ਬੈਠਾ ਡੈਡੀ ਠਾਠੀ ਇੱਕ ਮੁੱਛਾਂ ਤੇ ਇੱਕ ਦਾੜੀ ਪੱਗ ਬੰਨ ਕੇ ਪੱਗ ਦੇ ਵਿੱਚ ਨਹੀਂ ਫਿਰ ਜਿਹੜਾ ਬਾਅਦ ਚ ਲੜ ਖੋਲ ਕੇ ਕਰਦੇ ਆ ਨਾ ਟਾਈਟ ਐਨ ਬੰਨਿਆ ਹੈ ਨੂਰਿਆ ਹੋਇਆ ਆਪਣੇ ਆਪ ਨੂੰ ਮੈਂ ਕਿਹਾ ਵੀ ਦੋ ਹੀ ਨਿਸ਼ਾਨੇ ਐ ਪਾਇਆ ਹੈ ਜਾਂ ਗੁਰਦੁਆਰਾ ਸਾਹਿਬ ਆ ਜੰਪਰ ਲੈ ਜਲੇਬੀਆਂ ਤਲੀਆਂ ਜਾਂਦੀਆਂ ਤੇ ਹੁਣ ਨਕਤ ਚ ਭੂਰੀ ਕੀੜੀ ਵਾਂਗੂ ਲੜਦੀਆਂ ਆਦਮ ਬੋ ਆਦਮ ਬੋ ਹੋਈ ਹੋਈ ਐ ਮੈਂ ਕਿਹਾ ਇਹਨੇ ਬਾਈ ਨੇ ਕਿੱਥੇ ਬੱਤੀਆਂ ਲਾਉਣੀਆਂ ਇਹਨੂੰ ਤਾਂ ਹੁਣ ਲੰਗਰ ਦਿਖਦਾ ਐਨ ਤਿਆਰੀ ਕੀਤੀ ਹੋਈ ਐ ਜੇ ਆਪ ਨੀ ਪਤਾ ਇਹਨਾਂ ਨੂੰ ਦੱਸ ਦਿਓ ਕਿ ਬਾਪੂ ਜੀ ਇਹ ਜਿਹੜੀਆਂ ਬੱਤੀਆਂ ਇੱਥੇ ਦਿਨੇ ਵੀ ਜਗਦੀਆਂ ਰਹਿੰਦੀਆਂ ਰਾਤ ਨੂੰ ਜਾਂ ਸੂਰਜ ਢਲੇ ਤੇ ਇਹ ਹੱਥ ਵਾਲੀ ਸਵਿੱਚ ਆਨ ਕਰ ਲਓ ਜਿਹੜੀਆਂ ਪੁਰਾਣੀਆਂ ਗੱਡੀਆਂ 'ਚ ਨਵੀਆਂ ਦੇ ਵਿੱਚ ਹੁਣ ਚਾਹੇ ਉਹ 15000 ਦੇ ਹੋ ਤੇ ਆਟੋ ਦੀ ਸਵਿੱਚ ਐ ਆਟੋ ਵਾਲੇ ਪਾਸੇ ਨੂੰ ਉਹ ਲਾ Đੋ ਰਾਤ ਨੂੰ ਜਦ ਸੈਂਸਰ ਦੇ ਨਾਲ ਹਨੇਰਾ ਹੋਵੇ ਤਾਂ ਲਾਈਟਾਂ ਜਗ ਜਾਣ अच्छा बराबर ਤੇ ਤੁਸੀਂ ਸੜਕ ਤੇ ਕਰਕੇ ਜਦ ਕਹੋਗੇ ਫਿਰ ਬਰਾਬਰ ਸਮਝਣਾ ਨਹੀਂ ਫਿਰ ਬ੍ਰੇਕ ਇਹ ਲਾ ਲੈਣਾ ਉਹਦੇ ਕੁਝ ਹੋ ਗਿਆ ਹੁਣ ਤੁਸੀਂ ਸੜਕ ਤੇ ਤਿੰਨ ਲੇਨਾਂ ਚ ਕੀ ਕਹੋ ਵੀ ਕੀ ਕਰ ਇਹ ਨਾਰਮਲ ਪ੍ਰੈਕਟਿਸ ਹੈ ਹਰ ਰੋਜ਼ ਦੀ ਉਪਰੋਂ ਢੇਰਾ ਗੱਡੀ ਕਾਲੀ ਆ ਪਿਛਲੀਆਂ ਲਾਈਟਸ ਨੇ ਜਿਹੜੀਆਂ ਬਿਲਕੁਲ ਬ੍ਰੇਕ ਲੱਗਣ ਵੇਲੇ ਜਗਦੀਆਂ ਜਿਹੜੀਆਂ ਪਾਰਕ ਲਾਈਟਸ ਨੇ ਟੇਲ ਲਾਈਟਸ ਨੇ ਅਲੱਗ-ਅਲੱਗ ਗੱਲਾਂ ਇਹ ਜਿਹੜੇ ਸਭ ਇੱਥੇ ਸਿੱਖਿਆ ਆ ਕੇ ਉਹਨਾਂ ਦਾ ਕੰਮ ਹੈ ਜੇ ਮਾਰਾਂ ਖਾਧੀਆਂ ਹੋਣ ਨਾ ਫਿਰ ਪਤਾ ਵੀ ਸੂਰਜ ਢੱਲਦੇ ਕਿਵੇਂ ਪਾਰਕ ਲਾਈਟਾਂ ਲਾ ਕੇ ਮੱਥਾ ਟੇਕੀਦਾ ਵਿਦਾਤਾ ਕਿਰਪਾ ਰੱਖੀ ਕਹਿੰਦੇ ਸੀ ਦੇ ਵਿੱਚ ਬਾਹਰਲਾ ਬੱਲ ਬੇੜਾ ਲੱਗਦਾ ਬੇਬੇ ਕਹਿੰਦੀ ਲਾਓ ਭਾਈ ਤਰਕਾਲਾਂ ਸੰਧਿਆ ਹੋ ਗਈਆਂ ਦੋਨੇ ਸ਼ਬਦ ਬੋਲਦੀਆਂ ਪਾਕੀ ਬੋਲ ਪਿਆ ਨਾਲੇ ਬਾਹਰਲਾ ਲਾ ਬੱਲ ਜਦ ਬੱਲ ਬਜਣਾ ਫਿਰ ਮੱਥਾ ਟੇਕਣਾ ਬੇਬੇ ਉਹਨਾਂ ਸਿਰ ਤੇ ਲੈ ਕੇ ਮਰਬਲ ਦੀ ਚੁੰਨੀ ਸਤਿ ਆਪਾਸ਼ਾ ਸੁੱਖ ਰੱਖੀ ਆ ਮੱਥੇ ਲੱਗਦਾ ਮਤਲਬ ਮੇਰੇ ਆ ਗੱਲ ਮੈਂ ਕਰਦੀ ਆ ਫਿਰ ਇਉਂ ਕਈ ਵਾਰ ਕਹਿੰਦੀ ਆ ਇਹ ਕਾਰਾਂ ਲੈ ਤਾਂ ਲਈਆਂ ਜਿਹੜੀਆਂ ਤਾਂ ਇਹ ਤਾਂ ਨਾਰਮਲ ਇੱਕ ਪ੍ਰੈਕਟਿਸ ਹੈ ਕਿ ਤੁਹਾਡੀ ਨਾਲ ਲਾਈਟਸ ਜਿਹੜੀਆਂ ਮੇਨ ਆਨ ਚਾਹੀਦੀਆਂ ਫਿਰ ਦੂਜਾ ਕੰਮ ਕਰਦੇ ਹੋ ਸ਼ਹਿਰ ਦੇ ਵਿੱਚ ਜਾਂ ਕਿਤੇ ਵੀ ਹਾਈ ਬੀਮ ਨਾਲ ਗੱਡੀ ਨਹੀਂ ਤੁਸੀਂ ਚਲਾ ਸਕਦੇ ਫੁੱਲ ਜਿਹੜੀਆਂ ਲਾਈਟਾਂ ਫਿਰ ਉਹ ਮਾਰਦੇ ਹੋ ਅੰਦਰ ਇੱਕ ਦੀਵਾ ਜਗਦਾ ਹੁੰਦਾ ਫੁੱਲ ਲਾਈਟਾਂ ਦਾ ਨੀਲੀ ਲਾਈਟ ਅੰਦਰ ਜਗਦੀ ਆ ਮੂਹਰੇ ਜਿੱਥੇ ਤੁਹਾਡਾ ਰੇਸ ਰੇਸ ਸਾ ਮੀਟਰ ਨਿਗਾਹ ਰੱਖਿਆ ਕਰੋ ਲਗਜ਼ਰੀ ਕਾਰਾਂ ਨੇ ਜਿਹੜੀਆਂ ਉਹਨਾਂ ਦੇ ਫੰਕਸ਼ਨ ਸਾਰੇ ਤੁਹਾਨੂੰ ਪਤਾ ਹੋਣਗੇ ਮੈਂ ਇੱਕ ਵਾਰ ਅੱਗੇ ਵੀ ਦੱਸਿਆ ਇੱਕ ਵਾਰ ਤੇ 7 ਸੀਰੀਜ਼ BMW ਨੂੰ ਖੜਾ ਨਾ ਮੂਹਰੇ ਨੂੰ ਜਾਵੇ ਨਾ ਪਿੱਛੇ ਨੂੰ ਜਾਂ ਦਰਵਾਜ਼ੇ ਨੂੰ ਹੱਥ ਲਾਵੇ ਲੇਰਾ ਮਾਰੇ ਕਹਿੰਦਾ ਮੈਂ ਕਿਹਾ ਕਿਵੇਂ ਆ ਕਹਿੰਦਾ ਪਤਾ ਹੀ ਨਹੀਂ ਕੀ ਹੋ ਗਿਆ ਸੱਪ ਸੌਂ ਗਿਆ ਜਦ ਹੱਥ ਲਾਉਣਾ ਚ ਘਿਹੜਾ ਹੀ ਮਾਰਦੀ ਐ ਪਤਾ ਨਹੀਂ ਕਿਹੜਾ ਕਿਹੜਾ ਬਟਨ ਨੱਪੀ ਬੈਠਾ ਹੁਣ ਗੱਲ ਇਹ ਐ ਜਿਹੜਾ ਹੱਥ ਹਲ ਦੇ ਪੋਰ ਮੱਕੀ ਬੀਜ ਦਾ ਹੁੰਦਾ ਸੀ ਹੁਣ ਉਹ ਹੱਥ ਜਦ BMW ਦੇ ਵਿੱਚ ਮਰਸੀਡੀ ਦੇ ਵਿੱਚ ਫਿਰਦੇ ਆ ਹੁਣ ਕਈ ਮਰਸੀਡੀ ਵਾਲੇ ਜਿਹੜੇ ਮਹਿੰਗੀਆਂ ਵਾਲੇ ਨੇ ਉਹ ਤਾਂ ਐਂ ਕਹਦੇ ਵੀ ਜੰਮੇ ਹੀ ਸੀ ਅਸੀਂ ਤਾਂ ਆਹੀ ਘਰੇ ਖੜੀ ਸੀ ਜਦ ਦਿਨ ਨੂੰ ਵੀ ਲੈ ਕੇ ਆਇਆ ਬਾਪੂ ਮਰਸਦੀ ਕਿਹ ਕਿਹਾ ਸੀ ਮਰਸਦੀ ਕਹਿੰਦੇ ਆ ਨਾਲ ਕਿਉਂਕਿ ਉਹਨਾਂ ਦੇ ਕੱਦ ਦਾ ਕੱਦ ਜਿਹੜੇ ਨੇ ਉਹਦੇ ਨਾਲ ਹੀ ਵਾਧੇ ਉਹ ਕੋ ਅਗਲਾ ਕਹਾਂਵਾਂ ਇਹਦੇ ਬਿਨਾਂ ਨਹੀਂ ਕਹਾਣੀ ਕਿਹੜਾ ਆਇਆ ਕਿਹਦੇ ਚ ਆਇਆ ਕਿਉਂਕਿ ਦੇਖਣ ਵਾਲੇ ਵੀ ਖੜੇ ਆ ਤੇ ਦਿਖਾਉਣ ਵਾਲੇ ਵੀ ਖੜੇ ਇਹ ਫੰਕਸ਼ਨ ਜੇ ਨਹੀਂ ਪਤਾ ਕਿਸੇ ਚੀਜ਼ ਦਾ ਤੇ ਪੁੱਤ ਸਾਡੇ ਬਹੁਤ ਸਿਆਣੇ ਆ ਸਾਡਾ ਅੰਗਰੇਜ਼ੀ ਤੇ ਹੱਥ ਚੰਗ ਮਾੜਾ ਹੈ ਉਹਨਾਂ ਨੂੰ ਪੁੱਛ ਲਓ ਪੁੱਤ ਆ ਕਿਹੜੇ ਕਿਹੜੇ ਫੰਕਸ਼ਨ ਕਿਵੇਂ ਆ ਇਹ ਗੱਡੀ ਚ ਕਿੱਥੋਂ ਪੁਸ਼ ਬਟਨ ਆ ਸਟਾਰਟ ਹੋਣੀ ਆ ਕਿਸ ਤਰ੍ਹਾਂ ਹੋਣੀ ਬਹੁਤ ਗੱਡੀਆਂ ਹੁਣ ਹੈ ਜਿਹੜਾ ਰਿਮੋਟ ਚਿਪ ਹੈ ਜੇ ਤੁਸੀਂ ਉਹਨੂੰ ਕਾਰ ਨੂੰ ਹੱਥ ਲਾਉਣਾ ਖੁੱਲ ਜਾਂਦੀ ਹੈ ਵਿੱਚ ਬ੍ਰੇਕ ਤੇ ਪੈਰ ਰੱਖ ਕੇ ਬਟਨ ਜਾਂ ਦੱਪਣਾ ਉਹ ਸਟਾਰਟ ਹੋ ਜਾਂਦੀ ਹੈ ਜੇ ਬਿਨਾਂ ਬ੍ਰੇਕ ਦੱਬੇ ਨੱਪੋਂ ਤਾਂ ਰੇਡੀਓ ਆਨ ਹੋ ਜਾਂਦਾ ਤੁਸੀਂ ਬੈਠ ਕੇ ਸੁਣਨਾ ਪਰ ਯਾਦ ਰੱਖਿਓ ਘਰੋਂ ਕਈ ਵਾਰ ਸਟਾਰਟ ਹੋ ਜਾਂਦੀ ਐ ਘਰੇ ਗਰਾਜ ਦੇ ਨਾਲ ਦੂਜੇ ਬੰਨੇ ਕਿਚਨ ਜਾਂ ਫੈਮਿਲੀ ਰੂਮ ਦੇ ਵਿੱਚ ਚਾਬੀਆਂ ਸਟਾਰਟ ਹੋ ਜਾਂਦੀ ਕਈ ਵਾਰ ਲੈ ਜਾਓ ਵੀ ਚਾਬੀ ਘਰੇ ਬੰਦ ਹੋ ਗਈ ਉੱਥੋਂ ਦੁਬਾਰਾ ਉਹਨੇ ਸਟਾਰਟ ਨਹੀਂ ਹੋਣਾ ਗੱਬੇ ਕੰਸੋਲ ਦੇ ਵਿੱਚ ਲਿਖ ਕੇ ਵੀ ਆਉਂਦਾ ਚਾਬੀ ਭੁੱਲਿਆ ਐ ਸਰਦਾਰ ਜੀ ਘਰੇ ਦੱਸਦੀ ਐ ਅੰਦਰ ਉਹ ਕਈ ਵਾਰ ਪਤਾ ਹੀ ਨਹੀਂ ਸਟਾਰਟ ਹੋ ਗਈ ਜੇ ਚ ਹੱਥ ਮਾਰੇ ਅਗਲਾ ਚੱਲ ਚੱਲ ਭੁੱਲ ਗਏ ਉਹ ਇਹ ਜਿਹੜੀਆਂ ਖਾਸ ਤੌਰ ਤੇ ਲਾਈਟਾਂ ਪਲੀਜ਼ ਆਨ ਕਰ ਲਿਆ ਕਰੋ ਪਲੀਜ਼ ਹਰ ਰੋਜ਼ ਤਿੰਨ ਚਾਰ ਟੱਕਰ ਪਿਆ ਔਰ ਤਿੰਨੇ ਚਾਰੇ ਹੀ ਆਪਣੇ ਹੁੰਦੇ ਆ ਪਤਾ ਨਹੀਂ ਕੀ ਹੋਇਆ ਹੋਇਆ ਇੱਕ ਤਾਂ ਸਟਰੀਟ ਲਾਈਟਸ ਕਰਕੇ ਹਨੇਰਾ ਹੈ ਨਹੀਂ ਨੰਬਰ 2 ਲਾਈਟਾਂ ਦੇ ਲਾਈਟਸ ਨੇ ਜਿਹੜੀਆਂ ਰਾਤ ਨੂੰ ਵੀ ਆਨ ਰਹਿੰਦੀਆਂ ਨੇ ਜਿਹੜਾ ਸਿਸਟਮ ਹੈ ਪਰ ਤੁਹਾਡੀਆਂ ਜਿਹੜੀਆਂ ਟੇਲ ਲਾਈਟਸ ਨੇ ਬੈਕ ਗੱਡੀ ਦੇ ਪਿਛਣੀਆਂ ਬੱਤੀਆਂ ਉਹ ਜਗਣੀਆਂ ਚਾਹੀਦੀਆਂ ਤੁਹਾਡਾ ਪਤਾ ਲੱਗੇ ਕਿੱਥੇ ਗੱਡੀ ਲਈ ਜਾਂਦੀ ਹਾਈ ਬੀਮ ਦੀ ਟਿਕਟ ਹੈ ਜਿਹੜੀਆਂ ਦੂਰ ਦੀਆਂ ਲਾਈਟਾਂ ਦਾ ਆਉਂਗੇ ਤਾਂ ਉਹਦੀ ਟਿਕਟ ਹੈ ਦਿਨਾ ਲਾਈਟਾਂ ਤੋਂ ਫਿਰੋਗੇ ਪੁਲਸ ਨੇ ਘੇਰ ਲਿਆ ਉਹਦੀ ਵੀ ਟਿਕਟ ਹੈ ਔਰ ਬਹੁਤ ਡੇਂਜਰਸ ਕੋਈ ਪਿੱਛੇ ਆ ਕੇ ਠੋਕ ਦੂ ਕਿਸੇ ਮੇਰਾ ਮੀ ਪੈਂਦਾ ਹੁੰਦਾ ਦਿਖਦਾ ਹੀ ਨਹੀਂ ਹੁੰਦਾ ਕਦੇ ਇਹ ਹੋਰ ਫੰਕਸ਼ਨ ਆ ਦਾੜੀ ਮੈਂ ਮਿੰਤ ਕਰਦਾ ਮੈਂ ਪਤਾ ਨਹੀਂ ਹੁਣ ਕਿੰਨੀ ਵਾਰ ਪ੍ਰੋਗਰਾਮ ਕਰਨਾ ਹੁਣ ਮੇਰੀ ਤਾਂ ਬਸ ਹੈ ਤੁਸੀਂ ਜਿੱਤੇ ਸੇ ਕਿਸੇ ਕਿਤੇ ਵੀ ਚੱਲੇ ਹੋ 20 ਮਿੰਟ ਦਾ ਕੰਮ ਆ ਕਿਉਂ ਨਹੀਂ ਉਸ ਘਰੋਂ ਸੈੱਟ ਕਰਕੇ ਜਾਂਦੇ ਉਹ ਜਿਹੜਾ ਪੁਰਾਣਾ ਕੰਮ ਹੈ ਵੀ ਬੰਨ ਕੇ ਦਾੜੀ ਪੱਗ ਬੰਨਣੀਆਂ ਦੇ ਉੱਪਰ ਨਾਲ ਢੱਲਾ ਕਰਕੇ ਫਿਰ ਲੜ ਨਾਲ ਫਿਰ ਕੇ ਦੁਆਰਾ ਗੱਠ ਫੇਰ ਦੇ ਦਿੰਦੇ ਉੱਪਰ ਉਹ ਇਸ ਇਹ ਥੋੜੀਆਂ ਛੋਟੀਆਂ ਗੱਲਾਂ ਇਹ ਪਰ ਤੁਸੀਂ ਲੋਕਾਂ 'ਚ ਵਿਚਰਦੇ ਹੋ ਫਿਰ ਗੱਡੀ ਜਿੱਤੇ ਕਿਤੇ ਲੱਗ ਗਈ ਕੱਲ 76 ਤੇ ਛੱਤਰ ਦੇ ਕਿੰਗਜ਼ ਵਰ ਦੇ ਜਿਹੜਾ ਪਲਾਜ਼ਾ ਆਪਣਾ ਚਾਹ ਵਾਲੀ ਦੁਕਾਨ ਵਾਲਾ ਉੱਥੇ ਠੋਕਤੀ ਖੜੇ ਦੇ ਪਿੱਛੇ ਗੱਡੀ ਕੱਢੀ ਦੁੱਧ ਦੀਆਂ ਗੱਲਾਂ ਰੱਖੀਆਂ ਕੋਰੋਲਾ ਲਿਆ ਕੇ ਐਫ 50 ਦੇ ਥੱਲੇ ਬਾੜਤੀ ਤੇ ਫੇਰ ਪਾਈ ਹੋਈ ਥੱਲੇ ਥੋੜੀ ਜਿਹੀ ਕਢੀ ਸੀ ਫੇਰ ਬਾਹਰੋਂ ਕਢ ਲਈ ਬਾਹਰ ਨਿਕਲ ਕੇ ਆਪਣੇ ਫੈਂਡਰ ਬਾਹਰ ਤੇ ਹੱਥ ਜਾਂਦੇ ਫੇਰ ਉਹ ਕਹਿੰਦਾ ਇਹ ਕਿਤੇ ਲੱਗੀ ਆ ਤੇ ਬਹਿਣ ਲੱਗੇ ਅੰਦਰੋਂ ਮੁੰਡੇ ਨਿਕਲਿਆ ਕਹਿੰਦਾ ਵੀ ਹੁਣ ਜੱਲੇ ਕਿੱਥੇ ਉਹ ਮੜਾ ਜਾ ਦੇਖ ਲਈ ਆਪਾਂ ਨਾ ਨਾ ਕਹਿੰਦਾ ਹੋਇਆ ਹੀ ਕੱਖ ਨਹੀਂ ਵੀ ਕਹਿਣ ਵਾਲੀ ਨਹੀਂ ਹੋਇਆ ਮੈਂ ਮੇਰੀ ਗੱਡੀ ਚ ਲੱਗੀ ਆ ਇਸ ਤਰ੍ਹਾਂ ਨਹੀਂ ਤੁਸੀਂ ਜਾ ਸਕਦੇ ਵੀ ਉਹਦੇ ਵੀ ਹੱਥ ਪੇਰਿਆਂ ਝੋਟੀ ਵਾਂਗੂ ਤੇ ਆਪਣੇ ਫੇਰੇ ਤੇ ਤੁਰ ਗਏ ਸੱਟਣ ਰਾਂਦੇ ਵਿੱਚ ਅਗਲਾ ਠੋਕ ਦੂ ਫੜ ਕੇ ਉੱਥੇ ਖੜਨਾ ਪੈਣਾ ਖੜ ਕੇ ਫਿਰ ਅਗਲੀ ਗੱਡੀ ਆਉਣ ਤੱਕ ਅੰਦਰੋਂ ਆਵੇ ਤੇ ਫਿਰ ਉਹਨੂੰ ਦੱਸਣਾ ਪੈਣਾ ਕਿ ਮੇਤੋਂ ਗੱਡੀ ਲੱਗੀ ਆ ਜਾਂ ਉੱਥੇ ਕਾਹਲੀ ਆ ਤਾਂ ਕੋਈ ਨੋਟ ਛੱਡ ਕੇ ਜਾਣਾ ਪੈਣਾ ਵੀ ਮੇਤੋਂ ਟੱਚ ਹੋਈ ਆ ਪਰ ਲੱਗੀ ਨਹੀਂ ਇਉਂ ਨਹੀਂ ਹੈ ਵੀ ਸਵਾਰੀ ਘੋੜੀ ਦੇ ਪੁੜਿਆਂ ਤੇ ਹੱਥ ਪੇਰਾਂ ਤੇ ਚੜ ਗਏ ਉਹਦੇ ਉੱਪਰ ਉਹਦੇ ਵੀ ਸੈਂਟਰ ਬੈਂਡਰ ਤੇ ਹੱਥ ਮਾਰਿਆ ਆਪਣੀ ਵਾਲੀ ਗੱਡੀ ਤੇ ਹੱਤ ਕੇ ਜਾ ਜਿਵੇਂ ਨਾ ਖਚਰੀ ਜੀ ਹਾਸਿਆ ਕਿੱਥੇ ਕਹਾ ਲੱਗੀ ਹੋਣੀ ਹੈ ਭੋਰਾ ਭੋਰਾ ਵੀ ਨਹੀਂ ਚਰੀਟ ਹੈ ਇਹ ਦਿੱਸਦਾ ਅ ਸ਼ਾਬਾਸ਼ੀ ਬڑا ਨਜ਼ਾਰਾ ਆਇਆ ਦਾ ਫਿਰ ਬੈਠ ਕੇ ਸ਼ੀਸ਼ੇ ਚਾੜ ਕੇ ਵੇਖੀ ਦੀ ਐ ਵੀ ਹੁਣ ਦੇਖੀ ਕਹਾਣੀ ਕੀ ਬੜਨੀ ਐ ਜਿਹੜੀ ਤੁਹਾਡੀ ਗੱਡੀ ਦੀ ਉਹ ਜਾ ਲਾਓ ਤਾਂ ਜੇ ਲਾਉਣੀ ਆਉਂਦੀ ਐ ਐਵੇਂ ਨਾ ਫਸਾ ਲੋ ਅੱਧੀ ਨੂੰ ਕਰੇ ਪਿੱਛੇ ਨੂੰ ਪਿੱਛੋਂ ਸੜਕ ਤੋਂ ਲੇਨ ਰੋਕੀ ਖੜੇ ਹੁੰਨੇ ਹੋ ਤੁਸੀਂ ਉਹ ਲੇਨ ਜਿਹੜੀ ਰੋਕੀ ਖੜੇ ਹੋ ਉੱਥੇ ਗੱਡੀ ਛੇਤੀ ਲਾਓ ਔਰ ਗੱਡੀ ਦਾ ਸਾਈਜ਼ ਕਿਉਂਕਿ ਆਪਾਂ ਜਾਂ ਸਿੱਖ ਲੈਣਾ ਭੁੱਲ ਜਾਨੇ ਗੱਡੀ ਦਾ ਸਾਈਜ਼ ਦੋਨਾਂ ਗੱਡੀਆਂ ਦੇ ਸੰਨ ਚ ਜਿੱਥੇ ਲਾਉਣੀ ਆ ਉਹ ਫੇਰ ਦੇਖ ਲੋ ਗੱਡੀ ਤੁਹਾਡੀ ਉਹ ਸੰਨ ਫੁੱਟ ਜਗ੍ਹਾ ਆਲਦ ਵਾਲੇ ਹੈ ਤਾਂ ਗੱਡੀ ਲੱਗ ਸਕਦੀ ਹੈ ਆ ਫੇਰ ਨਹੀਂ ਲੱਗਦੀ ਉੱਥੇ ਗੱਡੀ ਕਿਉਂਕਿ ਘੁਮਾ ਕੇ ਤੁਸੀਂ ਅੰਦਰ ਲੈ ਕੇ ਜਾਣੀ ਸਮਾਲ ਕਾਰ ਲਿਖਿਆ ਉੱਥੇ ਵੱਡੀ ਕਾਰ ਨਹੀਂ ਲੱਗਦੀ ਪਾਰਕਿੰਗ ਚ ਆ ਵੀ ਖਿਆਲ ਰੱਖੋ ਕਿਉਂਕਿ ਜਦ ਸਮਾਲ ਕਾਰ ਦੇ ਵਿੱਚੋਂ ਫੇਰ ਨਿਕਲਣਾ ਫੇਰ ਨਾਲ ਦਾ ਤਾਂ ਆਪਾਂ ਖੁਰਚਣਾ ਹੀ ਖੁਰਚਣਾ ਨਾ ਗੱਡੀ 'ਚ ਬਹਿ ਜਾਓ ਕਿਤੇ ਲਾ ਕੇ ਬਰਾਬਰੋਂ ਗੱਡੀ ਦੇ ਵਿੱਚ ਫਿਰ ਕਾ ਖਿੜਕੀਆਂ ਦੇਖੀ ਵੱਜਦੀਆਂ ਠਾ ਠਾ ਜੇ ਕਿਸੇ ਰੋਕੇ ਗਿਆ ਗੱਡੀ 'ਚ ਲੱਗੀ ਉਹ ਭਾਜੀ ਐਨੀ ਕੀ ਹੁੰਦਾ ਬੇਸਿਕ ਐਥਿਕਸ ਨੇ ਤੁਹਾਡੇ ਵੱਲੋਂ ਕਿਸੇ ਨੂੰ ਮੁਸ਼ਕਲ ਨਹੀਂ ਆਉਣੀ ਚਾਹੀਦੀ ਗਰੋਸਰੀ ਲੈਣ ਜਾਣੇ ਹੋ ਤੁਹਾਨੂੰ ਪਤਾ ਗੱਡੀ ਖੜਾਉਣੀ ਐ ਜੇ 100 ਮੀਟਰ ਤੁਰਪੋਂਗੇ ਨੂੰ ਢਲਕ ਜੂ ਕੁਛ ਦੂਰ ਕਿਉਂ ਇਹਨੂੰ ਖੜਾਉਂਦੇ ਗੇੜੇ ਕੱਢੀ ਜਾਣੇ ਬਾਈ ਐਮਸੀਐਸ ਜਾਣਾ ਐਕਸਰਸਾਈਜ਼ ਕਰਨ ਗੇੜੇ ਤੇ ਗੇੜਾ ਗੇੜੇ ਤੇ ਗੇੜਾ ਨੇੜੇ ਲਾਉਣੀ ਹੈ ਸਮਾਲ ਕਾਰ ਸਮਾਲ ਕਾਰ ਲਈਆ ਛੋਟੀਆਂ ਕਾਰਾਂ ਨਹੀਂ ਉੱਥੇ ਤੁਹਾਡੇ ਵੱਡੇ ਪਿਕਅਪ ਪਿੱਕੇ ਤੁਹਾਡੇ ਪੰਜਾਬੀਆਂ ਦੇ ਵੱੜਦੇ ਨਹੀਂ ਜਦ ਫਿਰ ਤੁਸੀਂ ਦਰਵਾਜ਼ਾ ਖੋਲਣਾ ਨਾਲ ਠੋਕ ਦੇਣਾ ਕੋਈ ਨਾ ਕੋਈ ਛਿਲ ਦਿਨੇ ਫੜਕੇ ਇਹ ਤੁਹਾਡੇ ਰਾਹੀਂ ਕਿਸੇ ਦੇ ਵਿੱਚ ਨਾ ਗੱਡੀ ਲੱਗੇ ਇਹ ਪਲੀਜ਼ ਖਿਆਲ ਰੱਖੋ ਬਾਰਡਰ ਤੋਂ ਗੈਸ ਲਾਈਨ ਜਾਂਦੇ ਹੋ ਜੇ ਜਮੈਂ ਲਾਲ ਤੇ ਆ ਕੇ ਭੱਜਿਓ ਜੇ ਬਾਰਡਰ ਤੇ ਗੱਡੀ ਖਰਜਵੇ ਉੱਥੇ ਬਹੁਤ ਜਲੂਸ ਨਿਕਲਦਾ 300 ਚ ਪੈਂਦਾ ਉਥੋਂ ਜਲਸਾ ਜਦ ਚੱਕ ਕੇ ਲਿਉਂਦਾ ਅਗਲਾ ਗੱਡੀ ਜੇ 5-4 ਲੀਟਰ ਪਵਾ ਲੂੰਗਾ ਇਧਰੋਂ ਕੁਛ ਨਹੀਂ ਹੁੰਦਾ ਜਮੈਂ ਬਹਿ ਜਾ ਕਰੋ ਪਾਣੀ ਚ ਥੋੜਾ ਬਹੁਤਾ ਜ਼ਿੰਦਗੀ ਦਾ ਰੰਗ ਜਿਹੜਾ ਕਿਤੇ ਕੰਜੂਸੀ ਦੀ ਕੋਈ ਹੱਦ ਹੁੰਦੀ ਹੈ ਤੋ ਇਹ ਗੱਡੀਆਂ ਜਿਹੜੀਆਂ ਕਾਰਾਂ ਚਲਾਈ ਫਿਰਦੇ ਹੋ ਪਲੀਜ਼ ਇਹਨਾਂ ਨੂੰ ਰਾਤ ਨੂੰ ਦਿਨ ਤਲੇ ਇਹਦੀਆਂ ਸੁੱਚਾਂ ਸੱਚਾਂ ਵੇਖ ਲਓ ਇਹਦੇ ਵਾਈਪਰ ਚੱਲਦੇ ਵੇਖ ਲਓ ਇਹਦੇ ਵਿੱਚ ਵਾਸ਼ਰ ਫਲੂਇਡ ਹੈ ਉਹ ਵੇਖ ਲਓ ਦੱਬੀ ਫਿਰੋ ਤੁਸੀਂ ਆਪ ਤਾਂ ਮੁਸ਼ਕਲ 'ਚ ਪੈਣਾ ਕਿਸੇ ਨੂੰ ਹੋਰ ਮੁਸ਼ਕਲ 'ਚ ਮਾਰੋਗੇ ਇਹ ਸਿੰਪਲ ਗੱਲ ਹੈ ਜਦ ਹਨੇਰਾ ਹੋ ਗਿਆ ਲਾਈਟ ਸੌਨ ਹੋਣੀਆਂ ਨੇ 스ਵਿਚ ਲੱਗੀ ਹੋਇਆ 스ਵਿਚ ਨੂੰ ਆਨ ਕਰੋ ਜਾ ਜਿਹੜੀਆਂ ਗੱਡੀਆਂ ਚ ਆਟੋ ਆ ਪੱਕਾ ਹੀ ਆਟੋ ਚ ਰਹਿਣ ਦੋ ਨੇ ਦਿਨੇ ਆਉਣ ਨਹੀਂ ਹੁੰਣਾ ਜਦ ਰਾਤ ਨੂੰ ਹਨੇਰਾ ਹੋਣਾ ਉਹਨੇ ਆਪੇ ਆਨ ਹੋ ਜਾ। ਬਹੁਤ ਦੁੱਖ ਲੱਗਦਾ ਸੜਕਾਂ ਤੇ ਵੇਖ ਕੇ ਲਾਈਟਾਂ ਨਹੀਂ ਆਨ ਹੁੰਦੀਆਂ। ਸਮਝ ਨਹੀਂ ਆਉਂਦੀ। ਤੁਰਿਆ ਜਾਂਦਾ। ਫਿਰ ਕਈ ਵਾਰ ਰੋਕ ਲੈਨੇ ਹੋ, ਕਈ ਵਾਰ ਭਜਾ ਲੈਨੇ ਹੋ। ਜਿਹੜੀਆਂ ਸੈੱਟ ਕਰਦੇ ਲੋ ਘਰੇ ਕਰ ਲਿਆ ਕਰੋ। ਬਹੁਤ ਵਾਰ ਕਹਤਾ ਹੁਣ ਬੱਸ ਢੜਿਆਂ ਚ ਬੈਠੇ ਹਾਂ, ਕਾਰਾਂ ਚਲਾਈ ਫਿਰਦੇ ਹਾਂ। ਸਮਝਦੇ ਨੀਓ ਦੀ ਗਲਤ ਕਿੱਥੇ ਆ ਵਪਾਰਕ ਸੰਦੇਸ਼ ਜੇ ਕੋ ਹੋਰ ਬੇਨਤੀ ਸੜਕ ਦੇ ਵਿੱਚ ਲੇਨਾਂ ਤੁਹਾਡੀਆਂ ਜਿਹੜੀਆਂ ਜਿਹੜੀ ਅੱਧ ਦੇ ਵਿੱਚ ਮੇਦੀਆਂ ਜਿਹੜਾ ਰਸਤੇ ਦੇ ਵਿੱਚ ਸੜਕ ਜਿਹੜੀ ਅੱਧ ਦੇ ਵਿੱਚੋਂ ਥੰਮੀ ਆ ਗਵਲੀ ਉਹਦੇ ਨਾਲ ਦੀ ਲੇਨ ਆ ਉਹ ਤੇਜ਼ ਗੱਡੀਆਂ ਦੇ ਲੇਨ ਆ ਜੇ ਹੌਲੀ ਚਲਾਉਣੀ ਆ ਪਲੀਜ਼ ਉੱਥੇ ਉਹ ਉਹ ਉਹ ਲੇਨ ਤੁਹਾਡੀ ਕਾਰ ਦੀ ਲੇਨ ਹੈ ਨੀ. ਯਾ ਰੱਖੋ ਮੋਸਟਲੀ ਜੇ ਆਪ pôਰ ਚੜਦੇ ਹੋ ਨਾ ਫਰੇਜ਼ਰ ਤੇ ਜਾਂ ਪੋਰਟਮੈਨ ਜਾਂ ਉਹ ਉਹ ਲੇਨ ਦੇ ਵਿੱਚ ਪਾ ਲੈਨੇ ਉਹ ਬਾਹਰਲੇ ਲਾਇਆ ਹੁੰਦਾ ਫਿਰ। ਹੁੰਦਾ ਇਹ ਕੰਮ ਦੂਜੇ ਗਵਾਂਢੀ ਦੇਸ਼ ਦੇ ਭਾਈਚਾਰੇ ਦਾ ਪਰ ਆਪਣੇ ਬੰਦੇ ਵੀ ਕਰਦੇ ਆ ਜਿਹੜੇ ਇੱਥੇ ਆ ਕੇ ਕਾਰਾਂ ਸਿੱਖਿਆ ਖਾਸ ਤੌਰ ਤੇ ਦੇਖੋ ਡਰਾਈਵਿੰਗ ਇੱਕ ਆਰਟ ਹੈ। ਡਰਾਈਵਿੰਗ ਜਿਹੜਾ ਲਓ ਜੀ ਉੱਥੇ ਆਸਟ੍ਰੇਲੀਆ 'ਚ ਵੀ ਇਹੀ ਆ ਪਿੰਦਰ ਬਰਾੜ ਹੁਣੀ ਕਹਿੰਦੇ ਮੈਲਬੌਰਨ ਤੋਂ ਕਹਿੰਦੇ ਸਾਡੇ ਵੀ ਆਹੀ ਕੰਮ ਆ ਭਾਈਚਾਰਾ ਬਿਨਾ ਬੱਤੀਆਂ ਤੇ ਰਾਤ ਨੂੰ ਫਿਰਦਾ ਲਾ ਦੋ ਸਿਰੇ ਬਸ ਸੋ ਇਹ ਡਰਾਈਵਿੰਗ ਮੈਥ ਜਿਹੜਾ ਕਹਿ ਰਿਆ ਸੀ ਇੱਕ ਆਰਟ ਹੈ ਇੱਕ ਨਖਰੇ ਨਾਲ ਵਧੀਆ ਗੱਡੀ ਚਲਾਉਣੀ ਫਾਹਾ ਵੱਜਣਾ ਦੋ ਚੀਜ਼ਾਂ ਅਲੱਗ ਨੇ ਪਰ ਚਲੋ ਤੁਸੀਂ ਨਖਰੇ ਨਾਲ ਨਾ ਚਲਾਓ ਪਰ ਸਾਡਾ ਨਖਰੇ ਤੋਂ ਬਿਨਾ ਕਿਸੇ ਨੂੰ ਮੁਸ਼ਕਲ ਨਾ ਆਵੇ ਬਸ ਪਾਰਕਿੰਗ ਤੇ ਦਿੱਕਤੀ ਕਿੱਥੇ ਗੱਡੀ ਖੜਾਉਣੀ ਆ ਕਿਵੇਂ ਲਾਉਣੀ ਆ ਇਹ ਥੋੜਾ ਜਿਹਾ ਪਲੀਜ਼ ਕਿਸੇ ਦਾ ਖਿਆਲ ਰੱਖੋ ਕਿਸੇ ਦੇ ਵਿੱਚ ਜੇ ਗੱਡੀ ਨੇੜੇ ਲੱਗੀ ਹੌਲੀ ਦਰਵਾਜ਼ਾ ਖੋਲ ਕੇ ਵਿੱਚੋਂ ਨਿਕਲਿਆ ਨਾ ਖੋਲੋ ਉਹਨੂੰ ਜ਼ੋਰ ਦੇ ਨਾਲ ਨਾਲ ਦੀਆਂ ਗੱਡੀਆਂ ਤੇ ਟੱਕ ਨਾ ਪਾਓ ਕਿਤੇ ਲੱਗ ਗਈ ਉਹ ਗੱਡੀ ਦੇ ਮਾਲਕ ਦੇ ਅਡਿੱਕ ਕਰੋ ਉਹਨੂੰ ਦੱਸੋ ਕਿ ਮੇਰੇ ਤੋਂ ਟੱਚ ਹੋ ਪਰ ਡੈਮੇਜ ਹੈ ਨਹੀਂ ਕੋਈ ਬਾਕੀ ਤੇਰੀ ਮਰਜ਼ੀ ਆ ਬਿਨਾਂ ਦੱਸੇ ਨਹੀਂ ਜਾ ਸਕਦੇ ਹੱਸ ਕੇ ਨਹੀਂ ਜਾ ਸਕਦੇ ਕੱਖ ਨਹੀਂ ਹੋਇਆ ਹੱਥ ਫੇਰ ਕੇ ਨਹੀਂ ਜਾ ਸਕਦੇ ਲਾਈਟਸ ਔਨ ਰੱਖੋ ਜਿਹੜੇ ਜਵਾਕ ਨੇ ਘਰੇ ਨੌਜਵਾਨ ਨੇ ਮਾਪਿਆਂ ਨੂੰ ਦੱਸੋ ਕਿ ਆ ਬਪੂ ਲਾਈਟਾਂ ਹੋ ਗਿਆ ਔਨ ਕਰਨੀ ਐ ਸ਼ੀਸ਼ੇ ਸੱਟ ਕਰਨ ਦੱਸੋ ਸੈਂਟਰ ਵਾਲਾ ਸ਼ੀਸ਼ਾ ਤੇ ਆਲੇ ਦਾਲ ਦਾ ਸਿੱਖਣ ਵੇਲੇ ਤਾਂ ਅਸੀਂ ਸਾਰਾ ਕੁਝ ਸਾਨੂੰ ਸਿਖਾਦਨੇ ਡਰਾਈਵਿੰਗ ਵਾਲੇ ਜਿੱਦਣ ਲਾਇਸੈਂਸ ਲੈ ਲੈਂਦੇ ਆ ਫਿਰ ਅਸੀਂ ਸਾਰਾ ਦਾ ਕੁਝ ਭੁੱਲ ਜਾਂਦੇ ਬਹੁਤ ਵਧੀਆ ਸਿਖਾਉਂਦੇ ਆ ਉਹ ਬਡੇ ਬਹੁਤ ਉਹ ਬਚਾਉਣ ਦੀ ਆ ਹੁਣ ਤਾਂ ਚਲੋ ਦਿਨ ਨਿਕਲ ਲਾਗੇ ਖੁੱਲ ਗੇ ਦਿਨ ਅ ਸਰਵਰੀ ਆ ਗਈ ਮਾਰਚ ਦੇ ਵਿੱਚ ਬਰਾਬਰ ਹੋ ਜਾਣਾ ਜੂਨ ਚ ਵੱਡਾ ਹੋ ਜਾਣਾ ਜਿਹੜਿਆ ਨਵੰਬਰ ਦਸੰਬਰ ਨਿਕਲ ਕੇ ਗਾਇਆ ਬਹੁਤ ਔਖਾ ਜੇ ਤੁਸੀਂ ਰਾਤ ਨੂੰ ਬਿਨਾ ਮੇਨ ਲਾਈਟਾਂ ਤੇ ਤੁਰੇ ਫਿਰਦੇ ਹੋ ਉਹ ਸੇਫ ਨਹੀਂ ਹੈ ਤੇ ਗੱਡੀ ਦੇ ਫੰਕਸ਼ਨ ਤੁਹਾਨੂੰ ਸਾਰੇ ਪਤਾ ਹੋਣੇ ਚਾਹੀਦੇ ਕਿੱਥੋਂ ਤੁਹਾਡਾ ਗੈਸ ਵਾਲਾ ਮੰਗ ਕੇ ਵੀ ਲੈ ਹੋ ਅਗਲੇ ਨੂੰ ਪੁੱਛ ਲਓ ਗੈਸ ਵਾਲਾ ਟੱਕੜ ਬਾਈਸ ਕਿੱਥੇ ਹੈ ਦੀ ਟੁੱਕੀ ਕਿੱਥੋਂ ਖੁੱਲਦਾ ਤੇ ਕਈ ਵਾਰ ਗੈਸ ਸਟੇਸ਼ਨ ਤੇ ਲੱਭਦੇ ਫਿਰਦੇ ਨੇ ਉਹ ਖੁੱਲਦਾ ਲੱਭਦਾ ਨਹੀਂ। ਉਹ ਕਿੱਥੋਂ ਖੁੱਲਦਾ ਹੈ ਉਹ ਗੱਡੀ ਦਾ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਈ ਵਾਰ ਲੱਭਦਾ ਨਹੀਂ। ਤੇ ਫਿਰ ਜਿਹੜਾ ਕਿਸੇ ਨੂੰ ਜੰਪ ਸਟਾਰਟ ਕਿਸੇ ਦੀ ਗੱਡੀ ਨੂੰ ਦੇਣਾ ਉਹ ਦੇਖੋ ਆਪਣੀ ਕਾਰ ਤੁਹਾਡੀ ਉਹਦੇ ਲਈ ਕਾਬਲ ਹੈ ਜਾਂ ਨਹੀਂ। ਉਹ ਪੁਰਾਣਾ ਸਮਾਂ ਨਿਕਲ ਗਿਆ ਬੈਟਰੀ ਦੀਆਂ ਬਾਹਰਲੇ ਬੰਨੇ ਤਾਰਾਂ ਸੀ ਉਹਨੂੰ ਲਾਉਂਦੇ ਹੁਣ ਸਾਰਾ ਕੁਝ ਕਵਰ ਹੈ। ਉਹਦੇ ਲਈ ਜਗ੍ਹਾ ਰੱਖੀ ਹੋਈ ਆ ਉਹਨਾਂ ਦੇ ਨਾਲ ਤੇ ਨੀਲੇ ਲਈ ਜਿਹੜੀ ਅਲੱਗ-ਅਲੱਗ ਅਰਥ ਕਰਨ ਦੇ ਉਹ ਉਹ ਦੇਖ ਲੋ ਜੇ ਕਿਸੇ ਦੀ ਮਦਦ ਕਰਨੀ ਹੈ ਨਹੀਂ ਤਾਂ ਰਹਿਣ ਦਿਓ ਕਿਤੇ ਪੁੱਠੀਆਂ ਤਾਰਾਂ ਲਾ ਕੇ ਰਹਿਂਦੀ ਖੁੰਦੀ ਅਗਲੇ ਦੀ ਬੈਟਰੀ ਹੋਰ ਸਾੜ ਦੇਉ ਆਪਣਾ ਵੀ ਕੰਮ ਸੈਂਸਰ ਨੇ ਗੱਡੀਆਂ 'ਚ ਬਹੁਤ ਬਹੁਤ ਟਿਪੀਕਲ ਹੁਣ ਸਿਚੁਏਸ਼ਨ ਆ ਇਹਨਾਂ ਦੀ ਪਲੀਜ਼ ਐਂਡ ਵਧੀਆ ਤਰੀਕੇ ਦੇ ਨਾਲ ਗੱਡੀ ਚਲਾਓ ਫੰਕਸ਼ਨ ਤੁਹਾਨੂੰ ਪਤਾ ਹੋਣੇ ਚਾਹੀਦੇ ਆ ਇਹ ਲਾਈਟਾਂ ਹਰ ਰੋਜ਼ ਬਿਨਾਂ ਲਾਈਟਾਂ ਤੋਂ ਆਪਾਂ ਦੱਬੀ ਫਿਰਦੇ ਆ ਸਰਾਂ ਤੇ ਕਿ ਪਤਾ ਨਹੀਂ ਲੱਗਦਾ ਸਟਰੀਟ ਲਾਈਟਾਂ ਕਰਕੇ ਤੇ ਡੇ ਲਾਈਟਾਂ ਕਰਕੇ ਗੱਡੀਆਂ ਆਂਦੀਆਂ ਮੇਨ ਲਾਈਟ ਤਾਂ ਤੁਸੀਂ ਜਗਾਉਂਦੇ ਨਹੀਂ ਉਹਦੇ ਨਾਲ ਟੇਲ ਗੇਟਸ ਜਿਹੜੇ ਟੇਲ ਲਾਈਟਸ ਨੇ ਉਹ ਉਹ ਪਿਛਲੇ ਪਾਸੇ ਦਿਖਦੀ ਹੀ ਗੱਡੀ ਰਾਤ ਨੂੰ ਔਰ ਭੈੜੀ ਲੱਗਦੀ ਆ ਬਹੁਤ 10 ਲਾਈਟਾਂ ਵਾਲੀਆਂ ਗੱਡੀਆਂ 'ਚ ਇੱਕ ਬਿਨਾ ਲਾਈਟਾਂ ਤੋਂ ਜਾਂਦੀ ਹੈ ਅਗਲਾ ਕਹਾਣਾ ਯਾਰ ਆ ਉਹ ਫਿਰ ਸਾਨੂੰ ਲੋਕ ਤਾਂ ਮਾਰਦੇ ਉਹਨਾਂ ਦੇ ਮਨ ਦੇ ਵਿੱਚ ਇੱਕ ਚੀਜ਼ ਫਿੱਟ ਹੋ ਜਾਂਦੀ ਆ ਵੀ ਯਾਰ ਇਹ ਤਾਂ ਬਸ ਇਹ ਹੀ ਨੇ ਮਜ਼ਾਕ ਦਾ ਲੋਕਾਂ ਦੇ ਪਾਤਰ ਨਾ ਬਣੋ ਇਹਦੇ ਲਈ ਬੱਚਿਆਂ ਨੂੰ ਬੇਨਤੀ ਆ ਆਪਣੇ ਮਾਪਿਆਂ ਨੂੰ ਸਮਝਾਓ ਸਵਾਰ ਕੇ ਤੇ ਫਿਰ ਇੱਕ ਜਿਹੜੇ ਮਹਿੰਗੀਆਂ ਕਾਰਾਂ ਵਾਲਿਆ ਉਹਨਾਂ ਨੂੰ ਬੇਨਤੀ ਆ ਆਪਣੇ ਜਵਾਕਾਂ ਨੂੰ ਜਦੋਂ ਜਿਮ ਜੁਮ ਜਾਂਦੇ ਆ ਨਾਰਮਲ ਗੱਡੀਆਂ ਲੈ ਦੋ ਉਹਨਾਂ ਨੂੰ ਥੋੜਾ ਜਿਹਾ ਥਾਂੇ ਰਹਿ ਜਾ ਜਬ 12ਵੀਂ ਚ ਪੜਿਆ ਹੋਇਆ 2 ਲੱਖ ਦੀ ਗੱਡੀ ਚੋਂ ਨਿਕਲਦਾ ਉਹ ਨਾਲ ਦੇ 12 ਪੜੇ ਵਾਲਿਆਂ ਨੂੰ ਫੂਕਦਾ ਉੱਥੇ ਖੜਕੇ ਚੀਕਾਂ ਕਢਾਉਂਦੇ ਆ ਉਹ ਜਿਮ ਦੇ ਗਰਾਉਂਡਾਂ ਦੇ ਵਿੱਚ ਜਾ ਕੇ ਨਾਰਮਲ ਗੱਡੀ ਦੌਹ ਜਾਂ ਉਹ ਕਹੇ ਹੁੰਦੀ ਇੱਕ ਚੱਲਦੀ ਹੁੰਦੀ ਆ ਤੇ ਦੂਜਾ ਆਪਣੇ ਨਾ ਜਿਵੇਂ ਸਰੀ ਵਗੈਰਾ ਤੇ ਬੜੀ ਡੈਕੋਰੇਸ਼ਨ ਕੀਤੀ ਹੁੰਦੀ ਆ ਉਹ ਜਿਵੇਂ ਕਹਿੰਦਾ ਉਹ ਫੇਜੀ ਜਿਹੜਾ ਕਿ ਹੁੰਦੀ ਆ ਪਲੇਟਾਂ ਵੀ ਬੜੀਆਂ ਕਸਟਮ ਆ ਤੇ ਹੋਰ ਉਹ ਥੋੜਾ ਜਿਹਾ ਜੇ ਆਪਾਂ ਗਰੇਜ ਕਰੀਏ ਆਪਦੇ ਆਪ ਕਰਨ ਤੋਂ ਬਿਨਾਂ ਪਲੇਟ ਮਿਲਦੀ ਹੋਈ ਹੈ ਚੰਗੀ ਆ ਆਪਾਂ ਨਾਲ ਖਾਓ ਬਹੁਤ ਕੁਝ ਬਿਲਕੁਲ ਜੀ ਥੈਂਕ ਯੂ ਪਿੰਡਾਉਂ ਜੱਟ ਤਾਂ ਜੱਟੇ ਹੁੰਦੇ ਆ ਥੋਕ ਦੇਾਂਗੇ ਲੱਗਦਾ ਫੇਰ ਜੰਮਣਾ ਛੱਡੋ ਇਹੇ ਚੀਜ਼ਾਂ ਬਹੁਤ ਕਰਕੇ ਆਪਾਂ ਦੇਖਿਆ ਹੈ ਖਖਣੀ ਹੈ ਇਹਨਾਂ ਚ ਬੋਲਣ ਨਾਲ ਕੁਛ ਕੁਛ ਨਹੀਂ ਹੁੰਦਾ ਦਿਲੋਂ ਸਤਕਾਰ ਚਾਹੀਦਾ ਤਾਂ ਇਹ ਚੀਜ਼ਾਂ ਹੁੰਦੀਆਂ ਲਾਈਟਸ ਜ਼ਰੂਰ ਚੈੱਕ ਕਰੋ ਗੱਡੀਆਂ ਦੀ ਮਤਲਬ ਨਹੀਂ ਫਿਊਲ ਹੋਣਾ ਚਾਹੀਦੇ ਔਰ ਜੇ ਦੀ ਲੋੜ ਆ ਰਿਪੇਅਰ ਕਰਾਓ ਮੋਸਲੀ ਬੈਟਰੀਆਂ ਜਾਂ ਡੈੱਡ ਹੋਈਆਂ ਹੁੰਦੀਆਂ ਤੇ ਕਿਤੇ ਪਾਰਕਿੰਗ ਚ ਖੜਾ ਕੇ ਬਜ਼ੁਰਗ ਖੜ ਜਾਂਦੇ ਨੇ ਫਿਰ ਲੋਕਾਂ ਨੂੰ ਕੱਲੀ ਕੱਲੀ ਗੱਡੀ ਕੋਲ ਤੁਰੇ ਫਿਰਦੇ ਹੋ ਲਾ ਦੋਂਗੇ ਤਾਰ ਜੀ ਲਾਡੋਂਗੇ ਤਾਰ ਜੀ ਉਹ ਮਾੜੀ ਲੱਗਦੀ ਹੈ ਗੱਲ ਨਾ ਕਰੋ ਇਸ ਤਰ੍ਹਾਂ ਜਰੂਰ ਪੈਣੀ ਆ ਤਾਂ ਉਹ ਪੈਣੀ ਆ 100 150 ਡਾ ਲੱਗਣਾ ਤਾਂ ਲੱਗਣਾ ਪਾਓ ਥੋੜਾ ਜਿਹਾ ਖਿਆਲ ਰੱਖੋ ਪਲੀਜ਼ ਇਹਨਾਂ ਚੀਜ਼ਾਂ دیکھ ਨੇ ਮੈਸੇਜ ਭੇਜਿਆ ਉਹ ਕਹਿੰਦਾ ਮੈਂ ਵੈਨਕੂਵਰ ਕੰਮ ਤੇ ਤੇ ਨੂਟਨ ਚ ਐਕਸੀਡੈਂਟ ਹੋ ਗਿਆ ਵਾਈਫ ਤੋਂ ਮੇਰੀ ਤੋਂ ਤੇ ਅੰਕਲ ਜੀ ਸਿੱਖ ਗਿਆ ਫਿਰ ਫੋਨ ਕਰਕੇ ਦੋ ਉਹਨਾਂ ਨੇ ਹੋਰ ਸੱਦ ਲੈ ਨਾਲ ਨੇੜੇ ਹੋਣਗੇ ਮੇਰੀ ਵਾਈਫ ਤੋਂ ਦਸਤਕਤ ਕਰਾਉਣ ਬਈ ਸਾਈਨ ਕਰ ਇੱਥੇ ਸਾਈਨ ਤੇਰਾ ਫਾਲਟ ਹੈ ਉਹ ਕਹਿੰਦਾ ਜਵਾਕ ਮੇਰੇ ਲੇਰਾ ਮਾਰਨ ਮੈਂ ਫੋਨ ਤੇ ਮੈਨੂੰ ਮੇਰੀ ਵਾਈਫ ਸੁਣਾਵੇ ਉਹ ਘੇਰੀ ਖੜੇ ਨਾ ਬੀਬੀ ਗਲਤੀ ਤੇਰੀ ਆ ਸਾਈਨ ਕਰ ਇੱਥੇ ਓਸੇ ਵੱਲ ਕਨਫਾਈਨਮੈਂਟ ਆ ਫੜ ਕੇ ਪੁਲਿਸ ਲੈ ਜੂ ਤੱਕ ੱੱਕਾ ਨਹੀਂ ਕਰ ਸਕਦੇ ਢਿੰਗੋ ਜ਼ੋਰੀ ਨਹੀਂ ਕਰ ਸਕਦੇ ਹਟ ਤੇ ਐਕਸੀਡੈਂਟ ਹੋ ਗਿਆ ਸੜਕ ਤੋਂ ਜਦ ਤੁਸੀਂ ਦੋਨੇ ਇੱਕ ਦੂਜੇ ਨਾਲ ਗੱਡੀਆਂ ਡਰਾਈਵੇਬਲ ਨੇ ਪਹਿਲਾਂ ਤਾਂ ਉਸੇ ਸਮੇਂ ਨਿਕਲ ਕੇ ਗੱਲ ਕਰਕੇ ਫਲੈਸ਼ਰ ਲਾ ਕੇ ਚਾਰੇ ਲਾਈਟਾਂ ਲਾ ਕੇ ਨਿਕਲ ਕੇ ਗੱਲ ਕਰਕੇ ਗੱਡੀਆਂ ਮੂਵ ਕਰੋ ਉਸੇ ਸਮੇਂ ਮੂਵ ਕਰਕੇ ਆਪਣੀ ਜਿਹੜੀ ਇਨਫੋਰਮੇਸ਼ਨ ਆ ਉਹਨੂੰ ਲਿਖ ਕੇ ਆਪਣੀ ਦੋ ਤੇ ਆਪ ਉਸਦੇ ਲਿਖੋ ਬਸ ਬਾਕੀ ਕੰਮ ਆਈਸੀਬੀ ਦਾ ਥੋੜਾ ਨਹੀਂ ਹੈ ਇਹ ਕਰਬ ਲੇਨ ਦੇ ਨਾਲ ਪਹਿਲੀ ਲੇਨ ਆ ਜਿਹੜੀ ਉਹਦੇ ਚ ਗੱਡੀ ਨਹੀਂ ਚਲਾਉਣੀ ਬਾਹਰਲੇ ਬੰਨੇ ਰੱਖਣੀ ਆ ਉਹਦੇ ਚ ਸਿਰਫ ਪਾਸਿੰਗ ਲੇਨ ਆ ਫਾਸਟ ਗੱਡੀਆਂ ਜਾਂਦੀਆਂ 70 ਦੀ ਜੇ ਸਪੀਡ ਆ ਤੇ ਤੁਰੇ ਜਾਂਦੇ ਹੋ ਲੋਕ ਗਾਲਾਂ ਕੱਢਦੇ ਰਾਤ ਨੂੰ ਲਾਈਟਾਂ ਚੈੱਕ ਕਰੋ ਠਾਠੀਆਂ ਬੰਨ ਕੇ ਨਾ ਗੱਡੀਆਂ ਚਲਾਓ ਤੇ ਨਾ ਬਸਾਂ ਚ ਤੁਰੇ ਫਿਰੋ ਨਾ ਬਸ ਸਟੈਂਡਾਂ 'ਚ ਖੜੋ ਇਹਨਾਂ ਨੂੰ ਖੋਲਦਿਆ ਕਰੋ ਇਹ 60% 60 ਤੋਂ ਉੱਪਰ ਵਾਲੇ ਨੇ 80% ਹੱਥ 'ਚ ਖੁੰਡੇ ਫੜਿਆ ਤੇ ਦਾੜੀਆਂ ਬੰਨੀਆਂ ਤੁਰੇ ਫਿਰਦੇ ਹੋ ਮਿੰਤ ਕਰਾ ਲਓ ਬਹੁਤ ਹੋ ਗਿਆ ਹੁਣ 6 ਸਾਲ ਤਾਂ ਮੈਨੂੰ ਹੋ ਗਏ ਕਹਿੰਦੇ ਗੱਡੀ ਠੀਕ ਚਲਾਓ ਠੀਕ ਪਾਰਕ ਲਾਓ ਲੱਗ ਜੀ ਕਿਸੇ ਨੂੰ ਇਨਫੋਰਮੇਸ਼ਨ ਦੋ ਤੇ ਇਨਫੋਰਮੇਸ਼ਨ ਤੋਂ ਲਾਓ ਟਾਇਰਾਂ ਦੀ ਹਵਾ ਚੈੱਕ ਕਰ ਲਿਆ ਕਰੋ ਹਫਤੇ ਬਾਅਦ। ਇੰਨਾ ਕੰਮ ਕਰ ਲਿਆ ਕਰੋ। ਉਹਦੀ ਗੈਸ ਮਾਈਲੇਜ ਵੱਧਦੀ ਤੇ ਆਰਾਮ ਨਾਲ ਚਲਾਉਂਗੇ ਤੇ ਉਹਦਾ ਕੰਟਰੋਲ ਵਧੀਆ ਰਹਿੰਦਾ। ਬ੍ਰੇਕ ਮੌਕੇ ਤੇ ਪਵਾ ਲਿਆ ਕਰੋ ਚੀਂ ਚੀਂ ਜਦੋਂ ਕਰਦੀ ਆ ਬਸ ਉਹ ਬ੍ਰੇਕ ਪੈਣ ਵਾਲੇ ਨੇ ਲੈ ਜਾਓ ਬੈਟਰੀ ਪਵਾ ਲਿਆ ਕਰੋ। ਬਸ ਇੰਨਾ ਕੰਮ ਕਰ ਲੋ ਆਪਾਂ ਸਤਕਾਰ ਨਾਲ ਤੁਰੇ ਫਿਰੀਏ ਬਾਹਰ। ਵਕਿੱਤ ਲਗਜ਼ਰੀ ਕਾਰਾਂ ਨਹੀਂ। ਉਹਨਾਂ ਦੀਆਂ ਗੱਡੀਆਂ ਵਿੱਚੋਂ ਬੋਲ ਕੇ ਦੱਸ ਦਿੰਦੀਆਂ ਨੇ। ਇਹਦਾ ਆ ਪੈਣ ਵਾਲਾ ਪੈਣ ਵਾਲਾ ਬਹੁਤ ਲੇਰਾ ਮਾਰਦੀ ਆ ਬੀਬੀ ਰੋਲਾ ਪਾਉਂਦੀ ਇਹਨੂੰ ਲੈ ਚਲੇ ਰਾਜ ਖੜੂ ਖਿਆਲ ਰੱਖੋ ਵਧੀਆ ਚਲਾਓ ਸਤਕਾਰ ਦੇ ਨਾਲ ਭਾਈ ਚਾਰੇ ਚ ਰਹਿਣਾ ਤਾਂ ਤੁਹਾਡਾ ਮਾਣ ਬਹਾਲ ਚਾਹੀਦਾ ਪੰਜਾਬ ਦੀਆਂ ਖਬਰਾਂ ਇੱਕ ਦੋ ਸੁਣਾ ਕੇ ਫਿਰ ਅੱਜ ਗੱਲ ਅਗਲੀ ਸ਼ੁਰੂ ਕਰਦਾ ਇੱਕ ਨਵੀਂ ਵੀਡੀਓ ਆਈ ਆ ਪਲੀਜ਼ ਉਹ ਵੀਡੀਓ ਜਿਹੜੀ ਚੰਦੂ ਮਾਜਰੇ ਉਹਦਾ ਵੀ ਕਹੀ ਜਾਂਦੇ ਹੋ ਉਹ ਚੰਦੂ ਮਾਜਰੇ ਕੀ ਨਹੀਂ ਹੈ ਪਲੀਜ਼ ਸੁਣੋ ਬਾਤ ਉਸकी ਉਹ ਗੁਰਵਿੰਦਰ ਟਵਾਣਾਲ ਤੇ ਰਾਣੇ ਦੀ ਲੜਾਈ ਹੋਈ ਸੀ ਪੁਲੱਥ ਉਹ ਲੜਾਈ ਆ ਤੁਸੀਂ ਕੱਲ ਦੀ ਚੰਦੂ ਮਾਜਰਾ ਉਹਨਾਂ ਵੇਖੋ ਚੰਦੂ ਮਾਜਰਾ ਚੰਦੂ ਮਾਜਰਾ ਚੰਦੂ ਮਾਜਰਾ ਜੀ ਨਹੀਂ ਹੈ ਉਸਮੇ ਸ਼ਹੀਦੀ ਦਿੱਤੀ ਐਸਵਾਈਐਲ ਤੇ ਉਹਨੇ ਕਹਿੰਦਾ ਦੇਖੋ ਮੇਰਾ ਗੂਠਾ ਉਸ ਸਮੇਂ ਦਾ ਕਾਟਾ ਹੋਆ ਹੈ ਉਹ ਚੰਦੂ ਮਾਜਰਾ ਜੀ ਹੋਰ ਨੇ ਲੰਬੀ ਮੋਨਾ ਚਿਹਰਾ ਮੋਰੇ ਦਾ ਫਰਕ ਹੈ ਅੱਖਾਂ ਉਹਨਾਂ ਨੇ ਘੱਟ ਖੋਲਦੀਆਂ ਹੌਲੀ ਬੋਲਦੇ ਆ ਇੱਕ ਹੋਰ ਆਈਏ ਜਿਹੜੀ ਜਿਹਦੇ ਵਿੱਚ ਇੱਕ ਕਾਰ 'ਚ ਬੈਠਾ ਸardar sahab ਉਹ ਕਹਿੰਦਾ ਵੀ ਗਰੀਬਾਂ ਦੇ ਘਰੇ ਜੇ ਬਾਦਲ ਹੁਣੇ ਚੱਲ ਜਾਣਾ ਏਹੋ ਲੱਗਦਾ ਬਾਬਾ ਨਾਨਕ ਆ ਗਿਆ ਕਰ ਇਹ ਸਾਰੇ ਹੁਣ ਕੰਧਾਂ 'ਚ ਵੱਜਦੇ ਫਿਰਦੇ ਆ ਇਹਨਾਂ ਰੱਬ ਹੀ ਕਰਾ ਰਿਹਾ ਇਹ ਕੁਝ ਹੋਰ ਕੁਝ ਨਹੀਂ ਹੋ ਰਿਹਾ ਕਦੇ ਛੋਟਾ ਬਾਦਲ ਸਾਹਿਬ ਬਦਸੂਰਤ ਕਹੀ ਜਾਂਦਾ ਆਪਣੇ ਦਰਬਾਰ ਸਾਹਿਬ ਨੂੰ ਕਿਤੇ ਸਜੀਤ ਬਰਨਾਲੇ ਦੇ ਸਮੇਂ ਅਰਦਾਸ ਰੋਕ ਦਿੱਤੀ ਜਾਂਦੀ ਅਨੰਤ ਸਾਹਿਬ ਦੇ ਪਾਸ ਤੋਂ ਬਾਅਦ ਕੇ ਬਾਦ ਲੋਣਾ ਨੇ ਬੋਲਣਾ ਤੇ ਕਦੇ ਕੋਲਿਆਂ ਵਾਲੀ ਕਹਿੰਦਾ ਇਲਾਹੀ ਹੁਕਮ ਹੈ ਰੱਬ ਹੈ ਮੇਰਾ ਉਹ ਹੋ ਸਕਦਾ ਚੱਲ ਝੋਟਿਆ ਤੇ दारू ਵੇਚਣੀ ਤੇ ਹੁਣ ਕਾਰਾਂ 'ਚ ਫਿਰਨਾ ਬਹੁਤ ਫਰਕ ਹੈ ਤੇ ਉਹ ਤੋਂ ਆ ਜਿਹੜੀ ਗੱਲ ਅੱਜ ਰੇ ਬਹਿਨ ਦੇ ਐਨਕਾਂ ਲਾ ਕੇ ਇੱਕ ਬੈਠਾ ਕਾਰ ਦੇ ਵਿੱਚ ਭੱਦਰਪੁਰਸ਼ ਉਹ ਕਹਿੰਦਾ ਬਾਬਾ ਨਾਨਕ ਹੀ ਆ ਸਾਡਾ ਕਰੀਬ ਦੇ ਘਰੇ ਚਲੇ ਜਾਊ ਉਹ ਬਾਬਾ ਨਾਨਕ ਐ ਖੁਦ ਨਾ ਉਹ ਕਹਿਣ ਪਰ ਦੇ ਫਿਰਦੇ ਐ ਨੇ ਡਬੋ ਦੇਣਾ ਕੰਮ ਹਰ ਰੋਜ਼ ਨਵੀਂ ਰੋਜ਼ ਨਵੀਂ ਕਹਾਣੀ ਇਉਂ ਜਮਾ ਹੀ ਕੋਈ ਨਮਾ ਨਹੀਂ ਹੁੰਦਾ ਬੰਦਾ ਨਮਾ ਐਹ ਜੀਆਂ ਗੱਲਾਂ ਬਾਹਰ ਨਿਕਲ ਰਹੀ ਏਡੇ ਕਾਗ ਸਿਆਸਦਾਨ ਨੇ ਜਿਹੜੇ ਉਹਨਾਂ ਤੋਂ ਵੀ ਐਹ ਜੀਆਂ ਗੱਲਾਂ ਬਾਹਰ ਨਿਕਲ ਰਹੀਆਂ ਨੇ ਹੈਰਾਨੀ ਹੋਈ ਪਈ ਕਹਿੰਦੇ ਹਾਂਸ ਤੇ ਹੰਸਣੀ ਕਿਸੇ ਦੂਰ ਯਾਤਰਾ ਤੇ ਚਲੇ ਗਏ ਬਹੁਤ ਵੱਡਾ ਦਰਸ ਰਾਤ ਪੈ ਗਈ ਤੇ ਮਜਬੂਤ ਜੀ ਟਾਣੀ ਤੇ ਰਾਤ ਕੱਟਣ ਨੂੰ ਬਹਿ ਗਏ ਸਮਾਂ ਨਾ ਲੰਘੇ ਹੰਸਣੀ ਹੰਸ ਨੂੰ ਕਹਿੰਦੀ ਹੰਸਾ ਕੋਈ ਗੱਲਬਾਤ ਤਾਂ ਸੁਣਾ ਐ ਰਾਤ ਕਿਵੇਂ ਲੰਘੂ ਹੰਸ ਨੇ ਗਹਾਣੀ ਸੁਣੂ ਕਰਤੀ ਤੋੜਾ ਇਹ ਗੱਲ ਤੇ ਜਾ ਕੇ ਡਿਗਿਆ ਕਿ ਜਿਹੜੇ ਘਰ ਉਤੋਂ ਵੀ ਉੱਲੂ ਟੱਪ ਜਾਏ ਖਿਆਲ ਰੱਖੀ ਤੂੰ ਹੰਸਣੀ ਉੱਲੂ ਦੂਜੀ ਢਾਣੀ ਤੇ ਬੈਠਾ ਸੁਣੇ ਉਹਨੂੰ ਬੜਾ ਗੁੱਸਾ ਆਇਆ ਉਹ ਕਹਿੰਦਾ ਬੈਂ ਚੜ ਲਣ ਦੇ ਫਿਰ ਦੇਖਦੇ ਆਂ ਜਦ ਸਵੇਰੇ ਹੰਸ ਤੇ ਹੰਸਣੀ ਉੱਡਣ ਲੱਗੇ ਉੱਲੂ ਨਾਲ ਆ ਕੇ ਢਾਣੀ ਹੰਸਾ ਕਿਵੇਂ ਆ? ਕਹਿੰਦਾ ਠੀਕ ਆ ਬਾਈ ਜੀ। ਇੱਧਰ ਨੂੰ ਉਹ ਕਹਿੰਦਾ ਚੱਲਿਆਂ ਬਸ ਰਾਤ ਕੱਟਣੀ ਕਹਿੰਦਾ ਚੱਲਿਆ ਤਾਂ ਜਾ ਆ ਘਰ ਵਾਲੀ ਮੇਰੀ ਕਿੱਧਰੋਂ ਲਈ ਜਾਂਦਾ ਤੂੰ? ਉਹ ਕਹਿੰਦਾ ਘਰ ਵਾਲੀ ਤੇਰੀ? ਉਹ ਆ ਨਾਲ ਬੈਠੀ ਐ ਮੇਰੀ ਘਰ ਵਾਲੀ ਐ। ਉਹ ਇਹਨੂੰ ਕਦਰ ਨੂੰ ਨਹੀਂ ਜਾਨਦਾ ਕਹਿੰਦਾ ਇਹ ਹੰਸਣੀ ਆ ਮਾਨ ਸਰੋਵਰ ਦੇ ਹੀਰ ਤੋਂ ਮੋਤੀ ਚੁਗਦੇ ਆ ਅਸੀਂ ਇਹ ਮੇਰੇ ਘਰ ਵਾਲੀ ਐ ਇਹਨੂੰ ਹੰਸਣੀ ਕਹਿੰਦੇ ਆ ਉੱਲੂ ਆਣੀ ਨਹੀਂ ਹੈ ਇਹ ਇਹ ਤੇਰੇ ਘਰ ਵਾਲੀ ਨਹੀਂ ਹੈ ਬਈ ਇਹ ਇਹ ਇਹਨੂੰ ਨਹੀਂ ਲਿਜਾ ਸਕਦਾ ਉੱਲੂ ਮੂਰੇ ਹੋ ਗਿਆ ਉਹ ਕਹਿੰਦਾ ਫਿਰ ਐ ਨਹੀਂ ਗੱਲ 90 ਇੱਥੇ ਕਹਿੰਦਾ 99% ਉੱਲੂਆਂ ਦੇ ਘਰੇ ਹੰਸਣੀਆਂ ਵੱਸਦੀਆਂ ਜਿਹੜੇ ਏਰੀਏ ਤੂੰ ਫਿਰਦਾ ਚਲ ਆਪਾਂ ਪੰਚਾਇਤ ਕੋਲ ਚੱਲੀਏ ਹੰਸ ਨੂੰ ਕਿਹਾ ਕੋਈ ਡਰ ਨਹੀਂ ਹੰਸ ਕਹਿੰਦਾ ਵੀ ਚੱਲ ਢੋਗੜ ਬੈਠਾ ਬੈਠੇ ਹੰਸ ਨੇ ਸਾਰਿਆਂ ਨੂੰ ਫਤੇ ਬੁਲਾਈ ਨਮਰਤਨ ਨਾਲ ਕਹਿੰਦਾ ਭਰਾਵੋ ਮੈਂ ਇੱਥੇ ਪਰਦੇਸੀ ਸੀ ਰਾਤ ਕੱਟੀਆ ਉੱਲੂ ਦਾ ਦਿਮਾਗ ਫਿਰ ਗਿਆ ਮੇਰੀ ਘਰ ਵਾਲੀ ਰੋਕੀ ਬੈਠਾ ਕਹਿੰਦਾ ਹੰਸ ਨਹੀਂ ਮੇਰੇ ਘਰ ਵਾਲੀ ਐ ਢੋਗੜ ਹੰਸ ਦੇ ਹੱਕ ਤੇ ਫੈਸਲਾ ਕਰਨ ਵਾਲਾ ਦੀ ਕਾਨ ਉਹਦੇ ਵਕੀ ਚੁੰਡੀ ਵੱਡੀ ਕਹਿੰਦਾ ਨਾ ਕਰਦੀ ਘੋਗੜਾ ਪੁੱਠਾ ਕੰਮ ਹੰਸ ਨੇ ਤਾਂ ਇਹਨੇ ਪਤਾ ਕਿੱਥੇ ਮਾਨਸਰੋਵਰ ਤੇ ਜਾ ਬਣਨਾ ਉੱਲੂ ਦੇ ਘਰ ਇਹਨੂੰ ਰੱਖ ਲੈਨੇ ਆ ਇੱਥੇ ਸੋਹਣੀ ਸੱਕਿਆ ਤੁਰਦੀ ਫਿਰਦੀ ਨਾਲੇ ਆਪਾਂ ਵੇਖਿਆ ਕਰਾਂਗੇ ਊਂਕਾ ਨੂੰ ਧੋਰੀ ਜਾਂਦਾ ਇਹ ਨਾਲ ਲਓ ਜੀ ਘੋਗੜ ਨੂੰ ਗੱਲ ਕਾਂ ਦੀ ਜੱਜ ਗਈ ਉਹ ਸਰਮੇਸਰ ਕਹਿੰਦਾ ਹੰਸ ਜੀ ਇਹ ਤੇਰੀ ਘਰ ਵਾਲੀ ਨਹੀਂ ਹੈ ਇਹ ਉੱਲੂ ਦੇ ਘਰ ਵਾਲੀ ਹੈ ਹੰਸ ਨੇ ਐਨੀ ਸ਼ਰਮ ਮੰਨੀ ਉੱਡਣ ਲੱਗਿਆ ਉੱਲੂ ਫੇਰ ਮੂਰੇ ਆ ਗਿਆ। ਕਹਾਂ ਗੱਲ ਸੁਣ ਓਏ ਆ ਲੈ ਜਾ ਆਪਣੀ ਹੰਸ ਨਹੀਂ ਜੀ ਮੈਂ ਕੀ ਕਰਨੀ ਐ ਪਰ ਗਾਹਾਂ ਤੋਂ ਗੱਲ ਯਾਦ ਰੱਖੀ। ਉੱਲੂਆਂ ਦੇ ਨਾਲ ਨਹੀਂ ਘਰ ਉੱਜੜਦੇ। ਇਹੋ ਜਿਹੀਆਂ ਪੰਚਾਇਤਾਂ ਤੇ ਸਰਕਾਰਾਂ ਆ ਜਾੜਦੀਆਂ। ਵਾਲੀ ਪੰਚਾਇਤ ਆ ਜਿਹੜੀ ਆਹਾ ਕਾਮਾ ਵਾਲੀ ਪੰਚਾਇਤ ਆ ਜਾੜਦੀ ਐ ਇਹ ਖਿਆਲ ਰੱਖੀਗਾ ਸਾਡੇ ਟੱਪਿਆਂ ਤੇ ਕੁਛ ਨਹੀਂ ਜੜਦਾ। ਇੱਕ ਗੀਤ ਸੁਣਾਓ ਵਪਾਰਕ ਸੁਨੇਸ਼ਵਾਲ ਵਾਪਸ ਆਉਂਦਾ। ਇਹ 17 ਮਿੰਟ ਹੋਏ ਆ ਜੀ ਗ੍ਰੀਨ ਟਿੰਬਰ ਦੇ ਵਿੱਚ ਐਨਡੀਪੀ ਦੀ ਨਾਮੀਨੇਸ਼ਨ ਦਾ ਬਹੁਤ ਰੇੜਕਾ ਪਿਆ ਹੋਇਆ ਹੈ ਉੱਪਰਲੀ ਹਾਈ ਕਮਾਂਡ ਤੱਕ ਪ੍ਰੋਵਿੰਸ਼ਲ ਕੌਂਸਲ ਤੱਕ ਗੱਲ ਚੱਲੇ ਗਈ ਰਚਨਾ ਸਿੰਘ ਔਣੀ ਜਿਨ੍ਹਾਂ ਨੂੰ ਇੱਕ ਕਿਸਮ ਦੀ ਨਾਮੀਨੇਸ਼ਨ ਮਿਲ ਰਹੀ ਹੈ ਜਿਨ੍ਹਾਂ ਦੀ ਮਦਦ ਸੂ ਨੇ ਸਿੱਧੇ ਤੇ ਸਿੱਧੇ ਤਰੀਕੇ ਨਾਲ ਕੀਤੀ ਤੇ ਐਨਡੀਪੀ ਦੇ ਕਾਨੂੰਨ ਦੀਆਂ ਧੱਜੀਆਂ ਇਹਨਾਂ ਨੇ ਅੜਾਈਆਂ ਉਸ ਗੱਲ ਕਰਕੇ ਬਹੁਤ ਰੋਸ ਹੈ ਜਦੋਂ ਨੋਮੀਨੇਸ਼ਨ ਸ਼ੈਡ ਹੋਣੀ ਹੈ ਨੂੰ ਉਸ ਤਰ੍ਹਾਂ ਉਸ ਦਿਨ ਮਜਾਰੇ ਦੀ ਵੀ ਗੱਲ ਚੱਲ ਰਹੀ ਹੈ ਪ੍ਰਾਣੇ 40-40 ਸਾਲ ਪੁਰਾਣੇ ਅਸੂਲਾਂ ਦੇ ਪੱਕੇ ਜਿੰਨੇ ਵੀ ਐਨਡੀਪੀਰ ਨੇ ਉਹ ਖੁਸ਼ ਨਹੀਂ ਇਸ ਗੱਲ ਤੋਂ ਕਹਿੰਦੇ ਇਹ ਕੀ ਗੱਲ ਹੋਈ ਜੁਨੀਅਨ ਵਾਲੇ ਬੰਦੇ ਨੇ ਕਿਸੇ ਐਮਐਲਏ ਨੇ ਮਦਦ ਕਰਕੇ ਜੁਨੀਅਨ ਵਾਲੀ ਲੇਡੀ ਚਣਵਾ ਦਿੱਤੀ ਅਸੀਂ ਕੌਣ ਹ ਤਾਂ ਅਹਜਾ ਕੁਝ ਹੁੰਦਾ ਨਾ ਭਾਈਚਾਰੇ 'ਚ ਫਿਰ ਜਿਹੜੀਆਂ ਸੀਟਾਂ ਆਉਣੀਆਂ ਹੁੰਦੀਆਂ ਹੱਥ 'ਚ ਉਹ ਵੀ ਖੁੱਸ ਕਿ ਜੇ ਤੁਸੀਂ ਇਹੋ ਜਿਹਾ ਕੁਝ ਕਰਦੇ ਹੋ ਇਹਦੇ ਵਿੱਚੋਂ ਫਿਰ ਜਿਹੜੀ ਤੁਸੀਂ ਬਰਾਬਰਤਾ ਬਰਾਬਰਤਾ ਬਰਾਬਰਤਾ ਦੀ ਗੱਲ ਕਰਦੇ ਹੋ ਇਹ ਬਰਾਬਰਤਾ ਕੀ ਹੈ ਤੁਹਾਡੀ ਉਹ ਜਿਹੜਾ ਸਟਾਰ ਕੈਂਡੀਡੇਟ ਲਿਉਨੇ ਹੋ ਫਿਰ ਰੌਲਾ ਪਾਉਨੇ ਹੋ ਫਲਾਣਾ ਫਲਾਣੇ ਆ ਗਿਆ ਫਲਾਣਾ ਇੱਕ ਚ ਰਹਿਣ ਵਾਲੀ ਇਸਤਰੀ ਹੈ ਉਹਨੂੰ ਗ੍ਰੀਨ ਕਰ ਰਹੇ ਹੋ ਇਸ ਗੱਲ ਦਾ ਰੌਲਾ ਐਨਡੀਪੀਰ ਪਾ ਰਹੇ ਕਿਉਂਕਿ ਇਸ ਦੇ ਵਿੱਚ ਸ਼ਰਮ ਕਾਨੂੰਨਾਂ ਦੀਆਂ ਧੱਜੀਆਂ ਉਡਾਈਆਂ ਗਈਆਂ ਸੁਹੈਮਲ ਨੇ ਆਪਣਾ ਵਾਰਾ ਜਿਹੜਾ ਜਿਸ ਨੂੰ ਚੁਣਦਿਆਂ ਬੜਾ ਲੰਮਾ ਸਮਾਂ ਹੋ ਗਿਆ ਮੌਕੇ ਤੇ ਆ ਕੇ ਜਾਂ 90 ਦਿਨ اپریل ਚ ਮੁੱਕ ਜਾਣ ਸਟੈਪ ਡਾਊਨ ਕਰਕੇ ਵੀ ਨਾ ਕੋਈ ਨਾਮੀਨੇਸ਼ਨ ਤੇ ਲੜ ਸਕੇ ਨਾ ਕੋਈ ਬਣਾ ਸਕੇ 90 ਦਿਨ ਲਈ ਮੈਂਬਰਸ਼ਿਪ ਚਾਹੀਦੀ اپریل ਦੇ ਹੋਣੀ ਤੇ ਤਾਰੀਖ ਨਿੰਗਣ ਤੋਂ ਬਾਅਦ ਕਾਗਜ਼ ਦਾਖਲ ਕੀਤੇ ਨੇ 3 ਦਸੰਬਰ ਦੀ ਇਹ ਗੱਲ ਐ ਸਟੱਪ ਡਾਊਨ ਹੋਣ ਦੀ ਤੇ ਇਹ ਬੜਾ ਸਾਰਿਆਂ ਨੂੰ ਪਤਾ ਹੈ ਕੀ ਹੋਇਆ ਹੁਣ ਇਹਦੇ ਵਿੱਚ ਪੁਰਾਣੇ ਐਂਡੀਪੀ ਵਾਲੇ ਦੇ ਜਿਹੜੇ ਉਹ ਇੱਕ ਐਮਐਲਏ ਤੇ ਗੁੱਸਾ ਝਾੜ ਰਹੇ ਨੇ ਵੀ ਤੈਂ ਇਹ ਕੀਤਾ ਤੇ ਹੋ ਸਕਦਾ ਉਹ ਸੀਟ ਤੇ ਵੀ ਫਿਰ ਹੁਣ ਮੁਸ਼ਕਲ ਆਵੇ ਕਹਿੰਦੇ ਅਸੀਂ ਨਹੀਂ ਮਦਦ ਕਰਨੀ ਜਿਹੜਾ ਬੰਦਾ ਸਾਡੇ ਘਰ ਚ ਬਹਿ ਕੇ ਸਾਡੀ ਹੀ ਸੁਣ ਰਿਹਾ ਅਸੀਂ ਮਦਦ ਨਹੀਂ ਕਰਨੀ ਯੂਨੀਅਨ ਯੂਨੀਅਨ ਯੂਨੀਅਨ ਜੂਨੀਅਰ ਨੂੰ ਸਿਰ ਤੇ ਚੱਕ ਲਵੇ ਇਹ ਐਮਐਲਏ ਤੇ ਗਾਹ ਵਾਲੇ ਯੂਨੀਅਨ ਵਾਲੇ ਜੇ ਲੋਕ ਵੋਟ ਨਹੀਂ ਪਾਉਣਗੇ ਇਸ ਗੱਲ ਦਾ ਗੁੱਸਾ ਲੋਕਾਂ 'ਚ ਬਹੁਤ ਜੇ ਵੱਡਾ ਹੈ ਜਿਹੜੇ ਕਰਨ ਜਿਹੜੀ ਬਣੀ ਹੈ ਉਹਦੇ ਵਿੱਚ ਖੜਾਓ ਬੰਦੇ 4 3 ਖੰਡ 2 ਖੰਡ ਜਿਹੜੇ ਵੀ ਦਾਵੇਦਾਰ ਨੇ ਜਿਹੜਾ ਜਿੱਤ ਗਿਆ ਜਿੱਤ ਗਿਆ ਹੋਰ ਕਿਸੇ ਨੂੰ ਤੁਸੀਂ ਅਪਰੂਵ ਔਰ ਇਹ ਤੇ ਹਾਈ ਕਮਾਂਡ ਤੱਕ ਇਹ ਗੱਲ ਜਾਉਣ ਤੱਕ ਔਰ ਹੋਰ ਜਿਹੜੇ ਉਹਦੇ ਨਾਲ ਦੇ ਹਾਈ ਕੈਲੀਬਰ ਵਾਲੇ ਬੰਦੇ ਆ ਉਹਨਾਂ ਸਾਰਿਆਂ ਤੱਕ ਇਹ ਗੱਲ ਪਹੁੰਚੀ ਔਰ ਕੋਈ ਵੀ ਇਸ ਨੂੰ ਤਵੱਜੋ ਨਹੀਂ ਦੇ ਰਿਹਾ ਇਹ ਵੋਟਾਂ ਦੇ ਵਿੱਚ ਪੰਗਾ ਪੈਣਾ ਤੁਹਾਡੇ ਸਾਹਮਣੇ ਆ ਇਹ ਗੱਲ ਬੁਝਣੀ ਨਹੀਂ ਹੈ ਇਹ ਸਵਾਲ ਫਿਰ ਪੁੱਛੇ ਜਾਣਗੇ ਵੀ ਤੁਸੀਂ ਫਿਰ ਇਹ ਡਬਲ ਸਟੈਂਡਰਡ ਆ ਜਿਹੜਾ ਇਹ ਕੀ ਕਹਾਣੀ ਹੈ ਫਿਰ ਨਾਮੀਨੇਸ਼ਨ ਓਪਨ ਹੋਵੇ ਉਹਦੇ ਵਿੱਚ ਖੜੋ ਜਿਹੜਾ ਖੜਦਾ ਹੈ ਉਹ ਵੋਟਾਂ ਪਾ ਲਵੇ ਇਹ ਜਿਹੜੀ ਮੈਂਬਰਸ਼ਿਪ ਦਾ ਅਕਤੂਬਰ ਦੀ ਭਰਤੀ ਹੋਣ ਲੱਗਿਆ ਚੋਰੋਚੋਰੀ ਇਹਦਾ ਮਤਲਬ ਸੂਹਮੈ ਨੂੰ ਹੋਇਆ ਸੀ ਰਚਨਾ ਸਿੰਘ ਨੇ ਜਨਤਕ ਨਹੀਂ ਕੀਤੀ ਇਹ ਗੱਲ ਜੇ ਕੋਈ ਮੈਂਬਰ ਬਣਾ ਕੇ ਭੇਜ ਦਿੰਦਾ ਤਾਂ ਸੂਹਮੈ ਨੂੰ ਸਟੈਪ ਡਾਉਨ ਨਹੀਂ ਸੀ ਹੁਣ ਉਹ ਕਹਿੰਦੀ ਮੈਂ ਨਹੀਂ ਹੁੰਦਾ ਹੁਣ ਜਦ ਕਿਸੇ ਨੇ ਬਣਾਏ ਨਹੀਂ ਕਿਸੇ ਨੂੰ ਓਪਨ ਨਹੀਂ ਕੀਤੀ ਲੋਕਾਂ ਨੇ ਮੈਂਬਰਸ਼ਿਪ ਕਿਸੇ ਨੇ ਜਿਹੜਾ ਦਾਅਵੇਦਾਰ ਹੋਰ ਵੀ ਬਹੁਤ ਨੇ ਕੰਮ ਕਰਨ ਵਾਲੇ ਗ੍ਰੀਨ ਚ ਕਿਤੇ ਸਾਡੇ ਭਾਈਚਾਰੇ ਚੋਂ ਜਾ ਕੋਈ ਮੇਸਪੀਨ ਦੇ ਵਿੱਚ ਕੋਈ ਬੰਦਾ ਹੀ ਹੈ ਨਹੀਂ ਨੋਮੀਨੇਟ ਤੁਸੀਂ ਨਾ ਕਰੋ ਤੁਸੀਂ ਓਪਨ ਕਰੋ ਇਹਨੂੰ ਇਹdੀਆਂ ਇਹਦਾ ਫਰਕ ਸਰੀ ਦੀਆਂ ਐਨਡੀਪੀ ਦੀਆਂ ਸੀਟਾਂ ਤੇ ਪਉ ਹੈ ਯਾਦ ਰੱਖਿਓ ਲਿਬਰਲ ਦੇ ਕੇ ਤੁਸੀਂ ਉਹਨਾਂ ਨੂੰ ਘੇਰਨਾ ਵੀ ਤੁਸੀਂ ਸਟਾਰ ਕੈਂਡੀਡੇਟ ਲਿਆ ਉਹਨਾਂ ਨੇ ਕਿਹਾ ਆ ਤੁਸੀਂ ਕੀ ਕੀਤਾ ਉਹ ਸਰੀ ਦੀਆਂ ਬਹੁਤ ਵਧੀਆ ਸੀਟਾਂ 'ਚ ਕਾਰਜਗੁਜ਼ਾਰੀ ਵਧੀਆ ਫਰਾਂ ਰੋਮਾ ਚ ਬਹੁਤ ਵਧੀਆ ਕੰਮ ਜਿਹੜਾ ਜਿੰਨੀ ਸਿਮਜ਼ ਕਰ ਰਹੇ ਨੇ ਬਹੁਤ ਟਫ ਫਾਈਟ ਹੈ ਫਾਸ ਬੈਂਡਰ ਦੇ ਖਿਲਾਫ ਜਗਰੂ ਬਰਾੜ ਉਹਨਾਂ ਦਾ ਬਹੁਤ ਵਧੀਆ ਹੈ ਕਾਲੋਂ ਦਾ ਬਹੁਤ ਵਧੀਆ ਕੰਮ ਹੈ ਫੇਰੀ ਬੈਂਸ ਸੋਣੀ ਨਿਊਟਨ ਦੇ ਵਿੱਚ ਹੈ ਪਰ ਇਹ ਗੱਲ ਜਿਹੜੀ ਚੱਲ ਰਹੀ ਹੈ ਇਹਦੇ ਗੱਲ ਕਰਕੇ ਜਿਹੜੇ ਬੰਦਿਆਂ ਨੇ ਸਿੱਧੇ ਤੇ ਸਿੱਧੇ ਇਸ ਕੰਮ 'ਚ ਮਦਦ ਕੀਤੀ ਉਹਨਾਂ ਨੂੰ ਤਬਸ਼ ਚਲਣੀ ਪੈਣੀ ਹੈ ਔਰ ਉਹਨਾਂ ਨੂੰ ਫੋਨ ਕਰਕੇ ਸਾਰਿਆਂ ਨੂੰ ਦੱਸ ਦਿੱਤਾ ਰਵੰਤ ਤੇ ਸਿਵਨਾ ਮੇਰੀ ਗੱਲ ਉਹ ਕਹਿੰਦੇ ਅਸੀਂ ਵਿਰੋਧਤਾ ਕਰੀਆ ਠੋਕ ਕੇ ਚਾਹੇ ਸਾਡਾ ਐਨਡੀਪੀ ਦੇ ਨੇ ਸਾਰੇ ਖਫਾ ਨੇ ਇਸ ਗੱਲ ਡਬਲ ਸਟੈਂਡਰਡ ਨਹੀਂ ਹੋਣਾ ਚਾਹੀਦਾ ਓਪਨ ਕਰੋ ਜਿਹੜਾ ਜਿੱਤ ਗਿਆ ਜਿਹੜੇ ਸੂ ਹੈਮਲ ਦੇ ਮੈਂਬਰਾਂ ਦੇ ਵਿੱਚੋਂ ਪਵਾ ਦੋ ਦੋ ਖੜਾਓ ਤਿੰਨ ਖੜਨ ਉਹਨਾਂ ਦੀ ਦਾਵੇਦਾਰੀ ਹੋਵੇ ਤੇ ਉਹਦੇ ਵਿੱਚੋਂ ਹਲੇ ਕੁਛ ਨਹੀਂ ਉਹ ਚੱਲਿਆ ਹਾਲੇ ਤਾਂ ਜਨਵਰੀ ਆ ਫਰਵਰੀ ਦੇ ਵਿੱਚ ਨੋਮੀਨੇਸ਼ਨ ਹੋ ਜਾਏ ਮਾਰਚ ਅਪ੍ਰੈਲ ਫੇਰ ਬੱਜ ਜਾਣਾ ਐਡੀ ਕਾਲੀ ਨਹੀਂ ਹੈ ਹਾਂ ਜੇ ਤੁਹਾਡੇ ਮਨ ਚ ਇਹ ਹੈ ਹਾਈ ਕਮਾਂਡ ਮਿਲਿਆ ਨਾ ਮੇਰਾ ਕੋਈ ਕੰਕਰਨ ਪਰ ਜੇ ਮੈਂ ਲਿਬਰਲ ਦੇ ਕੀਤੇ ਧੱਕੇ ਦੀ ਗੱਲ ਕਰਨੀ ਹੈ ਮਾਰਵਨ ਹੰਟ ਨੂੰ ਲਿਜਾ ਕੇ ਤੇ ਜੋਹਲ ਉਹਨਾਂ ਦਾ ਟੰਡਾ ਕੱਢਿਆ ਆਪਣੇ ਕਲੋਵਰ ਟੇਲ ਦੇ ਵਿੱਚੋਂ ਤਾ ਫਿਰ ਨਾ ਉਸੇ ਸੇਮ ਟੋਕਨ ਤੇ ਨੋਮੀਨੇਸ਼ਨ ਐਂਡੀਪੀ ਦੀ ਵੀ ਗਲਤ ਹੋ ਰਹੀ ਹੈ ਇਹ ਵੀ ਗੱਲ ਕਰਨੀ ਬਣਦੀ ਕਿਉਂਕਿ ਜਦ ਇਸ ਗੱਲ ਦਾ ਰੌਲਾ ਪਿਆ ਮਾਰਵਨ ਹੰਟ ਸਿਟਿੰਗ ਜਿਹੜਾ ਐਮਐਲਏ ਆ ਪੈਨੋਰੋਮਾ ਦਾ ਪਰ ਐਮਐਲਏ ਨੂੰ ਸਿਟਿੰਗ ਐਮਐਲਏ ਨੂੰ ਜਿਹਦੇ ਕੋਲ ਸੀਟਾਂ ਦਾ ਇੱਕ ਜਿਹਦੇ ਕੋਲ ਪੈਨੋਰੋਮਾ ਰੇਜ ਦਾ ਏਰੀਆ ਦਿੱਤਾ ਜਿਹਦੀ ਗੱਲ ਕਰਕੇ ਉਸ ਬੰਦੇ ਨੇ ੱੱਕੇ ਦੇ ਨਾਲ ਆਪਣੇ ਵਿਰੋਧੀ ਚਿੱਤ ਕੀਤੇ ਮਾਰਵਨ ਹੰਟ ਨੂੰ ਚੱਕ ਕੇ ਕਲੋਵਰ ਅ ਸਕੀਡਿਊਲ ਉੱਥੋਂ ਚੱਕ ਕੇ ਕਿਤੇ ਹੋਰ ਤੇ ਉੱਥੇ ਜਿਹੜਾ ਦਾਵੇਦਾਰ ਬੰਦਾ ਸੀ ਉਹਨੂੰ ਇੱਕ ਖੁੰਝੇ ਲਾਇਆ। ਪਰ ਉਹਦੇ ਪੈਸੇ ਖਰਚੇ ਮੈਂਬਰਸ਼ਿਪ 6 ਮਹੀਨੇ ਦਾ ਕੰਮ ਕੀਤਾ ਜੌਲ ਉਹਨਾਂ ਦਾ ਉਹ ਖੂ ਖਾਤੇ ਪਾਇਆ। ਜੈ ਜੀ ਕੋਸ਼ ਹੁੰਦੀ ਆ ਫਿਰ ਟਾਈਟ ਖੜਿਆ ਕਰੋ ਪਰ ਨਾ ਜਾਇਆ ਕਰੋ ਤੈਨੂੰ ਆਹ ਦੇ ਦਿੰਨੇ ਆ ਤੈਨੂੰ ਆਹ ਦਿੰਨੇ ਆ ਹੁਣ ਕਹਿੰਦੇ 5-7 ਨੂੰ ਠੇਕੇ ਦਿੱਤੇ ਠੇਕਿਆਂ ਨਾਲ ਵੀ ਕਈ ਖੁਸ਼ ਨਹੀਂ। ਥੋੜੀ ਬਹੁਤੀ ਚਰਤ ਦੇ ਨਾਲ ਰਿਹਾ ਕਰੋ ਜੇ ਤੁਹਾਡੀ ਗੱਲ ਕਰੀ ਦੀ ਹੈ ਤਾਂ ਗੱਲ ਤੇ ਵਜ਼ਨ ਦੇਈਦਾ ਤੇ ਤੁਸੀਂ ਵੀ ਖੜੇ ਕਰੋ ਘੁੰਮ ਨਾ ਜਾਇਆ ਕਰੋ ਸੋ ਇਹ ਐਂਡੀਪੀ ਦੀ ਜਿਹੜੀ ਗੱਲਬਾਤ ਚੱਲ ਰਹੀ ਹੈ ਗ੍ਰੀਨ ਟਿੰਬਰ ਚ ਇਹ ਗਲਤ ਹੋ ਰਹੀ ਹੈ ਔਰ ਇਹਦੇ ਤੇ ਸੀਨੀਅਰ ਬੰਦੇ ਜਿਹੜੇ 40-40 ਸਾਲਾਂ ਦੇ ਤੁਰੇ ਫਿਰਦੇ ਐਂਡੀਪੀ ਨਾਲ ਉਹ ਬਹੁਤ ਖਫਾ ਨੇ ਉਹ ਕਹਿੰਦੇ ਅਸੀਂ 29 ਜਨਵਰੀ ਨੂੰ ਉੱਥੇ ਜਾ ਕੇ ਕਾਲਿਆਂ ਝੰਡਿਆਂ ਦੇ ਨਾਲ ਮੁਜ਼ਾਹਰਾ ਕਰਨਾ ਜਿੱਥੇ ਨਾਮਿਨੇਸ਼ਨ ਹੋਣੀ ਹੈ ਸ਼ੈਲਬੇਰ ਕ੍ਰਿਕ ਚ ਹੋਣੀ ਹੈ ਆ ਪਾਰਕ ਚ ਹੋਣੀ ਹੈ ਸ਼ਾਇਦ ਵਪਾਰਕ ਸੰਮੇਸ਼ਾ ਤੋਂ ਬਾਅਦ ਇੱਕ ਖੁਦਕਸ਼ੀ ਦਾ ਮਾਮਲਾ ਸਾਹਮਣੇ ਆਇਆ ਹੈ ਹਲੇ ਤੱਕ ਪੁਲਿਸ ਨੇ ਫੋਨ ਕਰਕੇ ਬੰਦਿਆਂ ਨੇ ਬਹੁਤਾਂ ਨੇ ਦੱਸਿਆ ਕਿ ਫਲਾਣ ਕੰਪਨੀ ਚ ਮੁੰਡਾ ਕੰਮ ਕਰਦਾ ਸੀ ਘਰ ਦੀ ਵੀ ਮੁਸ਼ਕਲ ਹੋ ਸਕਦੀ ਹੈ ਜਾਂ ਕੰਮ ਦੀ ਮੁਸ਼ਕਲ ਹੈ ਪਰ ਮੈਂ ਆਤਮ ਹੱਤਿਆ ਬਾਰੇ ਗੱਲ ਕਰਨੀ ਚਾਹੁੰਦਾ ਕੁਝ ਵੀ ਕਾਰਨ ਹੋ ਸਕਦੇ ਆ ਪਰ ਆਤਮ ਹੱਤਿਆ ਕਰਨੀ ਮੇਰੇ ਸ਼ਬਦਾਂ ਦੇ ਵਿੱਚ ਕਾਇਰਤਾ ਵਪਾਰਕ ਸੰਦੇਸ਼ 1:28 ਮਿੰਟ ਨੇ ਛਾਲ ਮਾਰ ਕੇ ਖੁਦਕਿਸ਼ ਕੀਤੀ ਹੈ ਅਪੁਸ਼ਟ ਖਬਰਾਂ ਇਹ ਨਹੀਂ ਕੋਈ ਸਿੱਧੇ ਲੋਕਲ ਇੱਕ ਕੰਪਨੀ ਦੇ ਵਿੱਚ ਡਰਾਈਵਰ ਸੀ ਮੁੰਡਾ ਇੱਕ ਕੰਟੇਨਰ ਪacking ਕੰਮ ਕਰਦਾ ਸੀ ਮੁਸ਼ਕਲ ਕੋਈ ਵੀ ਹੋ ਸਕਦੀ ਹੈ ਘਰੋਂ ਵੀ ਹੋ ਸਕਦੀ ਹੈ ਪਰ ਇਹ ਕੋਦਕਸ਼ੀ ਕਿਸੇ ਚੀਜ਼ ਦਾ ਹੱਲ ਹੈ ਇਹ ਹਾਲਾਤ ਦੇ ਵਿੱਚ ਜਿਹੜਾ ਲੰਘ ਰਿਹਾ ਹੈ ਪਤਾ ਤਾਂ ਖੈਰ ਉਸ ਨੂੰ ਹੁੰਦਾ ਪਰ ਆਪਾਂ ਇਸ ਗੱਲ ਇਸ ਵਿਸ਼ੇ ਤੇ ਮੈਂ ਗੱਲ ਕਰਨੀ ਚਾਹੁੰਨਾ ਕਿ ਇਸ ਤਰ੍ਹਾਂ ਜਿੰਨੇ ਵੀ ਇਹਦੇ ਵਿੱਚ ਸਿਆਣੇ ਨੇ ਜਿਹੜੇ ਇਸ ਤੇ ਕੰਮ ਕਰਦੇ ਆ ਜਿੰਨੇ ਵੀ ਮਨੋਵਿਗਿਆਨੀ ਨੇ ਡਾਕਟਰ ਨੇ ਉਹ ਦੱਸਦੇ ਕਿ ਪਹਿਲੀ ਸਟੇਜ ਆ ਜੀ ਡਿਪਰੈਸ਼ਨ ਹੈ ਜਿਹਦੇ ਵਿੱਚ ਮਨ ਤੇ ਵਜ਼ਨ ਮਨੋ ਰੋਗੀ ਹੋਣਾ ਇਹਦਾ ਪਹਿਲੀ ਸ਼ੁਰੂਆਤ ਆ ਜਿੱਥੇ ਤੁਸੀਂ ਡਿਪਰੈਸ਼ਨ ਕੀ ਜਾਂਦੇ ਐਂਜ਼ਾਈਟੀ ਐ ਪੈਨਿਕ ਨੇ ਨੀਂਦ ਨਹੀਂ ਆਉਣੀ ਡਰ ਹੋ ਗਿਆ ਕੁਝ ਨਾ ਕੁਝ ਜੀਤ ਡਿਪਰੈਸ਼ਨ ਤੁਸੀਂ ਕਹੇ ਜਾਂਦੇ ਉਹਦਾ ਕਾਰਨ ਕੋਈ ਵੀ ਹੋ ਸਕਦਾ ਜਿਆਦਾਤਰ ਕਾਰਨ ਇਹਨਾਂ ਦੇਸ਼ਾਂ ਦੇ ਵਿੱਚ ਮਨੋ ਦੇ ਨੇ ਆਰਥਿਕ ਹਾਲਤ ਸਭ ਤੋਂ ਵੱਡੀ ਗੱਲ ਉਸ ਤੋਂ ਅਗਲੀ ਜਿਹੜੀ ਗੱਲ ਹੈ ਪਰਿਵਾਰ ਦਾ ਕਲੇਸ਼ ਆ ਜੜ। ਉਹ ਕਲੇਸ਼ ਕਿਸੇ ਕਾਰਨ ਦਾ ਵੀ ਹੋਵੇ। ਮੀਆਂ بیوی ਦਾ ਕਲੇਸ਼ ਹੋਵੇ, ਘਰ ਚ ਮਾਪਿਆਂ ਦੇ ਦਾ ਹੋਵੇ। ਜਾਂ ਪਰਿਵਾਰ ਦੇ ਹੋਰ ਮੈਂਬਰਾਂ ਤੇ ਬਾਲ ਬੱਚੇ ਕਹਨੇ ਚ ਨਾ ਹੁਣ ਪਰਿਵਾਰ ਦੇ ਵਿੱਚੋਂ ਹੀ ਮਨੋ ਨਿਕਲਦਾ। ਸਾਰੀਆਂ ਚੀਜ਼ਾਂ ਬੰਦਾ ਝੱਲ ਲੈਂਦਾ। ਜੇ ਮੀਆਂ بیوی ਆਪ ਇੱਕ ਚੈਨਲ ਤੇ ਹੋਣ ਉਹ ਦੋਨੇ ਰਲ ਕੇ ਕਿਸੇ ਵੀ ਮੁਸ਼ਕਲ ਦਾ ਹੱਲ ਕਰ ਸਕਦੇ ਨੇ ਹਾਊਸਹੋਲਡ ਦੇ ਵਿੱਚ ਘਰ ਦੇ ਵਿੱਚੋਂ ਦੋ ਅਹਿਮ ਮੈਂਬਰ ਨੇ ਲੈਫਟ ਰਾਈਟ অর ਰਾਈਟ ਲੈਫਟ ਦੋਨੇ ਹੀ ਸੇਮ ਐਲਟੀਟਿਊਡ ਹੋਣ ਗੱਲੇ ਕੋਈ ਨਹੀਂ ਕੋਈ ਚੀਜ਼ ਜਿਹੜੀ ਖਰਜ ਹੋਰ ਘਰ ਦੇ ਵਿੱਚ ਸਦਾ ਹਰ ਇੱਕ ਗੱਲ ਜਿਹੜੀ ਹੈ ਉਹ ਡਿਸਕਸ ਹੋ ਗਈ ਜੇ ਮਰਦ ਬਣੋ ਅਸੇਪੇਲੇ ਦੀ ਗੱਲ ਕਰ ਚ ਕੀਤੀ ਜਾਵੇ ਵਿੱਚੋਂ ਆ ਹੋ ਗਿਆ ਵੱਧ ਗਿਆ ਘੱਟ ਗਿਆ ਇੱਥੇ ਆ ਹੋ ਗਿਆ ਇੱਥੇ ਆ ਗਿਆ ਔਰ ਜਿਹੜੇ ਘਰ ਨੂੰ 50% ਤੋਂ ਵੱਧ ਕੀ 80% ਘਰਦੀ ਆ ਜ਼ਰੂਰ ਤਾਂ ਪੂਰੀ ਕਰਦੀ ਕਰਦੀ ਪ੍ਰੀਤ ਹੈ ਔਸਤਰੀ ਹੈ ਉਹਨੂੰ ਦੱਸਿਆ ਉਹਨੇ ਕੋ ਚੁੱਕ ਕੇ ਨਹੀਂ ਲੈ ਜਾ ਔਰ ਉਹਨੂੰ ਪਤਾ ਹੋਣਾ ਚਾਹੀਦਾ ਕੀ ਤੋਂ ਲੈਣੇ ਨੇ ਕੀ ਤੋਂ ਦੇਣੇ ਨੇ ਅੱਜ ਇਹਦੇ ਮਨਛੇ ਆ ਇਹਨਾਂ ਨੂੰ ਨਹੀਂ ਦੱਸੀਦਾ ਉਹਦਾ ਫੇਰ ਬੇਨਾਂ ਦਾ ਫੇਰ ਤੁਸੀਂ ਤੁਰਦੇ ਹੋ ਫਿਰ ਲੱਭਦੇ ਵੀ ਨਹੀਂ ਉਹ ਕਿੱਥੇ ਜਿੱਥੇ ਨੇ ਹੀ ਫਿਰ ਕੋਈ ਨਹੀਂ ਦੱਸਦਾ ਕੇ ਮੈਂ ਮੈਦ ਦੇਣੇ ਕਿ ਆ ਵਜ਼ਨ ਲੈ ਜਾਂਦਾ ਜੇ ਤੁਸੀਂ ਥੱਕੇ ਹਾਰੇ ਦੋਨੇ ਜੀ ਆਏ ਆ ਜਾਂ ਕੱਲਾ ਆਇਆ ਦੂਜਾ ਉਸ ਨਾਲ ਗੱਲ ਕਰ ਲਵੇ ਮਰਦ ਆ ਗਿਆ ਬਹਿ ਜਾਵੇ ਉਹਦੀ ਕੰਡ ਫੇਰ ਬੈਠ ਕੇ ਚਾਹ ਪਾਣੀ ਉਹਨੂੰ ਪੁੱਛ ਲਵੇ ਗੱਲ ਕੋਈ ਗੱਲ ਨਹੀਂ ਦੱਸੋ ਕੀ ਹੋ ਗਿਆ ਇਸ ਤਰੀਆ ਗਰੋਸਰੀ ਕਰਕੇ ਉਹਦੇ ਚਾਰ ਝੋਲੇ ਫੜ ਕੇ ਅੰਦਰ ਰੱਖ ਲਵੋ ਉਹਨਾਂ ਨਾਲ ਗੱਲ ਕਰ ਲਓ ਦੁੱਖ ਸੁੱਖ ਕਰ ਲਓ ਡਿਪਰੈਸ਼ਨ ਜਿਹੜਾ ਆਰਥਿਕਤਾ ਤੋਂ ਤੌਰ ਹੋਵੇ ਘਰ ਵਾਲੀ ਹੋਵੇ ਘਰ ਵਾਲਾ ਹੋਵੇ ਇਸ ਲਈਆਂ ਆਰਥਿਕਤਾ ਦੇ ਤੌਰ ਤੇ ਉਹ ਸਾਰੀਆਂ ਸਿੱਧੀਆਂ ਡੀਲ ਨਹੀਂ ਕਰਦੀਆਂ ਘਰ ਦੀ ਸਾਰੀ ਆਰਥਿਕਤਾ ਬੰਦਾ ੀਲ ਕਰਦਾ ਚੀਜ਼ ਲੈਣਾ ਚੀਜ਼ ਦੇਣਾ ਉਹ ਫਤਿਹ ਇੱਕ ਲੈਵਲ ਆ ਜਾਂਦਾ ਉਹਦੇ ਸਿਰ ਤੇ ਚੜ ਜਾਂਦੀ ਹੈ ਗੱਲ ਸਭ ਤੋਂ ਵੱਡੀ ਗੱਲ ਇਹ ਹੁੰਦੀ ਹੈ ਜਦ ਬਾਅਦ ਨੇ ਚੰਗੇ ਕੰਮ ਲਈ ਕੀਤੇ ਪੈਸੇ ਜਿਹੜੀਆਂ ਜ਼ਰੂਰਤਾਂ ਨੇ ਸਹੂਲਤਾਂ ਨੇ ਉਹਨਾਂ ਨੂੰ ਕੱਟਣਾ ਪਵੇ ਉਸ ਸਮੇਂ ਫੈਮਲੀ ਦਾ ਹੈਡ ਜ਼ਮੀਨ ਲੈ ਲਈ 5 ਮਿਲੀਅਨ 4 ਮਿਲੀਅਨ ਦਾ ਉੱਤੇ ਲੋਨ ਹੈ ਔਰ ਉਹ ਮਾਚੂਰ ਨਹੀਂ ਹੋ ਰਿਹਾ ਸਾਬ ਉਸ ਨੂੰ ਸਾਹਮਣੇ ਸਾਹਮਣੇ ਘਰ ਦੇ ਵਿੱਚੋਂ ਰਹਹਤ ਖੂਨ ਕੱਢ ਕੇ ਉਹਦੇ <td> ਦੇ ਤੇ ਘਰ ਦੀਆਂ ਸਹੂਲਤਾਂ ਕੁੱਟ ਰਹੀਆਂ ਪਰ ਕੋਸ ਰਿਹਾ ਬੀਸਮੈਂਟ ਨੂੰ ਹੋਣਾ ਪੈ ਰਿਹਾ ਜਿਹੜੀਆਂ ਕਾਰਾਂ ਡੋ ਦੀ ਜਗ੍ਹਾ ਇੱਕ ਹੋ ਗਈ ਤੇ ਸਾਰੇ ਚੀਜ਼ਾਂ ਪੋਸੀਬਲ ਨੇ ਪਰ ਘਰ ਦੀ ਜ਼ਰੂਰਤ ਸਹੂਲਤ ਤੇ ਮਦਦ ਘਰੋਂ ਜੇ ਨਹੀਂ ਹੈ ਜੇ ਤੁਸੀਂ ਦੱਸ ਨਹੀਂ ਰਹੇ ਬਾਹਰਲੇ ਬੰਨੇ ਕੀ ਹੋ ਰਿਹਾ ਤਾਂ ਸਿੱਧੇ ਮਨੋ ਦਾ ਜਿਹੜਾ ਮਨ ਦਾ ਵਜਨ ਹੈ ਮਨੋ ਰੋਗ ਤੇ ਉਸ ਤੋਂ ਬਾਅਦ ਜਦ ਇਹ ਹੋ ਗਿਆ ਇਹਦਾ ਇਲਾਜ ਕੀ ਇਹਦਾ ਇਲਾਜ ਜਿਹੜਾ ਉਹ ਤੁਸੀਂ ਆਪਣੇ ਆਪ ਨੂੰ ਸਥਿਰ ਕਿਵੇਂ ਰੱਖਾ ਗੋਲੀਆਂ ਦਾ ਦੇਦਣ ਕੇ ਥੱਲੇ ਰੱਖ ਲਈ ਆ ਖਾਲੀ ਉਹ ਖਾਲੀ ਪੀਲਾ ਡੱਡੂ ਆਗਾ ਕਰ ਦਿੰਦੇ ਨੇ ਬੰਦੇ ਨੂੰ ਦੇਰ ਦੋ ਸਾਲਾਂ ਕਿਉਂਕਿ ਜਿਹੜਾ ਕੁਝ ਡਾਕਟਰਾਂ ਦੇ ਕਈ ਕਾਨੂੰਨ ਚ ਆਯੁਰਵੇਦ ਵਾਲਿਆਂ ਜਿਹੜਾ ਕੁਝ ਉਹਨਾਂ ਦੀ ਜੜੀ ਬੂਟੀਆਂ ਉਹ ਦੇਣੀਆਂ ਹੋਮਿਓਪੈਥ ਦਵਾਈ ਤੋਂ ਬਾਅਦ ਆਪਣੇ ਆਪ ਨੂੰ ਸਿਹਤ ਰੱਖਣ ਲਈ ਜਿਹੜਾ ਬਹੁਤ ਜ਼ਰੂਰੀ ਆ ਕਿ ਸਿਹਤ ਠੀਕ ਕੋਈ ਇਲਾਜ ਨਹੀਂ ਨਾ ਸ਼ਰਾਬ ਨਾ ਕੋਈ ਹੋਰ ਨਸ਼ੇ ਟਾਈਮ ਟੇਂਗੋ ਵਿੱਚੋਂ ਨਿਕਲ ਜੂਗੇ ਫਿਰ ਜਦ ਸਵੇਰ ਉੱਠੋਗੇ ਨੱਪ ਲੂ ਤੁਹਾਨੂੰ ਦੱਬ ਸਭ ਤੋਂ ਵੱਡੀ ਗੱਲ ਹੈ ਵਜ਼ਨ ਕਲੀਅਰ ਕੀਤਾ ਜਾਵੇ ਜਿਹੜੇ ਸੂਪਾ ਖੁੱਸ ਰਹੀਆਂ ਟੱਬਰੀਆਂ ਖੁੱਸ ਰਹੀ ਹੈ ਜਿਹੜੀ ਜ਼ਮੀਨ ਜਾਂ ਕੋਈ ਜਾਇਦਾਦ ਤੇ ਪੈਸੇ ਲਈ ਟੱਬਰ ਦੇ ਵਧੀਆ ਲਈ ਉਲਾਈ ਸੀ ਨਹੀਂ ਚੀਜ਼ ਹੋ ਰਹੀ ਨਾ ਹੋ ਜਾਂ ਅਦਰ ਨੇ ਅਦਰ ਅਦਰਵੇ अराउंड ਜੇ ਉਹਨੇ 5 ਮਿਲੀਅਨ ਡਾਲਰ ਦੀ ਗੈਸਟ ਦੇਣਾ ਤੇ ਇੱਕ ਕਾਰ ਨੂੰ ਚਲਾਉਣ ਲਈ ਜੇ ਇਪਾ ਕੇ ਵੇਖਿਆ ਇਹ ਤੇ ਜ਼ਰਬਾ ਦਾ ਫਰਿਆ ਮੈਂ ਤੁਹਾਨੂੰ ਜ਼ਿੰਦਗੀ ਦਾ ਮਸਲਾਂ ਜ਼ਿੰਦਗੀ ਵਧੀਆ ਲਿਉਣ ਲਈ 5 ਮਿਲੀਅਨ ਦੀ ਮੌਰਗੇਜ ਦਾ ਤੁਸੀਂ ਹਿੱਸਾ ਹੈ ਇੱਕ ਤੇ ਉੱਥੇ ਤੁਸੀਂ 70-80 ਹਜ਼ਾਰ ਮਹੀਨੇ ਦਾ ਦੇ ਰਹੇ ਆ ਇੱਕ ਘਰ ਚਲਾਉਣ ਲਈ 20 ਹਜ਼ਾਰ ਜੇ ਹੋਰ ਆਵੇ ਤਾਂ ਘਰ ਵਧੀਆ ਚੱਲ ਸਕਦਾ ਪਰ ਤੁਹਾਡੀ ਇਨਕਮ ਤੋਂ ਬਾਹਰ ਆ ਗੱਲ ਜੇ 5 ਜਲਦੀ ਕਲਾਤਾਂ ਦੀ ਜ਼ਰੂਰਤ ਹੈ ਬੈਂਕ ਨੂੰ ਵੀ 5 ਮਿਲੀਅਨ ਦੀ ਕਿਸਤ ਬਾਪੂ ਕਹੇ ਕੇ ਦਿੰਨੇ ਆ ਜਵਾਕਾਂ ਤੇ 20000 ਖਰਚ ਦੋ ਕੋਈ ਨਾ ਜਿੱਥੇ 5 ਮਿਲੀਅਨ ਮੜੂਗਾ ਉਸ ਦਿਨ ਲੱਖ ਵੀ ਮੜੂ ਜਿੱਦਣ 5 ਅੰਦਰਲੀ ਜੇਹ ਚ ਪਾਇਆ ਸੀ ਉਹ ਹਲੇ ਵੀ ਆਪਣੇ ਕੋਲ ਆ ਜਿੱਦਣ ਆਏ ਸੀ ਫਿਰ ਤੁਰਪੂ ਕਹਾਂ ਹਰ ਜੇ ਤੁਰੇ ਗਏ ਸੁਲਤਾਨ ਤੋਂ ਬਿਨਾ ਮਿੱਤੁਰਿਆ ਫਿਰਦਾ ਸੀ ਉਹਨਾਂ ਨੂੰ ਕੌਣ ਸੰਭੋ ਗਿਆ ਗੱਲ ਇੱਥੇ ਲਿਆ ਕੇ ਖੜ ਬਿਨਾ ਮਰਦ ਤੋਂ ਘਰ ਨਹੀਂ ਚੱਲਦਾ ਸਰਦ ਜੀ ਬਿਨਾ ਮਰਦ ਤੋਂ ਤਬਰ ਨਹੀਂ ਚੱਲ ਉਹ ਤੇ ਸਾਰਾ ਪੈਸਾ ਥੇਲਾ ਇਸਤਰੀਆਂ ਦੇ ਵਰਦੀ ਗੱਲ ਨਹੀਂ ਹੈ ਸਿੰਗਲ ਹੋਣਾ ਇਕੱਲੇ ਰਹਿਣਾ ਬੱਚਿਆਂ ਨੂੰ ਸੰਭਾਲਣਾ ਮਾਂ ਦੇ ਇਕੱਲੇ ਪਰ ਇੱਕ ਗੱਲ ਠੀਕ ਐ ਸੱਚ ਬਹੁਤ ਚੀਜ਼ਾਂ ਜਿਹੜੇ ਡਿਸੀਡਰ ਮਰਦੇ ਹੀ ਲੱਗੇ ਹੋਏ ਤੁਸੀਂ ਏਅਰ ਤੇ オンਲਾਈਨ ਸੱਸੀਆ ਭਾਜੀ ਸਤਿ ਸ਼੍ਰੀ ਅਕਾਲ ਜੀ ਭਾਜੀ ਫਾਦਰ ਸਾਹਿਬ ਦੀ ਡੈਥ ਤੋਂ ਬਾਅਦ ਥੋੜੇ ਜੇ ਧੁਕੇ ਹੋਏ ਫੈਮਿਲੀ ਚ ਜਿੱਦਾਂ ਥੋੜਾ ਜਾ ਮੈਂ ਡਾਊਨ ਆ ਗਿਆ ਸੀ ਮੈਂ ਬੇਸਮੈਂਟ ਚ ਮੂਵ ਹੋਇਆ ਜੀ ਹੂੰ ਉਪਰੋਂ ਉਪਰੋਂ ਰੈਂਟ ਦੇ ਕੇ ਤੇ ਮੈਂ ਬੇਸਮੈਂਟ ਬੇਸਮੈਂਟ ਚ ਮੂਵ ਹੋਇਆ ਹੋਰ ਫ੍ਰੀ ਵਾਂਗੂ ਰਹਿ ਰਿਹਾ ਜੀ ਘਰ ਦੀ ਪੇਮੈਂਟ ਰੈਂਟ ਵਾਲੇ ਦੇ ਰਿਹਾ ਹੈ ਜੀ ਤੇ ਮੈਂ ਥੱਲੇ ਫ੍ਰੀ ਰਹਿ ਰਿਹਾ ਜੀ ਸੋ ਆਦਮੀ ਕੰਟਰੋਲ ਕਰਨਾ ਚਾਹਵੇ ਤੇ ਕਰ ਸਕਦਾ ਜੀ ਵੈਰੀ ਗੁੱਡ ਬਾਈ ਜੀ ਥੈਂਕ ਯੂ ਜੋ ਸਰ ਥੈਂਕ ਯੂ ਤੁਸੀਂ ਸਦਾ ਜ਼ਿੰਦਗੀ ਦੀ ਗੱਲ ਸੱਚ ਬਾਰ ਦੱਸਦੇ ਆਪਣੀ ਜ਼ਿੰਦਗੀ ਥੈਂਕ ਯੂ ਤਾਂ ਕਿਸੋ ਇਹ ਅਗਲੀ ਜਿਹੜੀ ਗੱਲ ਹੈ ਅੰਦਰ ਕਈ ਵਾਰ ਆਵਾਜ਼ਾਂ ਆਉਣ ਲੱਗੀਆਂ ਕੰਨਾਂ 'ਚ ਗੂੰਜਾਂ ਪੈਂਦੀਆਂ ਇਹ ਹੋ ਗਿਆ ਡਿਪਰੈਸ਼ਨ ਨਾਲ ਸ਼ਰਾਬ ਨਸ਼ੇ ਇਸ ਚੀਜ਼ ਦੀ ਕੋਈ ਵੀ ਇਲਾਜ ਨਹੀਂ ਨੰਬਰ 3 ਇੱਥੇ ਦੁੱਖ ਇਹ ਹੈ ਜਿਹੜੀ ਜਗ੍ਹਾ 'ਚ ਆਪਾਂ ਬੈਠੇ ਆਂ ਸੇਵਾ ਕਿਸੇ ਨੂੰ ਮਦਦ ਦੇਣ ਲਈ ਸੇ ਕੁਲ ਕੁਝ ਨਹੀਂ ਹੈ ਉਹ ਠੇਕ ਟੁੱਟਦਾ ਬੰਦਾ ਕਾਉਂਸਲਰ ਆ ਜਾਣਗੇ ਇਹ ਆ ਜਾਣਗੇ ਉਹ ਆ ਜਾਣਗੇ ਪਰ ਜੇ ਕਿਸੇ ਨੂੰ ਗਾਰੇ ਚੋਂ ਕੱਢ ਕੇ ਬਾਹਰ ਖਿੱਚਣਾ ਹੋਵੇ ਤਾਂ ਗਾਰੇ ਚ ਬਣਨਾ ਪੈਣਾ ਗਿੱਟੇ ਗਿੱਟੇ ਵਿੱਚ ਖੜਨਾ ਪੈਣਾ ਉਹ ਕਹੇ ਵੀ ਆਹ ਇੱਕ ਗੱਲ ਇੱਕ ਬੰਦੇ ਨਾਲ ਇੱਕ ਬੰਦਾ ਵੀ ਜ਼ਿੰਦਗੀ ਚ ਬਚਾ ਲਵਾਂ ਤੁਹਾਨੂੰ ਆ ਜਿਹੜੇ ਫਿਰਦੇ ਆ ਨਾ ਰੱਬ ਰੱਬ ਕਰਦੇ ਇਦੋਂ ਉੱਪਰ ਦੀ ਕੋਈ ਹੈ ਹੀ ਨਹੀਂ ਮੈਂ ਪੁੰਨ ਪਾਤ ਨਹੀਂ ਜਾਂਦਾ ਰੱਬ ਉਹਦੇ ਸਨ ਚੇ ਖੜਾ ਬਹੁਤ ਘੱਟ ਹੁੰਦੇ ਆ ਜਿਹੜੇ ਮੋਰਲ ਸਪੋਰਟ ਦਿੰਦੇ ਆ ਜਿਹੜੇ ਕਹਿੰਦਾ ਤੂੰ ਫਿਕਰ ਨਾ ਕਰੀ ਔਰ ਉਹਨਾਂ ਤੋਂ ਕੁਝ ਕੋਈ ਮੰਗਦਾ ਵੀ ਨਹੀਂ ਪਰ ਉਹੀਓ ਕਹਿਣਾ ਵੀ ਕੋਈ ਨਾ ਕਿਹੜੀ ਫਿਕਰ ਦੀ ਗੱਲ ਬਸ ਕੇ ਸਿਨੈਰੀਓ ਦੇ ਵਿੱਚ ਮਤਲਬ ਦੱਸਦਾ ਜ਼ਿੰਦਗੀ ਦੇ ਵਿੱਚ ਇਹ ਜਿਹੇ ਘਟਨਾਵਾਂ ਹੁੰਦੀਆਂ ਜਾਂ ਇਸ ਦੇ ਵਿੱਚ ਦੀ ਪਿਛਲੇ 5-7 ਸਾਲਾਂ ਚ ਅਸੀਂ ਲੰਘੇ ਆਂ ਪਰ ਉਹਨਾਂ ਸਮਿਆਂ ਦੇ ਵਿੱਚ ਕੋਈ ਹੋ ਫੇਰਾ ਕੇ ਦੋਸਤ ਵੀ ਨੇ ਵੱਡੇ ਬ੍ਰਦਰ ਵੀ ਨੇ ਉਹਨਾਂ ਕੋਲ ਬੈਠਾ ਮੈਂ ਬਾਈ ਜੀ ਕਿਵੇਂ ਹੋ ਕਹਿੰਦਾ ਗੱਲ ਸੁਣ ਲੈ ਇੱਕ ਤੇਰੇ ਸਿਰ ਤੇ ਤੂੰ ਜ਼ਮੀਨ ਲਈ ਹੋਈ ਐ ਇਹਦਾ ਹੀ ਕਰਜ਼ਾ ਐ ਇਹਦੇ ਵਿੱਚ ਵਿੱਚ ਜ਼ਮੀਨ ਆ ਤੁਹਾਡੇ ਕੋਲ ਮੈਂ ਬਿਲਕੁਲ ਜਾ ਕੇ ਲਾਸ ਵੈਗਸ ਤਾਂ ਨਹੀਂ ਹਾਰਿਆ ਕਿਤੇ ਕਿਤੇ ਕੋਈ ਗਲਤ ਕੰਮ ਤਾਂ ਨਹੀਂ ਕੀਤਾ ਪੈਸੇ ਜਿਹੜੇ ਨੇ ਇਹਦੇ ਨੇ ਜੇ ਜਾਂਦਿਆ ਜਾਣਦੇ ਜੁਆਖ ਤੇਰੇ ਮੈਂ ਪੜਾ ਦੂੰ ਰਹਾ ਵਾਲੀ ਪੀੜੀ ਦਾ ਡਰ ਹੈ ਮੈਂ ਪੜਾ ਦੂੰ ਫਿਕਰ ਨਾ ਕਰ ਗੱਲ ਹੋ ਗਈ ਬਸ ਜਦ ਫਿੱਟ ਹੋ ਗਈ ਦਿਮਾਗ ਚ ਕਹਾਣੀ ਇੱਕ ਤਾਂ ਗੱਲ ਇਹ ਕਈ ਨੰਬਰ ਦੋ ਮੈਂ ਕਿਹਾ ਕਿਵੇਂ ਖੁਸ਼ ਰਹਿਣਾ ਮੈਂ ਭਾਈ ਜੀ ਖੁਸ਼ ਤਾਂ ਮੈਂ ਈ ਹਾਂ ਰਹਿਣਾ ਵੀ ਮੇਰੀ ਜ਼ਿੰਦਗੀ ਜੇ ਮੈਂ ਅੱਜ ਮੇਰੇ ਕੋਲ 25 ਪੈਸੇ ਨੇ ਜੇਬ 'ਚ ਮੈਂ 25 ਪੈਸੇ ਰੱਖਣਾ ਚਾਹਣਾ ਹਰ ਹਾਲਤ 'ਚ ਮੇਰੇ ਘਰ 'ਚ ਮੇਰੀ ਮੇਰੀ ਸਹੂਲਤ ਆ ਮੈਂ ਉਹਨੂੰ ਕੱਟ ਨਹੀਂ ਕਰਨਾ ਚਾਹੁੰਦਾ ਜਿਨ੍ਹਾਂ ਜਵਾਕਾਂ ਲਈ ਮੈਂ ਮਹਿਲ ਮਾੜੀਆਂ ਸੈੱਟ ਕਰਨਾ ਫਿਰਦਾ ਸੀ ਇਹ ਗਲਤ ਮੈਂ ਕੰਮ ਕਰ ਲਿਆ ਮੇਰੀ ਵਿਤੋਂ ਵਧ ਗਈ ਗੱਲ ਇਹਦੇ ਵਿੱਚੋਂ ਮੈਂ ਹੁਣ ਜਾਂ ਉਹਨਾਂ ਦੀ ਸਹੂਲਤ ਕਰੂੰ ਮੈਂ ਆਪਣੇ ਆਪ ਨੂੰ ਦੋਸ਼ੀ ਸਮਝਦਾ ਵੇ ਉਹ ਕੰਮ ਅਸੇ ਕੀ ਕੀਤਾ ਜਾਵੇ ਮੈਂ ਤਾਂ ਯਾਰ ਮੇਰਾ ਜਿਹੜਾ ਮਨ ਹੈ ਮੈਂ ਤਾਂ ਇਹ ਕਹੂੰ ਵੀ ਜੇ ਮੈਂ 50 ਲੱਖ ਦਾ ਕਰਜ਼ਾਈਆਂ ਪੰਜਵੇਂ ਹਿੱਸੇ ਦਾ ਮੈਂ ਜਵਾਕਾ ਲਈ ਆਉਣ ਵਾਲੇ ਪੰਜ ਸਾਲ ਦੇ 20-20 ਹਜ਼ਾਰ ਸਾਲ ਦਾ ਹੋਰ ਕਰਜ਼ਾ ਚੱਕ ਕੇ 1 ਲੱਖ ਉਹਨਾਂ ਤੇ ਖਰਚੂ ਉਹਨਾਂ ਦੀਆਂ ਸਹੂਲਤਾਂ ਤੈਮ ਰੱਖੂੰ ਕਿਉਂਕਿ ਜਿਹੜੇ ਅੱਜ ਉਹਨਾਂ ਦੇ 12 ਸਾਲ ਦੇ ਮਲਾਰ ਨੇ ਉਹ 20 ਸਾਲ ਦੇ ਮਲਾਰ ਨਹੀਂ ਹੋਣੇ ਮੈਂ ਉਹ ਰੱਖਣੀ ਚਾਹੁੰਦਾ ਮੈਂ ਲੱਖ ਡਾਲਰ ਇਹਨਾਂ ਦੇ ਓਕਾ ਫਿਰ ਕੋਈ ਗੱਲ ਨਹੀਂ ਜਦੋਂ 50 ਨੇ ਉੱਤਰੂ ਉਸ ਦਿਨ 51 ਵੀ ਉੱਤਰ ਜੂ ਫਿਰ ਠੀਕ ਆ ਇਹ ਗੱਲ ਤੇਰੀ ਬਿਲਕੁਲ ਗੁੱਟ ਆਊਟ ਔਰ ਕੀਤਾ ਮੈਂ ਜਿਹੜੇ ਨਿਰਜ ਸਾਹਿਬ ਦੱਸ ਕੇ ਗਏ ਨੇ ਮੈਂ ਕੀਤਾ ਨਿਕਲੇ ਉਹ ਦੂਸਰੀ ਚੀਜ਼ ਵੀ ਫਿੱਟ ਬੈਠ ਗਈ ਇਧਰੋਂ ਵੀ ਫਿੱਟ ਗੱਲ ਹੋ ਗਈ ਜੇ ਕਿਤੇ ਥੜਕ ਜਾਂਦੇ ਖਤਮ ਕਹਾਣੀ ਇਹ ਮੈਂ ਨਿੱਜੀ ਤੌਰ ਤੇ ਤਾ ਸ਼ੇਅਰ ਕਰਨਾ ਚਾਹੁੰਦਾ ਵੀ ਇਹ ਸਾਰਿਆਂ ਦੀ ਜ਼ਿੰਦਗੀ ਚ ਆਉਂਦੀ ਆ ਕਹਾੜ ਸਿਟੀ ਆਫ ਸਰੀ ਦੇ ਜਿੰਨੇ ਮਿਲੀਨਰ ਸੁਣਦੇ ਆ ਇੱਕ ਜਣਾ ਫੋਨ ਕਰਕੇ ਕਹੋ ਜਿਹੜਾ ਹਜ਼ਾਰ ਤੋਂ ਜ਼ੀਰੋ ਤੇ ਨਾ ਆਇਆ ਹੋਵੇ ਪਿਛਲੇ 15 ਸਾਲਾਂ 'ਚ ਅੱਜ ਜ਼ੀਰੋ ਤੋਂ ਫੇਰ ਹਜ਼ਾਰ ਤੇ ਨੇ ਉਹ ਕੋਈ ਕਰੇ ਵੀ ਅਸੀਂ ਤਾਂ ਜੰਮੇ ਹੀ ਮਲਟੀ ਮਿਲੀਅਨਰ ਸੀ ਕਿਉਂਕਿ ਜਿਹੜੀ ਇੰਡਸਟਰੀ 'ਚ ਕੰਮ ਕਰਦਾ ਜਾਂ ਮਾੜੀ ਜਿਹੀ ਸ਼ੇਕ ਹੁੰਦੀ ਆ ਮਿਲੀਅਨਸ ਤਾਂ ਐ ਉੱਡਦੇ ਆ ਐ ਜਿਹੜੇ ਜਿਹੜੀ ਪ੍ਰਾਪਰਟੀ ਦੀ 3 ਲੱਖ ਸਾਲ ਦੀ ਕਿਸ਼ਤ ਆ ਇੱਕ ਸਾਲ ਵੀ ਰੱਖਣੀ ਪੈਗੀ ਤਾਂ 3 ਲੱਖ ਕਿੱਥੋਂ ਲਿਆਊਗਾ ਜਿਹੜਾ ਸਾਲ ਲੱਖ ਕਮਾਉਂਦਾ ਬੰਦਾ ਰਾਜਵੀਰ ਸਿੰਘ ਜੀ ਲਾਈਨ ਨੰਬਰ 2 ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਗੱਲ ਸਾਹਿਬ ਮੈਂ ਪਰਸਨਲੀ ਮੈਂ ਕੈਲਗਰੀ ਮੈ ਵੀ ਪੰਡਾ ਲਿਆ 3 ਲੱਖ ਨਾਲ ਚਲ ਗਿਆ 3 ਲੱਖ ਥੱਲੇ ਚਲ ਗਿਆ ਬੇਸਮੈਂਟ ਚ ਆ ਗਿਆ ਗੱਲ ਸਾਹਿਬ ਸੁਣ ਰਿਹਾ ਹਾਂ ਸੁਣ ਰਿਹਾ ਅੱਛਾ ਲੱਗੇ ਮੁੜ ਕੇ ਪੈਰੀ ਆ ਗਿਆ ਮੁੜ ਉਸੇ ਲੇਨ ਤੇ ਲਿਆ ਵਾਈਬ ਗਈ ਡਿਪੈਸਟ ਨੇ ਜ਼ਿੰਦਗੀ ਇੱਕੋ ਵਾਰੀ ਆ ਜ਼ਿੰਦਗੀ ਮੁੜ ਕੇ ਨਹੀਂ ਆਉਣੀ ਪਰ ਗੱਦੇ ਤੇ ਸੌਂਦੇ ਸੀ ਫਿਰ ਕੀ ਗੱਦੇ ਤੇ ਆ ਗਿਆ ਆ ਲੱਗੇ ਜ਼ਿੰਦਗੀ ਦਾ ਸੱਤਾ ਪੱਤਾ ਸਹਿ ਕੇ ਝੰਡਾ ਸਹਿ ਆ ਝੰਡੇ ਜਾ ਕੇ ਮੁੜ ਕੇ ਹੁਣ ਉਹੀ ਜ਼ਿੰਦਗੀ ਫਿਰ ਇੰਜੋਏ ਕਰ ਰਹੇ ਪਰ ਜ਼ਿੰਦਗੀ ਜੇ ਕਦੀ ਵੀ ਆਪਣਾ ਡੋਲੇ ਨਹੀਂ ਨਾ ਬੱਚਿਆਂ ਨੂੰ ਡੋਲਣ ਦਿਤਾਈ ਤਿੰਨ ਬੱਚੇ ਆ ਦੋਲਣਾ ਨਹੀਂ ਸੰਜਮੀ ਕੈਂਚੀ ਚ ਬਣਾ ਪਾ ਕੇ ਕੱਟਿਆ ਆ ਇੰਜੋਏ ਕੀਤਾ ਬਹੁਤ ਜ਼ਿਆਦਾ ਆਪਾਂ ਡੋਲਣਾ ਲੈ ਚਾਹੀਦਾ ਡੋਲਣਾ ਚਾਹੀਦਾ ਡੋਲਣਾ ਥੈਂਕ ਯੂ ਜੀ ਸਾਹਿਬ ਵੈਰੀ ਗੁੱਡ ਗੱਲ ਕਰ ਬਿਠਾਓ ਪੁੱਤ ਥਿਸ ਇਜ਼ ਦਾ ਸਿਚੁਏਸ਼ਨ ਜਿਹਦੇ ਵਿੱਚ ਦੀ ਆਪਾਂ ਲੰਘ ਰਹੇ ਔਰ ਥੋੜੀਆਂ ਚੀਜ਼ਾਂ ਪੂਰੀਆਂ ਮਿਲ ਤੁਸੀਂ ਪੜ੍ਹਾਈ ਤੇ ਠੋਕ ਕੇ ਰਹਿਣਾ ਬਾਪੂ ਤੇ ਥੋੜੀ ਬੇਬੇ ਬੈਠੀ ਆ ਧੁੱਕ ਕੱਢ ਦਿਆਂਗੇ ਫੜ ਕੇ ਕਈ ਵਾਰ ਮਾਪੇ ਅੱਦੇ ਬਹੁਤ ਕਹੜੇ ਹੁੰਦੇ ਆ ਮਾਪੇ ਦਾ ਫਿਕਰੇ ਕੋਈ ਨੀ ਜਾਦਾ ਫਿਕਰ ਕਰਦਾ ਨਹੀਂ ਗੱਲ ਬਣੂ ਬੰਦੋ ਸਮਾਨ ਪਿੱਛੇ ਹੈਗੇ ਕਣਕ ਦੇ ਢੋਲ ਉੱਥੇ ਬੈਠ ਕੇ ਖਾਵਾਂਗੇ ਐਨੀ ਉਹ ਗੱਲ ਬੰਦੇ ਨੂੰ ਖੇੜੇ ਚ ਲੈ ਆਉਗੇ ਸਰਨਾਮ ਸਿੰਘ ਜੀ ਲਾਈਨ ਨੰਬਰ ਹਾਂਜੀ ਗਿਲਸਾ ਸਤਿਕਾਰ ਸਤਿਕਾਰ ਜੀ ਗੁਰ ਸਾਹਿਬ ਬਸ ਇੰਨੀ ਗੱਲ ਹੈ ਕਿ ਬਿੱਲ ਪਾਵਰ ਅੰਦਰ ਦੇ ਭਰਦੇ ਉਹਦੇ ਤੇ ਤੇ ਖੜ ਗਿਆ ਸਮਝ ਲਓ ਅੱਧੇ ਨਾਲੋਂ ਜ਼ਿਆਦਾ ਉਹ ਪੈਰਾਂ ਤੇ ਤੇ ਫਿਕਰ ਨਾ ਕਰੀ ਕਿਤੇ ਤੰਗੀ ਹੋਈ ਨਾ ਮੈਨੂੰ ਦੱਸ ਦਿਓ ਲਕੋ ਨਾ ਰੱਖੀ ਦੱਸ ਤੂੰ ਬਸ ਮੈਂ ਜਾਣਾਂ ਮੇਰਾ ਕੰਮ ਜਾਣੇ ਐਨਾ ਹੀ ਕਹਿ ਦਿਓ ਪੁੱਛ ਨਾ ਦਿਓ ਹਮ ਖਾਲਸਾ ਫਤਿਹ ਇਹੀ ਗੱਲ ਹੋਈ ਮੈਂ ਤੁਹਾਨੂੰ ਦੱਸਦਾ ਉਹ ਮੈਂ ਕੀ ਗੱਲ ਹੈ ਉਹ ਕਹਿੰਦਾ ਫਿਕਰ ਨਾ ਕਰੀ ਜਵਾਕ ਤੇਰੇ ਮੈਂ ਪੜਾ ਦੂੰ ਯੂਨੀਵਰਸਿਟੀ ਤੱਕ ਜਿੱਥੇ ਤੱਕ ਬਹੁਤ ਜ਼ਰੂਰੀ ਆ ਤੁਹਾਡੇ ਅੰਦਰਲੇ ਸਰਕਲ ਚ ਪੰਜਾ ਦਸਾਂ ਦੋਸਤਾਂ ਦੇ ਵਿੱਚ ਹੁੰਦਾ ਕੋਈ ਨਾ ਕੋਈ ਉਹਨੂੰ ਫੜ ਕੇ ਨਾ ਡੋਲੇ ਤੋਂ ਸਿੱਧਾ ਖੜਾ ਕਰ ਦੋ ਉਹ ਕਹਿੰਦਾ ਦੱਸ ਤੈਨੂੰ ਕੀ ਜ਼ਰੂਰਤ ਆ ਹਾਂ ਜੇ ਤੁਹਾਨੂੰ ਉਹ ਵਰਤਮੇ ਲੱਗਿਆ ਦੋਸਤ ਫਿਰ ਪਾਹਾ ਵੱਢਦੇ ਫਿਰ ਕੋਈ ਮਤਲਬ ਨਹੀਂ ਹੈ ਫਿਰ ਤਾਂ ਤੁਹਾਨੂੰ ਯੂਜ਼ ਕਰ ਰਿਆ ਫਿਰ ਤਾਂ ਮੌਕਾ ਪਰਸਤ ਆ ਇਹ ਨਹੀਂ ਗੱਲ ਹੋਣੀ ਚਾਹੀਦੀ ਹਾਂ ਜਨੂਮ ਚਾਹੀਦੀ ਆਹ ਮੈਨੂੰ ਮੁਸ਼ਕਲ ਹੈ ਐਦੇ ਚੋਂ ਕੱਢ ਹਰ ਢਿੱਡ ਫੋਲਣਾ ਚਾਹੀਦਾ ਮੇਰੇ ਅਰਗਾੂੰ ਮੁੱਛਾ ਚਾੜੀ ਫਿਰੇ ਅੰਦਰੋਂ ਜਿਹੜਾ ਦਿਲ ਆ ਇਹ ਨਹੀਂ ਗੱਲ ਬਹਿ ਕੇ ਕਿਤੇ ਡਿਸਕਸ ਕਰੋ ਕਰੋ ਉੱਥੇ ਜਿਹੜਾ ਢੋਲ ਨਾ ਵਜਾਵੇ બસ ਇੰਨੀ ਕੁ ਗੱਲ ਕੀਤੀ ਜਾਂ ਖੁਦ ਕੱਢ ਲੋ ਆਪਾਂ ਲੋਟਮ ਆਪਾਂ ਕੱਢਣਾ ਜਾਣਦੇ ਆ ਪੰਜਾਬ ਵਾਲੇ ਆਪ ਕੱਢ ਲੋ ਲੋਟਮ ਜਿਨ੍ਹਾਂ ਨੂੰ ਵੇਖ ਕੇ ਤੁਹਾਡੀਆਂ ਅੱਖਾਂ ਚ ਨਿਉਂਦੀਆਂ ਸਾਰੇ 0 ਤੋਂ 1000 ਹਲਾ ਤੋਂ 0 ਪਿਛਲੇ 20 ਸਾਲਾਂ ਦੇ ਵਿੱਚ ਅਪ ਡਾਊਨ ਅਪ ਡਾਊਨ ਅਪ ਡਾਊਨ ਸਾਰੇ ਆਇਆ ਅੱਜ ਫੇਰ ਉੱਪਰ ਚ ਬੈਠੇ ਚੜ੍ਹਦੀ ਕਲਾ ਚ ਰਹਿਣ ਦੀ ਜ਼ਰੂਰਤ ਹੈ ਮਨਜਿੰਦਰ ਸਿੰਘ ਰੰਦਾਵਾ ਜੀ ਲਾਈਨ ਨੰਬਰ 2 ਰੰਦਾਵਾ ਸਾਹਿਬ ਸਿਆਣੀਆਂ ਹੁੰਦੀਆਂ ਔਰ ਕੰਮ ਵਾਲੀਆਂ ਹੁੰਦੀਆਂ ਆ ਭਾਜੀ ਮਾਰਗਰਿਟ ਘਰੀ ਘਰ ਬਣਾਇਆ ਤਾਂ ਮੈਂ ਸਟੱਕੋਂ ਦਾ ਕੰਮ ਚੰਗੀਆਂ ਗੱਲਾਂ ਕਰਨੀਆਂ ਘਰ ਚੋਂ ਮੈਨੂੰ ਘਟਾ ਬਹੁ ਪਿਆ ਤਾਂ ਘਰ ਆਉਣਾ ਮਾੜੀ ਜੀ ਗੱਲ ਵੀ ਵਾਈਫ ਨੇ ਕਹਣੀ ਇਹਨੂੰ ਟੁੱਟ ਕੇ ਪੈਣਾ ਜਾਂ ਸੈਣੀ ਗੱਲ ਤੇ दारू ਜਿੱਕਾ ਵੀ ਚੱਲ ਪਿਆ ਹੋਗਾ ਫੇਰ ਇੱਕ ਦਿਨ ਇਹਨ ਘਰ ਵਾਲੀ ਨੇ ਮਾਰਿਆ ਜੇ ਮੈਨੂੰ ਕੁਝ ਕਹਿ ਤਾ ਤਾਂ ਉਹ ਇਦਾਂ ਲੱਗਣੀ ਜਿੱਦਾਂ ਵੀ ਗੋਲੀ ਮਾਰਦੀ ਹੁੰਦੀ ਆ ਫੇਰ ਮੈਂ दारू ਪੀਤੀ ਘਰ ਦੇ ਉੱਪਰ ਸੋਫੇ ਤੇ ਬੈਠਾ ਮੈਂ ਪਿੱਛੇ ਦੌੜ ਕੇ ਆ ਕੇ ਮੋਰੇ ਵਿੰਡੋ ਸੀ ਵੱਡੀ ਤਾਂ ਉਹਦੇ ਵਿੱਚ ਫਿਰ ਮਾਰਿਆ ਕੁਦਰਤੀ ਉਹੋ ਭਾਜੀ ਟੁੱਟੀ ਨਹੀਂ ਨਹੀਂ ਜੇ ਟੁੱਟਦੀ ਥੱਲੇ ਡਿੱਗਦੇ ਸੱਟ ਲੱਗਦੀ ਟੁੱਟਦਾ ਕੁਛ ਆਈ ਡੋਟ ਨੋ ਫਿਰ ਕੀ ਹੋਣਾ ਸੀ ਕੀ ਨਹੀਂ ਹੋਣਾ ਸੀਗਾ ਹੂੰ ਦੂਜੇ ਦਿਨ ਫੇਰ ਨਹੀਂ ਧਰ ਲਿਆ ਸਰੇ ਨੂੰ ਬਹਾਲ ਕੇ ਵੀ ਕੀ ਗੱਲ ਆ ਤੈਨੂੰ ਪ੍ਰੋਬਲਮ ਕੀ ਆ ਬੇ ਤੂੰ ਘਰ ਆ ਕੇ ਸਾਡੇ ਸਾਰੇ ਟੱਬਰ ਨਾਲ ਲੜਦਾ ਤਾਂ ਉਹ ਮੈਂ ਵਿੱਚੋਂ ਗੱਲ ਨਹੀਂ ਦਸਣੀ ਵੀ ਘਾਟਾ ਪਿਆ ਹੈ ਸਗਾ 3 ਲੱਖ ਦਾ ਤਾਂ ਫੇਰ ਹੀ ਨਹੀਂ ਮੈਨੂੰ ਸਮਝਾਇਆ ਵੀ ਆਏ ਵੀ ਆ ਤੂੰ ਬਣਾਏ ਵੀ ਆ ਜੇ ਹੁਣ ਚੱਲ ਗਏ ਫੇਰ ਆ ਜਾਣਗੇ ਇਹ ਨਹੀਂ ਮੈਨੂੰ ਸਪੋਰਟ ਬਹੁਤ ਕੀਤੀ ਕਰਦਿਆਂ ਨੇ ਤਾਂ ਫੇਰ ਜਦੋਂ ਐਂਦਾ ਸਮਝ ਆਉਣਾ ਵੀ ਤੇ ਸਾਨੂੰ ਤੂੰ ਚਾਹੀਦਾ ਐ ਸਾਨੂੰ ਪੈਸੇ ਨਹੀਂ ਚਾਹੀਦੇ ਹੈਗੇ ਪੈਸੇ ਹੱਥਾਂ ਦੀ ਮੈ ਲਿਆ ਫੇਰ ਆ ਜਾਣਗੇ ਮੁੜ ਕੇ ਉਹ ਕਰੰਟ ਮੇਰਾ ਟਰੱਕ ਪਾਲਟ ਗਿਆ ਬੀਮ ਲੈ ਕੇ ਜਾਂਦਾ ਸੀ ਮੈਂ ਤਾਂ ਉਹ ਟਰੱਕ ਦੇ ਵਿੱਚੋਂ ਮੱਛੀ ਵਜਿਆ ਤਾਂ ਮੁੜ ਕੇ ਇਹਨਾਂ ਨੂੰ ਮੈਂ ਦੱਸਿਆ ਨਹੀਂ ਨਿਆਣਿਆਂ ਨੂੰ ਤਾਂ ਘਰ ਆ ਗਿਆ ਤਾਂ ਘਰ ਆ ਕੇ ਮੈਂ ਸਤਾਲਾ ਨੂੰ ਉਹਨਾਂ ਦਾਰੂ ਦਾ ਲਾਇਆ ਕੁੜੀਆਂ ਨੂੰ ਤੇ ਵਾਈਫ ਨੂੰ ਉੱਪਰ ਲੈ ਗਿਆ। ਲੈ ਗਿਆ ਵੀ ਟਰੱਕ ਪਲਟ ਗਿਆ ਵੀ ਟੋਟਲ ਲਾਸਟ ਹੋ ਗਿਆ। ਕਹਿੰਦੇ ਤੁਸੀਂ ਤੂੰ ਠੀਕ ਆ। ਵੀ ਸਾਨੂੰ ਟਰੱਕ ਫੇਰ ਮਿਲ ਜਾਊਗਾ। ਮੈਂ ਸਰਦਾਰ ਦੇ ਵਿੱਚ ਟਰੱਕ ਲੈ ਕੇ ਮੇਰੇ ਟਰੱਕਾਂ ਵਾਲਿਆਂ ਨੇ ਭਰਾਵਾਂ ਨੇ ਬਹੁਤ ਹੈਲਪ ਕੀਤੀ। ਫੇਰ ਆਪਾਂ ਗੱਡੀ ਐਨ ਤੇ ਆ ਫੇਰ ਨਹੀਂ ਮੰਨਦੇ ਆਪਾਂ ਵੀ ਇਹ ਤੁਹਾਨੂੰ ਸਪੋਰਟ ਦੀ ਹੌਸਲੇ ਦੀ ਇੰਨਾ ਹੀ ਬੰਦਾ ਪਿੱਛੇ ਕਹਿ ਦਵੇ ਨਾ ਵੀ ਤੂੰ ਫਿਕਰ ਨਾ ਕਰ ਅਸੀਂ ਤੇਰੇ ਨਾਲ ਆ ਉਹਦੇ ਨਾਲ ਤਾਕਤ ਆ ਜਾਂਦੀ ਹੈ ਇਹ ਉਹੀ ਆ ਤਾ ਹੁਣ ਮੁੰਡਿਆਂ ਦੇ ਕਈਆਂ ਦੇ ਐਕਸੀਡੈਂਟ ਹੋਏ ਆ ਹੈ ਨਹੀਂ ਮੇਰੇ ਕੋਲ ਕੁਝ ਪਰ ਫੇਰ ਵੀ ਮੈਂ ਉਹਨਾਂ ਨੂੰ ਕਹਿੰਦਾ ਹੁੰਨਾ ਤੁਹਾਨੂੰ ਦੱਸੋ ਕੀ ਚਾਹੀਦਾ ਕੀ ਲੋੜ ਆ ਫਿਕਰ ਨਹੀਂ ਕਰਨਾ ਸਮਾਂ ਜਵਾਨੀ ਨਹੀਂ ਕੋਲ ਹੈਗੀ ਪਰ ਮੇਰੀ ਆਪ ਤਾਂ ਵੀ ਅਗਲੇ ਨੂੰ ਇਹ ਗੱਲ ਕਹਿਣੀ ਤੂੰ ਫਿਕਰ ਨਾ ਕਰੀ ਦੱਸ ਤੈਨੂੰ ਕੀ ਚਾਹੀਦਾ ਉਹ ਇਹਨੇ ਇਹਨੇ ਨਾ ਪਾਜੀ ਤੁਹਾਡਾ ਜਿਹੜਾ ਹੌਸਲਾ ਵੱਜ ਜਾਂਦਾ ਤੇ ਤੁਸੀਂ ਉਸ ਸਦਮੇ ਦੇ ਵਿੱਚੋਂ ਨਿਕਲ ਜਾਂਦੇ ਆ ਤੇ ਮੁੜ ਕੇ ਫੇਰ ਕਾਮਯਾਬ ਹੋ ਜਾਂਦੇ ਬਿਲਕੁਲ ਦਾ ਧੰਨਵਾਦ ਯਾਰ ਦੋਸਤ ਬਹੁਤ ਕੰਮ ਆ ਔਰ ਆ ਬਸ ਇਹ ਗੱਲ ਸੀ ਪਾਜੀ ਤੁਹਾਡਾ ਪ੍ਰੋਗਰਾਮ ਬਹੁਤ ਵਧੀਆ ਹੰਨੀਆਂ ਅਕਲ ਗੱਲਾਂ ਹੁੰਦੀਆਂ ਤੇ ਇੱਦਾਂ ਕਰਦੇ ਰਹੋ ਚੜਦੀ ਕਲਾ ਜਰੋ ਥੈਂਕ ਯੂ ਸਸਾਇਕਲ ਧੰਨਵਾਦ ਥੈਂਕ ਯੂ ਧੰਨਵਾਦ ਜੀ ਮੈਂ ਵੀ ਸਿੱਖ ਤੋ ਮੈਂ ਕੋਈ ਗਿਆਨ ਨਹੀਂ ਵੰਡਦਾ ਮੈਂ ਵੀ ਲਰਨ ਕਰਦਾ ਹਰ ਰੋਜ਼ ਮੈਨੂੰ ਕਿਸੇ ਨੇ ਦਿੱਤੀਆਂ ਹਾਂ ਆ ਉਸ ਸਮੇਂ ਦੋਸਤਾਂ ਦੇ ਨਾਲ ਹੜਾ ਵਾਲੇ ਬਠੇਰੇ ਦੋਸਤ ਸੀ ਪਰ ਹਰ ਜਗ੍ਹਾ ਤੇ ਨਹੀਂ ਤੁਸੀਂ ਖੋਲ ਸਕਦੇ ਔਰ ਕਈ ਮਜ਼ਾਕ ਵਾਲੇ ਹੁੰਦੇ ਆ ਉਸ ਉਹ ਗੱਲਾਂ ਤਾਂ ਉਹ ਨਾਲ ਕਰਨਗੇ ਜਹਾਂ ਕਹਾਂ ਜਾ ਕੋਈ ਨਾ ਨੋ ਪ੍ਰੋਬਲਮ ਹੁਣ ਦੇਖਾਂਗੇ ਇਹਨੂੰ ਐ ਹੋ ਚਾਹੇ ਉਹ ਛੋਟੀ ਚੀਜ਼ ਹੋਵੇ ਚਾਹੇ ਲੱਖ ਹੋਣ ਕਿਆ ਕੋਈ ਕੱਖ ਦੀ ਚੀਜ਼ ਹੋਵੇ। ਸਈ ਵਾਰ ਤੁਹਾਨੂੰ ਮਜ਼ਾਕ ਕਰਦੇ ਆ ਬੰਦੇ। ਤੁਸੀਂ ਦੁੱਖ ਉਹ ਦੋਸਤ ਕਰਕੇ ਖੋਲ ਲੈਨੇ ਹੋ ਪਰ ਤੁਹਾਨੂੰ ਉਹ ਕੰਡਿਆਂ ਮਦਦ ਵੀ ਕਰਕੇ ਦਿੱਤਾ। ਵੱਡੇ ਤਾਨਸੈਨ ਤੁਰੇ ਫਿਰਦੇ ਆ ਇੱਥੇ। ਵਪਾਰ ਖੰਦੇਸ਼। ਸਮਾਂ ਮੇਰੇ ਕੋਲ ਘਟਦਾ ਜਾਂਦਾ ਜੀ। ਕਾਲਰ ਹਲੇ ਕਈ ਨੇ। ਟਾਂਡੀ ਬੰਕਤਾ ਜੀ ਲਾਈਨ ਦਾ ਹੈਲੋ 사ਸਰੀ ਗਾਲ ਜੀ। ਸਤਿ ਸ਼੍ਰੀ ਅਕਾਲ ਜੀ ਦੇਖੋ ਜੀ ਇਹ ਹੈ ਦਾ ਕੰਮ ਇਹ ਆ ਬਈ ਇਹਨੂੰ ਜਿੱਦਾਂ ਬਈ ਜਹਾਜ਼ ਆਦੀ ਦਾ ਦਿਨ ਮਨਾ ਹੋ ਰਿਹਾ ਬਈ ਬਈ ਸਾਰੀ ਕੌਮ ਜਿੱਦਾਂ ਟੈਂਸ਼ਨ ਦੇ ਵਿੱਚ ਆ ਉਹ ਤਾਂ ਦਿਨ ਮਨਾ ਰਿਹਾ 26 ਜਨਵਰੀ ਬੜੇ ਵਧੀਆ ਚਾਹੇ ਉਹਨੇ ਜਿੱਦਾਂ ਧੋਖੇ ਨਾ ਲੱਗਾ ਜਾਂ ਕੁਝ ਵੀ ਲੱਗਾ ਪਰ ਬਾਕੀਆਂ ਨੂੰ ਤਾਂ ਉਹ ਟੈਂਸ਼ਨ 'ਚ ਸਾਡੀ ਕੌਮ ਜਿਹੜੀ ਘੁੰਮਦੀ ਫਿਰਦੀ ਆ ਟੈਂਸ਼ਨ 'ਚ ਘੁੰਮਦੀ ਫਿਰਦੀ ਆ ਬਾਕੀ ਘਰੇਲੂ ਜੀਵਨ ਦੇ ਵਿੱਚ ਤਾਂ ਹਰਕ ਨੂੰ ਦੁੱਖ ਆਉਣਾ ਹੀ ਆਉਣਾ ਆ ਜਿੱਦਾਂ ਕਹਿ ਲੋ ਵੀ ਇੱਥੇ ਜਿਹੜਾ ਖਾਸ ਕਰਕੇ ਨਾ ਪੈਸੇ ਦਾ ਹਰਕ ਬੰਦਾ ਜੇ ਕੋਈ ਕਹੇ ਧੋਖਾ ਤੁਹਾਡੇ ਨਾਲ ਹੋਣਾ ਆ ਜਿੱਦਾਂ ਤੁਸੀਂ ਇਹ ਬੈਨੀਫਿਟ ਕੋਈ ਬੰਦਾ ਆਪਣੇ ਮੁੰਡੇ ਨੂੰ ਜਾਂ ਕੁੜੀ ਨੂੰ ਖਿਡਾਰੀ ਵੀ ਬਣਾਉਂਦਾ ਨਾ ਉਹ ਇਹ ਤਵੱਕੋ ਨਾ ਦੇਖੋ ਮੇਰੀ ਉਹ ਉੱਥੇ ਨਾ ਲਊਗਾ ਜਾ ਕੇ ਤੁਹਾਡਾ ਤੇ ਉਹ ਤੋਂ ਬੈਨੀਫਿਟ ਦਾ ਭਾ ਭਾਲੋ ਨਾ ਤੁਸੀਂ ਜਾ ਕਿਸੇ ਦੇ ਵੀ ਤੁਸੀਂ ਟਾਈਮ ਆਪਣਾ ਲਾਉਨੇ ਆ ਉਹਦਾ ਬੈਨੀਫਿਟ ਨੇ ਮਾਰਿਆ ਤੇ ਉਹ ਦੇਖੋ ਲੋਕ ਬੜੇ ਟੈਂ ਸਾਰੇ ਘਰ ਬੰਦ ਲੈ ਗਈਆਂ ਉਹ ਮੰਗ ਤੇ ਬਣਾ ਕੇ ਉਹ ਨਹੀਂ ਛੱਡ ਦਿੱਤਾ ਜਿੱਦਾ ਸਕੀਟਾ ਦੇ ਉੱਤੇ ਤੇ ਹੌਸਲੇ ਉਹਨਾਂ ਦੇ ਫਿਰ ਡਿਗੇ ਮੁੜ ਕੇ ਕਾਮਯਾਬ ਨਹੀਂ ਹੁੰਦੇ ਉਹ ਬੰਦੇ ਉਹੀ ਗੱਲ ਸਿਗਨਲ ਵੱਜਦਾ ਜਿੱਦਾ ਕਿਸੇ ਮਰੇ ਪੁੱਤ ਦਾ ਸਿੰਗਲਰ ਵੱਜਦਾ ਨਾ ਅੱਜ ਹੀ ਆਪਾਂ ਪਾਰਕ 'ਚ ਗੱਲ ਰਹਿ ਕਰ ਰਹੇ ਸੀ ਉਹਦੀ ਦੋ ਜਿੱਦਾਂ ਅੰਕਲ ਦੀਆਂ ਕੁੜੀਆਂ ਸੀਗੀਆਂ ਤੇ ਦੋ ਇੱਕ ਮੁੰਡਾ ਸੀ ਮੁੰਡਾ ਐਕਸੀਡੈਂਟ 'ਚ ਮਰ ਗਿਆ ਤੇ ਉਹ ਭੁੱਲਿਆ ਥੋੜਾ ਜਿਹਾ 20 ਸਾਲ ਹੋ ਗਏ ਉਹਨੂੰ ਮਰੇ ਨੂੰ ਤੇ ਉਹ ਕਹਿੰਦਾ ਮੈਂ ਕਬੇ ਰੋਜ਼ ਸਿਗਨਲ ਵੱਜਦਾ ਜਾਂ ਨਹੀਂ ਸੜਕ ਤੇ ਕਹਿੰਦਾ ਜਦੋਂ ਉਸ ਏਰੀਏ 'ਚ ਜਾਂਦੇ ਆ ਸੜਕ ਤੇ ਉਹ ਲਾਫੇ ਸਾਰੀ ਫਾਈਲ ਖੁੱਲ ਜਾਂਦੀ ਮੋਰੇ ਉਹ ਨਹੀਂ ਫੇਰ ਦੋ ਘਰ ਦੇ ਜਿੱਦਾਂ ਜਾਦਾ ਡੰਗਿਆ ਜੇ ਤਾਂ ਵੀ ਔਰਤਾਂ ਦਾ ਜਿਹੜਾ ਡੰਗਿਆ ਆ ਉਹ ਸਰਦੀ ਕਲਾਜ ਰਹਿਣਾ ਕੋਈ ਨਹੀਂ ਡੰਗ ਸਕਦਾ ਇੱਥੇ ਜਦ ਕੋਈ ਗੱਲ ਬੰਦਿਆਂ 'ਚ ਵੀ ਕਮੀਆਂ ਹੋ ਸਕਦੀਆਂ ਔਰਤ ਨਹੀਂ ਕੋਈ ਹਰ ਵਕਤ ਨਹੀਂ ਹੈ ਗੱਲ ਕਿ ਔਰਤ ਦੇ ਪਿੱਛੇ ਫੱਟਾ ਚੱਕੀ ਫਿਰਿਜਾਓ ਆ ਨਹੀਂ ਠੀਕ ਗੱਲ ਕੋਈ ਨਾ ਫੇਰ ਵੀ ਜ਼ਿੰਦਗੀ ਤਾਂ ਜ਼ਿੰਦਗੀ ਆ ਦੇ ਵਿੱਚ ਇੱਕੋ ਹੀ ਗੱਲ ਦਿਮਾਗ 'ਚ ਰੱਖਣੀ ਹੈ ਜ਼ਿੰਦਗੀ ਤੁਹਾਡੀ ਆ ਜਿਉਣੀ ਤੁਸੀਂ ਤੁਹਾਡੇ ਮਰਨ ਨਾਲ ਕਿਸੇ ਨੂੰ ਫਾਇਦਾ ਨਹੀਂ ਹੋਣਾ ਕਿਸੇ ਨੂੰ ਨੁਕਸਾਨ ਜ਼ਰੂਰ ਹੋਊ ਇਹ ਗੱਲ ਦਾ ਖਿਆਲ ਰੱਖਣਾ ਆਪਣੀ ਜ਼ਿੰਦਗੀ ਆਪ ਵੀ ਆ ਜਿੱਥੇ ਲੋਕ ਆਪਣੀ ਪਰਿਵਾਰ ਦੀਆਂ ਜ਼ਿੰਮੇਵਾਰੀਆਂ ਪੂਰੀਆਂ ਕਰਨੀਆਂ ਆਪ ਵੀ ਉਸ ਵਾਰ ਜਿਹੜੀ ਮਿਲੀ ਜ਼ਿੰਦਗੀ ਆ ਇਹਨੂੰ ਵੀ ਭੋਗਣਾ ਮਾੜੀਆਂ ਮੋਟੀਆਂ ਉੱਪਰ ਥੱਲੇ ਆਉਂਦੇ ਰਹਿੰਦੇ ਆ ਚੜ੍ਹਦੀ ਕਲਾ 'ਚ ਸਦਾ ਰਹਿਣਾ ਕੱਲ ਨੂੰ 11 ਵਜੇ ਫੇਰ ਮੁਰਦਾ ਜੀ ਰੱਬ